ਕੇਆਰਪੀ 1550 ਐਮਪੀ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜਬਾਨ ਹਰਜੀਤ ਸਿੰਘ ਜਿੱਲ 11:00 ਬਜੇ 11 ਮਿੰਟ ਹੋਏ ਨੇ 13 ਜਨਵਰੀ ਦਾ ਦਿਨ ਹੈ ਵਰਾ 2016 ਦਾ ਸ਼ੁੱਕਰਵਾਰ ਹੈ ਪੀਪੋ ਨਾਨਕਸ਼ਹੀ ਸੰਮਤ 548 ਨਿੱਘਾ ਹਾਰਦਿਕ ਸਵਾਗਤ ਹੈ ਲੋੜੀ ਦੇ ਤੁਹਾਨੂੰ ਸਭ ਨੂੰ ਵਧਾਈਆਂ ਹੋਣ ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸੁਰਖ ਦੇ ਮਸਲੇ ਤੇ ਗੱਲਬਾਤ ਹੋਏਗੀ ਪਹਿਲੇ ਇਸ ਦਿਵ 11:30 ਬਜੇ ਗੁਰਦੇਵ ਸਿੰਘ ਉਹਨਾਂ ਨੇ ਗੱਲਬਾਤ ਕਰਨੀ ਹੈ ਜੀਓ ਪਾਵਰ ਸਪਰੇਸ ਬਾਰੇ ਜਿਹੜੀ ਉਹ એનર્ਜੀ ਤੁਹਾਡੇ ਘਰਾਂ ਦੀ ਚੈੱਕ ਕਰਦੇ ਆ ਉਸ ਦੇ ਬਾਰੇ ਕਰਨਗੇ 12 ਤੋਂ 1 ਵਜੇ ਤੱਕ ਤੁਹਾਡਾ ਪ੍ਰਕਰਤ ਵੀਰਾਂ ਦੀ ਮੁਸ਼ਕਲ ਹੈ ਦੇ ਜਿੰਨੇ ਹਾਈਵੇ ਕੋਕਾ ਹਾਲਾ ਤੋਂ ਲੈ ਕੇ ਜਿਹੜਾ ਗਾ ਜਾਂਦਾ ਹੈ ਜੈਸਪੁਰ ਤੱਕ ਉਹਦਾ ਬਹੁਤ ਮੰਦਾ ਹਾਲ ਹੈ ਜਦ ਦਾ ਟੋਲ ਚੱਕਿਆ ਕੋਕਾ ਹਾਲਾ ਤੋਂ ਉੱਥੇ ਸੜਕ ਦੀ ਮਰਮਤ ਜਾਂ ਉਹਦੀ ਸਨੋਹ ਸਾਫ ਕਰਨ ਦੀ ਤੇ ਜਾਂ ਉੱਥੇ ਸਹੂਲਤਾਂ ਬਹੁਤ ਘਾਟ ਹੈ ਪ੍ਰਕਿਰਤ ਬਹੁਤ ਔਖੇ ਆ ਨੌਰਥ ਵਾਲੇ ਪਾਸੇ ਨੂੰ ਜਿੱਧਰ ਵੀ ਜਾਂਦੇ ਆ ਇੱਕ ਨਹੀਂ ਬਹੁਤ ਫੋਨ ਆਉਂਦੇ ਤੇ ਦੂਸਰੇ ਬੰਨੇ ਰੈਸਟ ਹਾਊਸ ਤਾਂ ਹੈ ਹੀ ਨਹੀਂ ਰੈਸਟ ਹਾਊਸ ਵਾਲਾ ਕੰਮੇ ਬਹੁਤ ਔਖਾ ਹੈ ਤੇ ਫਿਰ ਉਹ ਕਰਮਕੀ ਕਈ ਵਾਰ ਗੈਲਣਾ ਜਿਹੜੀ ਭਗਾ ਕੇ ਮਾਰੀ ਕਿਸੇ ਉੱਪਰ ਪੈ ਜਾਂਦੀ ਆ ਬੰਦੇ ਵੀ ਕੀ ਕਰੇ ਫੰਡਰੇਜ਼ਿੰਗ ਕਰਕੇ ਕ੍ਰਿਸਟਿਕਾਰ ਕੋੜਾ ਨੂੰ ਸਦ ਲਈ ਪੈਸਾ ਟੀਲਾ ਇਕੱਠਾ ਕਰਕੇ ਘੱਟੋ-ਘੱਟ ਪੰਜ ਚਾਰ ਤੁਹਾਨੂੰ ਹੋਰ ਤਾਂ ਆਪਣੇ ਕੋਈ ਸਰਦਾ ਨਹੀਂ ਬੰਦੇ ਕੌਮ ਦੇ ਹੱਥੋਂ ਮਰ ਗਏ ਸਾਡੇ ਆ ਹੁਣ ਵੋਟਾਂ ਨੇ ਆ ਵੀ ਜਾਣਾ ਸ਼ਾਇਦ ਪੈਸੇ ਵੀ ਪਲੇਟ ਦੇ ਘੱਟ ਖਸਤੇ ਰਹਿ ਜਾਣ ਇਹੋ ਜਿਹਾ ਕੁਝ ਕਰ ਲਈਏ ਨਹੀਂ ਤਾਂ ਐਂਡੀਪੀ ਵਾਲੇ ਉਹ ਸਦ ਲੈਣੇ ਯਾਰ ਵੇਲੀਆਂ ਨੂੰ ਆਪਣੇ ਨਾਲ ਖੜ ਜਾਣਗੇ ਤੇ ਇਹੋ ਜਿਹਾ ਕੁਝ ਕਰ ਲਈਏ ਜਨਵਰੀ ਮੁੱਕ ਦੀ ਸਾਰ ਫਰਵਰੀ ਚ ਚਾਰ ਖਾਣੇ ਛਤਵੀਏ ਜਿੱਥੇ ਤੁਸੀਂ ਬਹਿਤਾ ਜਾਇਆ ਕਰੋ ਸਰਕਾਰ ਤਾਂ ਫਿਰ ਔਖੇ ਚ ਨਾ ਸੌਖਾ ਹੋ ਗਿਆ ਕੰਮ ਇੱਕ ਉਧਰ ਐਲ ਐਨ ਜੀ ਦਾ ਫੰਡ ਨਹੀਂ ਆਇਆ ਜਿਹੜਾ ਬਿਲੀਅਨ ਡਾਲਰ ਦਾ ਉਹਨਾਂ ਅਸੀਂ ਗੱਲ ਕੀ ਆ ਉਹ ਫੋਟੋਆਂ ਨੇ ਜਿਹੜੀਆਂ ਉਹ ਪਾਣੀ ਦੇ ਵਿੱਚ ਤੈਰੇ ਨਹੀਂ ਟੈਂਕ ਰੌਲਾ ਇਹ ਹੋ ਗਿਆ ਤੈਰ ਜਾਣੇ ਨੇ ਅਪ੍ਰੈਲ ਦੇ ਵਿੱਚ ਸ਼ੁਰੂ ਹੋਣਗੇ ਮਾੜਾ ਜਿਹਾ ਦਿਨ ਖੋਲ ਲੈਣ ਦਿਓ ਤੇ 1 ਤੋਂ 2 ਵਜੇ ਤੱਕ ਪਿੰਡ ਦੀ ਸੱਤ ਦੇ ਵਿੱਚ ਤੁਹਾਡੇ ਲਈ ਇੱਕ ਘੰਟਾ ਰੱਖਿਆ ਕਿਸੇ ਵੀ ਵਿਸ਼ੇ ਬਾਰੇ ਤੁਸੀਂ ਇੱਕ ਘੰਟਾ ਬੋਲ ਸਕਦੇ ਹੋ ਹਫ਼ਤੇ ਦੀਆਂ ਗਤੀਵਿਧੀਆਂ ਇੱਥੇ ਦੀਆਂ ਉਸ ਲਈ ਜੇ ਪੰਜਾਬ ਦੀ ਗੱਲ ਕਰੋਂ ਪੰਜਾਬ ਦੀ ਸੱਭਿਆਚਾਰ ਦੀ ਪੰਜਾਬ ਦੇ ਪਿੰਡ ਦੀ ਰਾਜਨੀਤੀ ਦੀ ਕੁਝ ਵੀ ਕਹਾਣੀ ਅੱਗੇ ਕੁਝ ਕਹਿ ਕੇ ਉਹਦੇ ਨਾਲ ਮੈਂ ਤੁਹਾਨੂੰ ਤੋਰਦਾ ਸਾਂ ਹੁਣ ਮੇਰਾ ਇਹ ਹੈ ਕਿ ਤੁਹਾਡੇ ਮੰਦੀਆਂ ਬਹੁਤ ਰਹਿ ਜਾਂਦੀਆਂ ਕਈ ਵਾਰ ਫੋਨ ਕਾਲ ਨਹੀਂ ਮਿਲਦੀ ਕਈ ਵਾਰ ਸਮਾਂ ਘੱਟ ਹੁੰਦਾ ਕਈ ਵਾਰ ਕੰਮ ਤੇ ਹੁਣ ਇੱਕ ਘੰਟਾ ਹੋਵੇਗਾ ਜਿਹਦੇ ਵਿੱਚ 1:00 ਕਿ ਵੀਰ ਮੇ ਤੋਂ 2 ਵਜੇ ਤੱਕ ਪਿੰਡ ਦੀ ਸੱਤ ਦੇ ਵਿੱਚ ਤੁਸੀਂ ਗੱਲ ਕਰਨੀ ਹੈ ਨੰਬਰ ਰਹੇਗਾ 18442471550 krpradio.com ਤੇ ਤੁਸੀਂ ਸਿੱਧਾ ਪ੍ਰਸਾਰਣ ਸੁਣਦੇ ਹੋ ਤੇ ਨਾਲ ਹੀ ਐਪ ਜਿਹੜਾ ਡਾਊਨਲੋਡ ਕਰ ਸਕਦੇ ਹੋ ਦੋਨੇ ਗੱਲਾਂ ਰਹਿ ਜਨ ਤਾਂ ਲੋਕ ਸਾਥ ਹੈ ਲੋਕੇਐਸਏ.wth ਉੱਥੇ ਤੁਸੀਂ ਪ੍ਰੋਗਰਾਮ ਸਾਰਾ ਸੁਣ ਸਕਦੇ ਹੋ ਨੇਮ ਡਵਲਾ ਜੀ ਦਾ ਨੰਬਰ 60444064@info@krpioradiodotcom ਉਹਨਾਂ ਦੀ ਈਮੇਲ ਹੈ ਹਰਜੀਤ ਸਿੰਘਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਹਾਡਾ مشورہ ਸੁਖ ਸੁਨੇਹਾ ਆਉਂਦਾ ਰਹਿੰਦਾ ਹੈ harjeet.g@krpioradiodotcom ਈਮੇਲ ਹੈ ਕਹਿਣਾ ਕਦੇ ਮੋੜੀਏ ਨਾ ਪੰਚਾਇਤ ਦਾ ਮਾਪਿਆਂ ਨੂੰ ਮੌਕਾ ਦਈਏ ਨਾ ਸ਼ਿਕਾਇਤ ਦਾ ਸਾਂਝੀ ਵਟ ਤੋਂ ਨਾ ਪੁੱਛੇ ਬਿਨਾ ਰੁੱਖ ਵੱਢੀਏ ਸੱਤ ਚ ਖਲੋਕੇ ਨਾ ਜੀ ਗਾਲ ਕੱਢੀਏ चौकीदार ਨਾਲ ਕਦੇ ਵੈਰ ਪਾਈਏ ਨਾ ਚੱਕਵੇਂ ਜੇ ਬੰਦੇ ਦੀ ਬਰਾਤ ਜਾਈਏ ਨਾ ਆਰੀਏ ਨਾ ਪਾਨੀ ਕਿਤੇ ਹੁੰਦੇ ਸਾਕ ਨੂੰ ਐ ਵੀ ਕੋਲ ਜਾਣ ਬਈਏ ਨਾ ਜਵਾਕ ਨੂੰ ਬੁਲਾਈਏ ਨਾ ਕਦੇ ਆਖ ਓਏ ਨੂੰ ਮਾਂਜ ਦੇਤੇ ਨਾਲ ਧੋਈਏ ਨਾ ਕੜਾਈ ਨੂੰ ਮੌਤ ਤੇ ਸ਼ਰੀਕ ਮੌਤ ਤੇ ਸ਼ਰੀਕ ਕਰ ਜਾਣੋ ਰਹੀਏ ਨਾ ਭੈਣ ਦੇ ਚੁੱਲ੍ਹੇ ਤੇ ਬਹੁਤਾ ਚੇਰ ਬਈਏ ਨਾ ਘਰ ਦਾ ਨਾ ਭੇਤ ਜਗਜ਼ਾਰ ਕਰੀਏ ਆਖੀਏ ਪਨੀਰ ਭਾਵੇਂ ਦਾਲ ਧਰੀਏ ਆਪਦੇ ਤੋ ਵੱਡੇ ਨੂੰ ਨਾ ਧੀ ਧੋਰੀਏ ਹੋ ਜੇ ਬੱਗੀ ਦਾੜੀ ਨਾ ਠਰਕਪੋਰੀਏ ਸਫਰ ਦੇ ਵਿੱਚ ਕਦੇ ਬਹੁਤਾ ਖਾਈਏ ਨਾ ਖਾਈਏ ਨਾ ਸੋਰੇ ਜਾ ਕੇ ਕਦਰ ਘਟਾਈਏ ਨਾ ਔਲਾਦ ਦਾ ਨ ਮਿਹਣਾ ਦਈਏ ਕਦੇ ਬਾਝ ਨੂੰ ਚੁਗਲੀ ਤੇ ਸ਼ੱਕ ਤੋੜ ਦਿੰਦੇ ਸਾਂਝ ਨੂੰ ਸ਼ਾਬਸ਼ ਇਹਨਾਂ ਬਹੁਤੀ ਕਦੇ ਦਈਏ ਪੁੱਤ ਨੂੰ ਅਣਕੱਜਾ ਰੱਖੀਏ ਕਦੇ ਨਾ ਦੁੱਧ ਨੂੰ ਸੋਗ ਵੇਲੇ ਕੱਢੀਏ ਨਾ ਬਹੁਤਾ ਟੌਰ ਨੂੰ ਇਹਨਾਂ ਗੱਲਾਂ ਉੱਤੇ ਕੁਦੇ ਕਰੀ ਗੌਰ ਤੂੰ ਇਨਾ ਗੱਲਾਂ ਉੱਤੇ ਕੁੱਦੇ ਕਰੀ ਗੌਰ ਤੂੰ ਗੁੱਦਾ ਸਿੰਘ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ 11:17 ਹੋਏ ਨੇ ਕੱਲ ਦੀਆਂ ਜਰਦੀਆਂ ਖਬਰਾਂ ਐਡਮਿੰਟਨ ਤੋਂ ਆਈਆਂ ਨੋ ਦੋ ਨੌਜਵਾਨ ਮੁੰਡਿਆਂ ਦੀਆਂ ਸਾਡੇ ਸ਼ਹਿਰ ਦੇਆਂ ਦੀਆਂ ਲਾਸ਼ਾਂ ਜਦ ਮਿਲੀਆਂ ਦੇ ਵਿੱਚ ਇੱਕ ਸੜਕ ਤੋਂ ਚੱਲਦੇ ਪਿਕਅਪ ਦੇ ਵਿੱਚ ਕੋ ਲੰਗੇ ਜਾਂਦੇ ਰਾਹੀ ਨੇ ਵੇਖਿਆ ਨੇ ਉਹਨੇ ਦੀਆਂ ਖਬਰਾਂ ਚੱਲ ਰਹੀਆਂ ਨੇ ਤੇ ਭਾਈਚਾਰੇ 'ਚ ਬਹੁਤ ਦਰਦ ਆ ਤੇ ਬਹੁਤ ਦੁੱਖ ਹੈ ਮੁੰਡਾ ਬਾੰਗੜ ਤੇ ਮੁੰਡਾ ਸਿੱਧੂ ਸਾਡੇ ਇੱਥੇ ਦੇ 22 ਤੇ 24 ਸਾਲ ਦੇ ਚੜ੍ਹਦੀ ਵਰੇਸ ਦੇ ਜਵਾਕ ਨੇ ਹੁਣ ਖੱਠੀ ਪੱਠੀ ਜਿਹੜੀਆਂ ਗੱਲਾਂ ਹੁੰਦੀਆਂ ਘਰ ਦੇ ਵਿੱਚ ਸੋਗ ਨੇ ਸਾਰ ਪਰਿਵਾਰ ਦੁਖੀ ਨੇ ਮਾਪੇ ਬੈਠ ਕੇ ਧੀਆ ਪੁੱਤਾਂ ਨਾਲ ਰਾਤ ਨੇ ਕਿ ਕਿੱਥੇ ਕਮੀ ਰਹਿ ਰਹੀ ਹੈ ਹੋ ਗਏ ਬਹੁਤ ਪੁਲਿਸਿੰਗ ਹੋ ਗਈ ਬਹੁਤ ਮਾਪਿਆਂ ਵੱਲੋਂ ਬੱਚਿਆਂ ਪਤਾ ਨਹੀਂ ਕਿਹੜੀ ਗੱਲਾਂ ਅਸੀਂ ਕਿੱਥੋਂ ਰਹੇ ਹਾਂ ਸਾਡੀ ਔਲਾਦ ਇੱਥੇ ਦੀ ਗਲਤ ਕੰਮਾਂ 'ਚ ਪੈ ਕੇ ਨਾਲੇ ਆਪਣੀ ਜਾਨ ਦਾ ਕੋਲ ਬੰਰ ਰਹੀ ਹੈ ਤੇ ਨਾਲ ਮਾਪੇ ਨਾਲ ਭਾਈਚਾਰੇ ਨੂੰ ਸਿਰ ਨੀਵਾ ਕਰਵਾ ਰਹੀ ਇੱਕ ਗੱਲ ਸਾਨੂੰ ਮਾਪਿਆਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੇ ਪੱਧਰ ਤੇ ਸਾਡੀ ਗੱਲ ਆ ਜਿਵੇਂ ਅਸੀਂ ਆਪਣੇ ਮਾਪਿਆਂ ਵਾਂਗੂ ਸੋਚਦੇ ਹਾਂ ਉਸ ਤਰ੍ਹਾਂ ਇਹ ਬੱਚੇ ਨਹੀਂ ਸੋਚਦੇ ਇਹਨਾਂ ਦਾ ਸੋਚਣ ਦਾ ਨਜ਼ਰੀਆ ਹੋਰ ਹੈ ਤੁਹਾਡੇ ਘਰ ਦੇ ਵਿੱਚ ਤੁਸੀਂ ਮਾਪੇ ਦੇ ਤੌਰ ਤੇ ਦਾਦਾ ਦਾਦੀ ਤੇ ਦੁੱਖ ਚ ਹੋਮੋਗੇ ਹੱਥਾਂ 'ਚ ਰੋਟੀਆਂ ਛੁੱਟੀਆਂ ਹੁੰਦੀਆਂ ਨੇ ਤੇ ਇੱਥੇ ਦਾ ਜਵਾਕ ਜੱਲਾ ਤੁਰਿਆ ਫਿਰਦਾ ਹੁੰਦਾ ਇਹਨਾਂ ਨੂੰ ਕੋਈ ਫਰਕ ਨਹੀਂ ਮਾੜਾ ਮੋਟਾ ਪੁੱਛ ਲੈਣਗੇ ਆਪਣੇ ਰੂਮ ਚ ਰੂਮ ਤੋਂ ਥੱਲੇ ਥੱਲਿਓਂ ਜਿਮ ਜਿਮ ਤੋਂ ਵਾਪਸ ਚੱਕਿਆ ਖਾ ਲਿਆ ਦੁਆਰਾ ਫੇਰ ਰੂਮ ਇਹ ਦੇ ਕੋਲ ਨਹੀਂ ਮਲਾਰ ਕਰਕੇ ਜੱਫੀਆਂ ਪਾ ਕੇ ਚੀਜ਼ਾਂ ਦੇ ਕੇ ਸਾਰਾ ਕੁਝ ਕਰਦੇ ਕਿਉਂਕਿ ਜਿਵੇਂ ਸਾਨੂੰ ਦਿੰਦੇ ਰਹਿਆ ਸਾਡੇ ਬਾਪੂਆਂ ਦੇ ਅਸੀਂ ਖੀਸੇ ਨੂੰ ਦੇਖਦੇ ਰਹੇ ਜੇ ਪੰਜ ਨਾਲ ਨਿਕਲਦੇ ਉਹਦੇ ਚੋਂ ਰੁਪਈਆ ਇੱਕ ਜ਼ਰੂਰ ਨਿਕਲਦਾ ਜਿਆਦਾ ਆਪ ਮੰਗਦੇ ਜਾਂ ਪੁੱਤ ਲੈ ਇਥੇ ਅਸੀਂ ਆਪਣਾ ਲੱਕ ਤੋੜ ਤਾ ਇਹਨਾਂ ਦੀਆਂ ਮੰਗੀਆਂ ਚੀਜ਼ਾਂ ਇਹਨਾਂ ਦੇ ਪੱਲੇ ਪਾਤੀਆਂ ਬਹੁਤ ਵਾਰ ਗੱਲਾਂ ਚੱਲਦੀਆਂ ਮਾਪਿਆਂ ਨੇ ਸਮਾਂ ਨਹੀਂ ਦਿੱਤਾ ਪਿਓ ਪੁੱਤ ਨੇ ਪਿਓ ਆਨੇ ਸਮਾਂ ਨਹੀਂ ਦਿੱਤਾ ਦੋਨੇ ਜੀ ਕੰਮ ਕਰਨ ਲੱਗੇ ਇਹ ਕੁਛ ਨਹੀਂ ਕੋਈ ਮਾਪਾ ਨਹੀਂ ਚਾਹੁੰਦਾ ਵੀ ਉਹਦਾ ਪੁੱਤ ਕਿਤੇ Laash ਬਣ ਕੇ ਪਿਆ ਹੋਵੇ ਕੋਈ ਨਹੀਂ ਚਾਹੁੰਦਾ ਸਾਰਿਆਂ ਨੇ ਆਪਣੇ ਆਪ ਨੂੰ ਆਪਣਾ ਲੱਕ ਤੋੜ ਕੇ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਆਪਣੇ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਪਰ ਫੇਰ ਅਖੀਰ ਦੇ ਵਿੱਚ ਗੱਲ ਇਹ ਹੀ ਹੈ ਜੇਰਾ ਉਪਰ ਵਾਲੇ ਨੇ ਲਿਖਿਆ ਉੱਥੇ ਜਾ ਕੇ ਗੱਲ ਖੜਨੀ ਆ ਲੱਖ ਤੁਸੀਂ ਜ਼ੋਰ ਲਾ ਲਿਓ ਲੱਖ ਤੁਸੀਂ ਯਤਨ ਕਰ ਲਿਓ ਜਦ ਇੱਧਰ ਨੂੰ ਵਾਰ ਜਵਾਕ ਤੁਰ ਵਾਪਸੀ ਬਹੁਤ ਅਸੰਭਵ ਹੈ ਮਰਜ਼ੀ ਕਾਉਂਸਲਿੰਗ ਕਰ ਲਿਓ ਜਿੰਨੇ ਮਰਜ਼ੀ ਪਹਿਰੇ ਲਾ ਲਿਓ ਜਿਹੜਾ ਕੁਛ ਮਰਜ਼ੀ ਕਰ ਲਿਓ ਉਹਨਾਂ ਦੀ ਘਰ ਵਾਪਸੀ ਅਸੰਭਵ ਆ ਇੱਕ ਕੇਸ ਨਹੀਂ ਹਜ਼ਾਰਾਂ ਕੇਸ ਆਪਣੇ ਸਾਹਮਣੇ ਆ ਤਕੜੇ ਘਰਾਂ ਦੇ ਪੁੱਤ ਜਿਨ੍ਹਾਂ ਦੇ ਮਾਪੇ ਧਰਮ ਚ ਪਰਪੱਕ ਆਲੇ ਦਾਲੇ ਰਹਿ ਕੇ ਜਿਨ੍ਹਾਂ ਨੇ ਸਦਾ ਵਾੜਾਂ ਨੂੰ ਅੰਦਰ گلਾਰ ਦੇ ਫੁੱਲ ਲਾ ਕੇ ਰੱਖੇ ਸੀ ਛਪਟ ਕੇ ਲੈ ਗਿਆ ਉਹਨਾਂ ਨੂੰ ਫੁੱਲਾਂ ਨੂੰ ਕੋਈ ਨੀ ਮੁੜਿਆ ਵਾਪਸ ਕਿਉਂਕਿ ਸੋਚ ਨੂੰ ਇਹਨਾਂ ਸੋਚ ਨਹੀਂ ਹੈ ਨਾ ਭੂਆ ਮਾਮੇ ਤਾਈ ਚਾਚੇ ਘਰ ਦੂਜੇ ਪਿੰਡ ਚਲੇ ਜਾਊ ਤੇ ਗੱਲ ਪਿੰਡ ਦੀ ਆਉਂ ਗਾਉਂ ਹੋ ਪੰਜ ਚਾਰ ਮਹੀਨੇ ਬਾਅਦ ਨਾ ਇਹ じゃ ਕਰ ਸਕਦੇ ਆ ਵੀ ਗਾਂਹ ਜਾ ਕੇ ਪੰਜਾਬ ਤੋਂ ਹਿਲੇ ਦੂਜੇ ਜ਼ਿਲ੍ਹੇ ਚ ਜ਼ਮੀਨ ਲੈ ਲਈ ਪਿੰਡ ਦਾ ਜਿਹੜਾ ਮੋਢਾ ਸ਼ਰੀਕੀ ਦਾ ਉਹ ਸ਼ਰੀਕ ਦਾ ਉਪਰਾਂ ਕਰਤਾ ਪਰ ਇੱਥੇ ਨਹੀਂ ਨਿਕਲਦੇ ਲੱਖਾਂ ਪਾ ਇਹਨਾਂ ਦੇ ਮੂਰੇ ਵਾਰਡ ਬਣ ਕੇ ਖੜ੍ਹ ਗਏ ਨਹੀਂ ਮੰਨਦੇ ਨਹੀਂ ਮੁਰਦੇ ਧੀਆਂ ਫੇਰ ਵੀ ਉਹਨਾਂ ਦੇ ਵਿੱਚ ਹੈ ਉਹਨਾਂ ਜੀਨ ਚ ਹੈ ਉਹਨਾਂ ਦੇ ਖੂਨ ਚ ਉਹ ਘਰ ਦੇ ਵਿੱਚ ਸਮੋਉਂਦੀਆਂ ਨੇ ਫੇਰ ਵੀ ਬਹੁਤ ਘੱਟ ਨੇ 55% ਸਾਡੀਆਂ 10% ਕੁੜੀਆਂ ਬਾਹਰ ਆਤਾਂ ਨੇ ਤੁਰਦੀਆਂ ਫਿਰਦੀਆਂ 80 90% ਘਰੇ ਬੈਠੀ ਇਹ ਜਿਹੜਾ ਸ਼ੋਕਰ ਵੱਧਾ ਜਿਆਦਾ ਸਾਧਮਾ ਟੱਪਦਾ ਹੈ ਜਿੰਮਤ ਜਾਣ ਲੱਗੇ ਟੀਕੇ ਸ਼ੀਕੇ ਲਾ ਕੇ ਮੋੜੇ ਕੱਢ ਆ ਆਪਾਂ ਨੂੰ ਵੀ ਚੜ੍ਹਦੀ ਬਰੇਸ ਦੇ ਵਿੱਚ ਪਿੰਡਾਂ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਸੀ ਜਦ ਹਾਰਮੋਨ ਚੇਂਜ ਹੁੰਦੇ ਆ ਪਰ ਪਿੰਡ ਦੀ ਸ਼ਰਮ ਸੀ ਸਭ ਸੱਤ ਚ ਬੈਠੇ ਆ ਦਰਵਾਜ਼ੇ ਬੈਠਿਆ ਚਾਚਾ ਆ ਗਿਆ ਮੂਰੇ ਤਾਇਆ ਆਉਂਦਾ ਉਹ ਸਮਾਲਸਰੀਆ ਫੁੱਫੜ ਤੁਰਿਆ ਕਹੂ ਮੇਰੇ ਉਹ ਨੂੰ ਕਹਿੰਦੇ ਸਾਹਬ ਆਪਣੇ ਭਤੀਜੇ ਉਹ ਕਹਿੰਦਾ ਲੈ ਮੈਂ ਨਾਲ ਲੈ ਜਾ ਇੱਥੇ ਹੀਲਾ ਕੋਈ ਨਹੀਂ ਸਕਦੇ ਜਦ ਸਾਡੇ ਗੱਲੋਂ ਹੱਥ ਨਿਕਲ ਗਈ ਇੱਥੇ ਕੜੀਆਂ ਇੰਨੀਆਂ ਕੜੀਆਂ ਪੁਲਿਸ ਦੀ ਹੈ ਉਹ ਤੁਸੀਂ ਬਣ ਸਕਦੇ ਕਰ ਸਕਦੇ ਮਾਪਿਆਂ ਦੇ ਕੋਲ ਸਮਾਂ ਜਿਹੜਾ ਦੋਨੇ ਜੀਆ ਨੇ ਕੰਮ ਕਰਨਾ ਜੇ ਕੰਮ ਨਹੀਂ ਕਰਦੇ ਘਰ ਨਹੀਂ ਤੁਰਦਾ ਛੋਟਾ ਘਰ ਲੈ ਲਓ بڑا ਘਰ ਲੈ ਲਓ ਫੇਰ ਵੀ ਮਰਨਾ ਪੈਂਦਾ ਇਕੱਲੇ ਦੇ ਨਾਲ ਰੋਟੀ ਨਹੀਂ ਚੱਲਦੀ ਬਹੁਤ ਔਖ ਹੈ ਔਰ ਕੋਈ ਵੀ ਮਾਪਾ ਨਹੀਂ ਚਾਹੁੰਦਾ ਵੀ ਸਾਡੇ ਪੁੱਤ ਧੀ ਦੀ ਲਾਸ਼ ਸਾਰੇ ਚਾਹੁੰਦੇ ਤੇ ਸੇਰੇ ਬੰਨ ਕੇ ਘੂੜੀਆਂ ਚੜ੍ਹ ਆ ਕੇ ਹੱਥ ਖੜੇ ਹੋ ਜਾਂਦੇ ਦੋਸ਼ ਕਿਸੇ ਦਾ ਨਹੀਂ ਇਹਦੇ ਵਿੱਚ ਬਹੁਤ ਸਿਆਣੇ ਹੋ ਗਏ ਮਾਪੇ ਪਹਿਲੀ ਪਹਿਲੀ ਵੇਗ ਦੇ ਵਿੱਚ ਜਦ ਬਿੰਦੀ ਜੋਲ ਉਹਨਾਂ ਤੋਂ ਗੱਲ ਸ਼ੁਰੂ ਹੋਈ ਜਿਹੜੇ 100 ਪਹਿਲਾ ਤੁਰਗੇ ਉਹਦੇ ਬਾਅਦ ਆਰਾਮ ਰਿਹਾ 10 ਸਾਲ ਬਹੁਤ ਲੋਕਾਂ ਨੇ ਤੇ ਉਸ ਖਿਆਲ ਦੇ ਵਿੱਚ ਇਹ ਗੱਲਾਂ ਵਧੀਆ ਹੁੰਦੀਆਂ ਰਹੀਆਂ ਪਰ ਹੁਣ ਫੇਰ ਜਿਹੜੀ ਗੜਬੜ ਹੋ ਗਈ ਇਸ ਵੀ ਗੱਲ ਇਹ ਹੈ ਕਿਸ ਤੇ ਦੋਸ਼ ਦਈਏ ਦੋਨਾਂ ਮੁੰਡਿਆਂ ਦਾ ਨਬੀ ਸਿੱਧੂ ਹੈ ਸ਼ਾਇਦ ਹਰਮਨ ਮੰਗਟਾ ਹੈ ਦੋਨੇ ਮੁੰਡਿਆਂ ਦੀਆਂ ਲਾਸ਼ਾਂ ਮਿਲੀ ਐਡਮਿੰਟਨ ਇਥੋਂ ਬੀਸੀ ਦੀ ਨੰਬਰ ਪਲੇਟ ਐਥੋਂ ਗਏ ਹੋਏ ਸੀ ਇਹ ਪੁਲਿਸ ਉਹਨਾਂ ਦੇ ਬਾਰੇ ਜਾਣਕਾਰੀ ਰੱਖਦੀ ਸੀ ਆਉਣ ਦਿਨਾਂ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਬਾਰੇ ਹੋਰ ਜਾਣਕਾਰੀ ਦੇਵਾਂਗਾ ਪਰ ਬਹੁਤ ਦੁਖਦ ਦੀ ਖਬਰ ਆ ਦੇ ਵਿੱਚ ਪਾਈਚਰਾ ਪਿੰਜਾ ਪਿਆ ਰਾਤ ਦਾ ਅੱਜ ਕੱਲ੍ਹ ਖਬਰਾਂ ਵਪਾਰਕ ਸੰਦੇਸ਼ 11:28 ਮਿੰਟ ਹੋ ਗਿਆ ਇੱਕ ਪ੍ਰਾਪਰਟੀ ਸੇਲ ਤੇ 1493840 ਐਵਨਿਊ 9.5 ਏਕੜ ਹੈ 22 ਲੱਖ 80 ਹਜ਼ਾਰ ਉਹਦੀ ਕੀਮਤ ਹੈ ਬਿਲਕੁਲ ਸਰੀ ਦੇ ਵਿੱਚੇ ਪੈਂਦੀ ਹੈ ਜੇ ਤੁਸੀਂ 40 ਐਵਨਿਊ ਤੇ 52 ਜਾਨੇ ਹੋ ਰਾਈਟ ਕਰ ਲਵੋ ਜਾਂ ਹੋਰ ਪਾਸੇ ਵੀ ਸੜਕ ਸਿੱਧੀ ਹੈ ਇਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਵੀ ਤੁਸੀਂ ਬੇਰੀ ਲਾ ਸਕਦੇ ਹੋ ਘਰ ਸਿਰੇ ਦਾ ਬਣਾ ਸਕਦੇ ਹੋ 9.5 ਕਿੱਲੇ ਆ 22 ਲੱਖ 80 ਹਜ਼ਾਰ ਕੀਮਤ ਹੈ ਹਰਲੀਨ ਮੰਗਟ 6848888 ਨੰਬਰ ਹੈ 604 684 8888 ਇਸ ਦੇ ਨਾਲ ਹੀ ਗਗਨ ਸਿੰਘ ਕੋਈ ਵੀ ਪੈਸੇ ਭੇਜਣੇ ਆ ਪੰਜਾਬ ਨੂੰ ਜਾਂ ਡਾਲਰਾਂ ਦੇ ਰੁਪਏ ਤੇ ਰੁਪਈਆਂ ਦੇ ਡਾਲਰ ਬਣਾਉਣੇ ਤਾਂ 604 349 ਬੈਂਕਾਂ ਦੇ ਵਿੱਚ ਕੁਝ ਪੈਸਾ ਜਮ੍ਹਾਂ ਕਰਾਉਣ ਕਰਦੇ ਉਹਨਾਂ ਦੀ ਸਲਾਹ ਲੈ ਲਓ ਵਗੈਰਾ ਦਾ ਚੱਕਰ ਬਾ ਪਾ ਰਹੇ ਨੇ ਉਹ ਇਉਂ ਨਾ ਹੋਣ ਵੀ ਤੁਹਾਡੀ ਛੁੱਟੀ ਮੁੱਕ ਜਾ ਤੁਹਾਡਾ ਪੈਨ ਕਾਰਡ ਨਾ ਬਣੇ ਤੇ ਪੈਸੇ ਨਾ ਕਢਾ ਸਕੋ ਬੈਂਕਾਂ ਵਾਲੇ ਬਹੁਤ ਸਟ੍ਰਿਕਟ ਹੋਏ ਇਉਂ ਨਹੀਂ ਮੈਂ ਕਹਿੰਦਾ ਬੈਂਕਾ ਰਹੀ ਨਾ ਘੱਲੋ ਤੁਹਾਡੀ ਮਰਜ਼ੀ ਆ ਪਰ ਇੱਕ ਵਾਰ ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਤੋਂ ਪਤਾ ਕਰ ਲਓ ਵੀ ਹੈ ਕਿ 6043941313 ਨੰਬਰ ਹੈ 8140120 ਸਟਰੀਟ 102 ਨੰਬਰ ਯੂਨਿਟ ਵੀਜ਼ਾ ਜਿੱਥੇ ਭਾਰਤ ਦਾ ਉਹਦੇ ਥੱਲੇ ਦਫ਼ਤਰ ਹੈ ਰਗਨ ਸਿੰਘ ਉਹਨਾਂ ਦਾ ਇਸ ਦੇ ਨਾਲ ਹੀ ਏਟੀਆ ਟਰੱਕ ਐਂਡ ਬਾਡੀ ਪੇਂਟ 6049401080 ਆਈਸੀਬੀਸੀਡੀ ਐਕਸਪ੍ਰੈਸ ਸ਼ਾਪ ਅਤੇ ਐਕਸਪ੍ਰੈਸ ਗਲਾਸ ਸ਼ਾਪ ਪਰ ਟਰੱਕ ਕਰ ਟ੍ਰੇਲਰ ਰਿਪੇਅਰ ਤੇ ਬਾਡੀ ਵਰਕ ਦਾ ਕੰਮ ਹੈ ਇਸ ਦੇ ਨਾਲ ਵੱਡੀ ਫੈਸਿਲਿਟੀ ਤੇ ਵੱਡੀ ਟ੍ਰੱਕ ਤੇ ਡੰਪ ਟ੍ਰੱਕ ਤੁਸੀਂ ਖੜਾ ਸਕਦੇ ਹੋ ਬੋਡੀ ਵਰਕ ਤੇ ਪੇਂਟ ਦਾ ਕੰਮ ਹੋ ਸਕਦਾ 6049401080 ICBS ਦੀ ਐਕਸਪ੍ਰੈਸ ਸ਼ਾਪ ਗਲਾਸ ਸ਼ਾਪ ਜਿਸ ਪਹਿਲਾਂ ਦੱਸਿਆ ਸੀ ਗੁਰਜਤ ਸਿੰਘ ਜੀ ਮੇਰੇ ਨਾਲ ਗੱਲਬਾਤ ਕਰਨਗੇ ਜੀਵਨ ਚਰਚਾ ਇੱਕ ਜਿਹੜੀ ਸ਼ੁਰੂ ਕੀਤੀ ਹੈ ਉਹ ਬਹੁਤ ਤੁਸੀਂ ਪਿਆਰ ਕਰਦੇ ਹੋ ਉਹਦੀਆਂ ਗੱਲਾਂ ਬਾਤਾਂ ਤੁਹਾਨੂੰ ਬਹੁਤ ਸੁਣੀਆਂ ਲੱਗਦੀਆਂ ਔਰ ਇਹੀ ਇਨਾ ਪ੍ਰੋਗਰਾਮਾਂ ਦੇ ਵਿੱਚ ਹੈ ਕਿ ਆਪਣੀ ਗੱਲ ਆਪਣਾ ਢਿੱਡ ਫੋਲ ਕੇ ਭਾਈਚਾਰੇ ਦੀ ਗੱਲ ਭਾਈਚਾਰੇ ਦੀਆਂ ਮੁਸ਼ਕਲਾਂ ਜਿਹੜੀਆਂ ਉਸ ਦੀ ਗੱਲ ਕੀਤੀ ਜਾਵੇ ਇੱਕ ਭਾਈਚਾਰੇ ਹਾਨੀ ਆ ਤਾਂ ਭਾਈਚਾਰੇ ਭਾਈਚਾਰੇ ਦੀ ਹੈ ਪ੍ਰੋਗਰਾਮਾਂ ਦੇ ਦੌਰਾਨ ਕੁਝ ਚੀਜ਼ਾਂ ਜਦ ਠੀਕ ਨਹੀਂ ਹੋ ਰਹੀਆਂ ਉਹਦੇ ਬਾਰੇ ਜਦ ਗੱਲ ਹੁੰਦੀ ਹੈ ਕਿਹੜਾ ਚੜਦਾ ਬਹੁਤ ਉਫਾ ਲੱਗਦਾ ਪਰ ਉਹ ਪਰਸਨਲ ਲੈਵਲ ਤੇ ਦੁਸ਼ਮਣੀ ਦੇ ਲੈਵਲ ਤੇ ਨਾ ਉਸ ਸੋਚੋ ਗੱਲ ਜਿਹੜੀ ਸਹੀ ਹੈ ਸਹੀ ਨੂੰ ਲੋਕ ਸਹੀ ਉਹ ਕਹਿੰਦੇ ਆ ਜੇ ਠੱਗ ਬਣਨਾ ਹੈ ਤੇ ਉਹਦੇ ਬਾਅਦ ਕਹਿਣਾ ਵੀ ਅਸੀਂ ਸਾਧੂ ਗੱਲਾਂ ਦੋ ਨਹੀਂ ਹੋਣੀਆਂ ਠੱਗ ਕਹਿਣਾ ਤਾਂ ਕਹਾਓ ਜਰ ਦੇ 3 ਪੀਸ ਪਾ ਕੇ ਬੋਲ ਆ ਕੇ ਸਿੱਧੇ ਜਿਵੇਂ ਬਣੇ ਫਿਰਦੇ ਨਾਲ ਮਾਰਦੇ ਹੋ ਠੱਗੀਆਂ ਉਹ ਖੋਦੇ ਤੇ ਹੁੰਦਾ ਸਿੱਧੀ ਜ਼ਿੰਦਗੀ ਰੱਖੋ ਬਹੁਤ ਛੋਟੀ ਜ਼ਿੰਦਗੀ ਇਹਦੇ ਵਿੱਚ ਵਲਫੇਅਰ ਕਰਨ ਦੀ ਲੋੜ ਨਹੀਂ ਮਾਲਕ ਜਿਹੜੇ ਵੀ ਰੂਪ ਦੇ ਵਿੱਚ ਤੁਸੀਂ ਫਿਰਦੇ ਹੋ ਉਹ ਸਵੀਕਾਰ ਕਰਦਾ ਔਰ ਉਸ ਕੀਤੇ ਦੀ ਤੁਹਾਨੂੰ ਉਹ ਜਿਹੜਾ ਕੁਝ ਵੀ ਗਲਤ ਕਰਦੇ ਹੋ ਤਾਂ ਫੇਸ ਕਰਨਾ ਪੈਣਾ ਚੰਗਾ ਕਰਦੇ ਤਾਂ ਸੋਭਾ ਹੋਏਗੀ ਹੋਏਗੀ ਪ੍ਰਜਾਪ ਸਿੰਘ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਤੇ ਪਿਆਰ ਭਰੀ ਲੱਗੀ ਸਤਿ ਸ੍ਰੀ ਅਕਾਲ ਗਲਵਾਦੀ ਭਾਈਚਾਰੇ ਦੇ ਵਿੱਚ ਕੱਲ ਦੀ ਜਦ 9 ਦੋ ਨੌਜਵਾਨ ਮੁੰਡਿਆਂ ਦੀ ਸਿੱਧੂ ਪਰਿਵਾਰ ਪਰਿਵਾਰ ਆ ਆਪਣਾ ਪਰਿਵਾਰ ਆ ਸਾਡਾ ਇਹ ਬਹੁਤ ਦੁੱਖ ਦੀ ਇਹ ਘੜੀ ਹੈ ਜੁਆਕ ਜੱਲੇ ਇਹ ਬੜੇ ਤਕੜੇ ਜਵਾਨ ਹੁੰਦੇ ਅੱਖੀਂ ਵੇਖਿਆ ਮੰਗੜ ਮੁੰਡਾ ਤੇ ਕੀ ਕਰ ਸਕਦਾ ਬੰਦਾ ਇੱਥੋਂ ਕੁਝ ਸ਼ੁਰੂ ਕਰਨੀ ਚਾਹੁੰਦਾ ਮੈਂ ਗੱਲ ਕੀ ਸੋਚਦੇ ਤੁਸੀਂ ਇਸ ਨੂੰ ਕੀ ਹੱਲ ਹੋ ਸਕਦਾ ਹੈ ਇਸ ਤਰ੍ਹਾਂ ਹੈਗਾ ਕਿ ਆਪਾਂ ਨੂੰ ਗੱਲ ਉੱਥੇ ਆਣੀ ਕਿ ਆਪਾਂ ਨੂੰ ਲਾਈਫ ਪੈਣੀ ਹੈ ਇੱਕ ਤਾਂ ਹਰ ਬੰਦੇ ਨੂੰ ਲੱਗਦਾ ਮੈਨੂੰ ਲਾਈਫ ਪਤਾ ਹੀ ਹੈ ਉਨਾ অর ਮੈਂ ਤਾਂ ਅਦਾ ਪਰਮਾਤਮਾ ਨੇ ਹਰ ਇੱਕ ਦੀ ਕੰਚ ਫੂਕ ਮਾਰ ਕੇ ਤੇ ਜਾਇਆ ਵੀ ਤੇਰੇ ਕੋ ਸਿਆਣਾ ਬੰਦਾ ਮੈਂ ਕੋਈ ਨਹੀਂ ਲਾਇਆ ਹੂੰ ਉਸੇ ਗਲਤ ਫੈਸਲੇ ਚ ਆਦਮੀ ساری ਜ਼ਿੰਦਗੀ ਕੱਢ ਦਿੰਦਾ ਹੂੰ ਉਹਨਾਂ ਹਾਦਸੇ ਹੋ ਰਹੇ ਆ ਤੇ ਤੁਸੀਂ ਮੈਂ ਜਾਂ ਦੇਖੋ ਗੱਲ ਬੜੀ ਸਟ੍ਰੇਟ ਫਾਰਵਰਡ ਕਰਨੀ ਚਾਹੀਦੀ ਹੈ ਤੁਸੀਂ ਮੈਂ ਜਾਂ ਕੋਈ ਪੇਰੈਂਟਸ ਜਾਂ ਕੋਈ ਵੀ ਆਪਾਂ ਇਹਦੇ ਇਹ ਸਪੈਸ ਸੋਸਾਇਟੀ ਉਪਰ ਬਤ ਨਹੀਂ ਕਰਦੇ ਇਸ ਦੇ ਇਹ ਇਹ ਇਹ ਕਹਿ ਸਕਦੇ ਜੀ ਉਹ ਇੱਕ ਬੰਦਾ ਖਰਾਬ ਹੈ ਦੋ ਬੰਦਾ ਖਰਾਬ ਹੈ ਨਹੀਂ ਉਹਨਾਂ ਦੇ ਹੋ ਗਿਆ ਸਾਡੇ ਨਹੀਂ ਹੋਣਾ ਹਾਂ ਯਾ ਫਿਰ ਜ਼ਿੰਮੇਵਾਰ ਨਹੀਂ ਆ ਇਸ ਇਸ ਮਾਹੌਲ ਵਾਸਤੇ ਯਾ ਸਾਡੇ ਕੋਲ ਮੇਰੇ ਕੋਲ ਹੈ ਕੋਈ ਨਹੀਂ ਬੀਟੀ ਕਹਿ ਸਕਦੇ ਹਨ ਹੈਨਾ ਕਈ ਵਾਰੀ ਕਰਨਾ ਸ਼ੁਰੂ ਕਰ ਦਿੰਦੇ ਬਾਅਦ ਤਰਕ ਦਿੰਦੇ ਤਰਕ ਤੋਂ ਅਸੀਂ ਬਹੁਤ ਗ੍ਰੇਟ ਹੈਗੇ ਆ ਹਰ ਹਰ ਚੀਜ਼ ਦਾ ਇੱਕ ਤਰ੍ਹਾਂ ਦਾ ਲਵਨ ਹੈ ਜੀ ਇਸ ਕਰਕੇ ਆ ਨਹੀਂ ਦਿੱਤਾ ਕਿਹੜਾ ਜੀ ਬੀਤੀ ਪੁੱਤੋ ਦਾ ਮਰੇ ਕੋਈ ਨਹੀਂ ਚਾਹੁੰਦਾ ਕਹਿੰਦੇ ਹੋ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਤੁਸੀਂ ਹੈਗੇ ਹੋ ਉਹਦੀ ਵਾਈਬ੍ਰੇਸ਼ਨ ਬੱਚਿਆਂ ਤੱਕ ਪਹੁੰਚਦੀ ਉਹ ਚਾਹੇ ਟੀਚਰ ਹੋਣ ਸਕੂਲ 'ਚ ਚਾਹੇ ਹੋਣ ਸੋ ਕਾਲਡ ਤੇ ਚਾਹੇ ਅਸੀਂ ਪੇਰੈਂਟਸ ਹੋਈਏ ਜਿਹੜੀ ਚੀਜ਼ ਮੈਂ ਹੈਗਾ ਨਾ ਉਹਦੀ ਵਾਈਬ੍ਰੇਸ਼ਨ ਬੱਚੇ ਤੱਕ ਪਹੁੰਚ ਹੀ ਜਾਣੀ ਹੈ ਹੂੰ ਕਈ ਵਾਰੀ ਤੁਸੀਂ ਕਹੋਗੇ ਤੁਹਾਨੂੰ ਹੈਰਾਨੀ ਹੋਏਗੀ ਕਿ ਕਈ ਦੇ ਘਰ ਕੀ ਇਹੋ ਜਿਹੇ ਮਹਾਨ ਬੱਚੇ ਪੈਦਾ ਹੁੰਦੇ ਸਾਡੇ ਘਰਾਂ 'ਚ ਕਿਉਂ ਨਹੀਂ ਹੁੰਦੇ ਸਾਡੇ ਘਰਾਂ 'ਚ ਸੋਚ ਕੇ ਦੇਖਿਓ ਉਧਰ ਵੀ ਬੱਚੇ ਨੇ ਜਿਹੜੇ ਗੁਰੂ ਘਰਾਂ 'ਚ ਪੈਦਾ ਸਿਰ ਉੱਥੇ ਮਨ ਕੋਊਗਾ ਕੌਤਕਾ ਉਫਲਾਣਾ ਬੜੀ ਧਾਰਮਿਕ ਕਹਾਣੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਸਕੂਲ ਵਿੱਚ ਇਹ ਸਿਖਾਇਆ ਜਾਂਦਾ ਕਿ ਇੰਡੀਵਿਜੁਅਲਿਟੀ ਬੜੀ ਇੰਪੋਰਟੈਂਟ ਆ ਜੋ ਵੀ ਕਲਚਰ ਹੋਏਗਾ ਸਾਨੂੰ ਆਪਣਾ ਤੇ 911 ਨੂੰ ਫੋਨ ਕਰ ਦੇਈ ਹੈ ਨਾ ਪੇਰੈਂਟਸ ਘਰ ਚ ਬਰੇ ਹੋਏ ਆ ਫਿਰ ਉਹ ਸਕੂਲ ਚ ਕੇ ਪਹੁੰਚੇ ਹੋਏ ਨੇ ਉੱਥੇ ਕਹਿਣ ਵਾਲਾ ਪੁਰਾਣਾ ਦੇਖੋ ਮੈਂ ਮੈਂ ਕੋਈ ਡਕੀਆਂ ਨੂੰ ਸਲੀਨ ਮੈਂ ਇੰਜੀਨੀਅਰਿੰਗ ਕੀਤੀ ਪਰ ਪੁਰਾਣਾ ਟਾਈਮ ਦੇਖੋ ਜਿੱਥੇ ਬੱਚੇ ਨੂੰ ਇਹ ਪੜਾਇਆ ਜਾਂਦਾ ਸੀ ਉੱਥੇ ਸਾਡੀ ਲੈਂਗੁਏਜ ਟੀਚਰ ਸ਼ਬਦ ਹੈ ਨਹੀਂ ਟੀਚਰ ਦਾ ਮ ਜਿਹੜਾ ਆਪ ਉਹ ਜਿਹੜਾ ਨਹੀਂ ਹੈ ਸਿਰ ਦੱਸਦਾ ਪਿਆ ਸਾਡੇ ਦੋ ਸ਼ਬਦ ਹੈ ਸਾਡੀ ਲੰਗਵਿਚ ਆਚਾਰ્ય ਔਰ ਗੁਰੂ ਆਚਾਰ્ય ਉਹ ਹੈ ਜਿਹੜਾ ਆਪਣੇ ਆਚਰਣ ਤੋਂ ਸਿਖਾਉਂਦਾ ਉਹਦਾ ਆਪਣਾ ਉੱਠਣਾ ਬੈਠਣਾ ਆਚਰਣ ਆਚਰਣ ਕੀ ਹੈ ਮੈਂ ਤਾਂ ਸ਼ਾਮ ਨੂੰ ਮੁਰਗੇ ਦੀ ਟਾਂਗਾ ਚਫੜੀ ਹੋਈ ਹੈ ਔਰ ਗੱਲਾਂ ਪੁੱਠੀਆਂ ਸਿੱਧੀਆਂ ਕਰ ਰਿਹਾ ਮੈਂ ਤਾਂ ਕੰਪੀਟੀਸ਼ਨ ਦੀ ਗੱਲਾਂ ਕਰ ਰਿਹਾ ਬੱਚੇ ਨੂੰ ਪ੍ਰੀਮ ਸਿਖਾ ਰਿਹਾ ਜਿਹੜਾ ਬੰਦਾ 13 ਘੰਟੇ ਜਾਂ 10 ਘੰਟੇ ਠੱਗੀਆਂ ਮਾਰ ਕੇ ਸ਼ਾਮ ਨੂੰ ਘਰ ਆਇਆ ਔਰ ਬੱਚੇ ਨੂੰ ਕਹਿੰਦਾ ਵੀ ਆਪਸ ਚਪਰੀਮ ਕਰੋ ਮੇਰੀ ਰਿਸਪੈਕਟ ਕਰ ਕੋਈ ਫਰਕ ਨਹੀਂ ਪੈਂਦਾ ਜੋ ਤੁਸੀਂ ਕਰਕੇ ਆਏ ਨਾਲ ਲੈ ਕੇ ਆਏ ਉਹ ਜਦੋਂ ਮੈਂ એનર્ਜੀ ਦੀ ਗੱਲ ਕਰਉਣੀ ਵਾਈਬ੍ਰੇਸ਼ਨ ਨਾਲ ਲੈ ਕੇ ਆਇਓ ਉਹ ਬੱਚੇ ਤੱਕ ਪਹੁੰਚ ਜਾਣੀ ਹੈ ਇਹ ਬੱਚੇ ਨੂੰ ਮੈਸੇਜ ਕਿੱਦਾਂ ਪਹੁੰਚੇਗਾ ਕਿ ਪੈਸਾ ਬਹੁਤ ਇੰਪੋਰਟੈਂਟ ਹੈ ਜਿੱਦਾਂ ਮਰਜ਼ੀ ਕਮਾਵਾਂ ਮੈਂ ਕਿੱਦਾਂ ਮੈਸੇਜ ਪਹੁੰਚ ਗਿਆ ਬੱਚੇ ਨੂੰ ਬੱਚੇ ਨੂੰ ਪਤਾ ਨਹੀਂ ਹੁੰਦਾ ਉਹ ਕਿਹੜੀ એનર્ਜੀ ਸੀ ਆਸਪਾਸ ਜਿੰਨੇ ਦੇ ਮਾਈਂਡ ਚ ਇਹ ਚੀਜ਼ ਦੇਖਤੀ ਕਿ ਪੈਸਾ ਜ਼ਰੂਰੀ ਹੈ ਜਿੱਦਾਂ ਮਰਜ਼ੀ ਆਵੇ ਮੈਂ ਅਗਰ ਮੇਰਾ ਮੈਸੇਜ ਮੇਰੇ ਬੱਚੇ ਕੋਲ ਪਹੁੰਚਿਆ ਤੇ ਮਾ ਮੈਂ ਕੁਛ ਨਾ ਕੁਛ ਮੇਰੀ ਪ੍ਰੈਜ਼ੈਂਸ ਨੇ ਦੇਖੋ ਜੋ ਗੁਰਦੁਆਰੇ ਦਾ ਦੇ ਕਹਿੰਦੇ ਕਬੀਰ ਕਿਸੇ ਦੇ ਮਰਿਆਂ ਤੇ ਗਿਆ ਹੋਇਆ ਉਹ ਕਹਿੰਦਾ ਪਛਾਣਾਂਗਾ ਕਿਵੇਂ ਕਹਿੰਦੇ ਵੀ ਜਿਹਦੇ ਪਿੱਛੇ ਸਿਗਰ ਦੇ ਆਸ-ਪਾਸ ਪ੍ਰਕਾਸ਼ ਜਗਦਾ ਹੋਊਗਾ ਉਹ ਕਬੀਰ ਪਰ ਕਿਸੇ ਇੱਕ ਬੰਦੇ ਮੌਤ ਦੇਖ ਕੇ ਨਾ ਉਸ ਟਾਈਮ ਸਾਰਿਆਂ ਨੂੰ ਥੋੜੀ ਜਿਹੀ ਯਾਦ ਸੀ ਆਪਣੀ ਮੌਤ ਪਰ ਮੈਂ ਤੋਂ ਨਾ ਹੱਥ ਪੈਲੀ ਧੋਕੇ ਮੈਨੂੰ ਹੁਣ ਵੀ ਯਾਦ ਹੈ ਬਾਕੀ ਭੁੱਲ ਗਏ ਇਸ ਕਰਕੇ ਮੇਰਾ ਪ੍ਰਕਾਸ਼ ਅਜੇ ਵੀ ਹੈ ਹਾਂਜੀ ਬੱਚਾ ਫੇਰ ਕਿਵੇਂ ਵਿਗੜ ਗਿਆ ਫਿਰ ਜਿਹੜਾ ਜਿਨ੍ਹਾਂ ਚੋਂ ਬਹਿਦਾ ਉੱਠਦਾ ਉਹਦਾ ਕਾਰਨ ਬਹੁਤ ਇੱਥੇ ਕੇਸ ਨੇ ਤੁਸੀਂ ਨਹੀਂ ਜਾਣਦੇ ਮੈਂ ਡੀਪਲੀ ਜਾਣਦਾ ਬਾਪ ਬਹੁਤ ਸਿੱਧੇ ਨੇ ਪਰ ਜਵਾਕ ਵਿਗੜ ਗਿਆ ਸਰ ਮੈਂ ਇਹ ਕਹੇਗਾ ਡੀਜੀਪੀ ਨਹੀਂ ਜਾਣਦਾ ਰਿਆਂ ਇੰਡੀਆ ਦੇ ਵਿੱਚ ਜਿਨ੍ਹਾਂ ਨੇ ਕਦੀ ਟੱਚ ਕੀਤੀ ਹੁੰਨੀ ਕਿਸੇ ਕੋਲ ਲੈ ਕੇ ਲੇਕਿਨ ਮੁੰਡਾ ਡਰਗਸ ਚ ਡੀਲ ਕਰਦਾ ਰਿਆ ਮੈਂ ਇਹ ਵੀ ਕਹਾਂ ਪੇਰੈਂਟਸ ਕੰਡਰ ਰਿਸਪਾਂਸਿਬਲ ਹੈ ਇੱਥੇ ਦੇਖੋ ਜਿੱਥੇ ਇੰਡੀਵਿਜੁਐਲਿਟੀ ਸਿੱਖਾਈ ਜਾਂਦੀ ਹੈ ਇਹ ਤੋਂ ਉੱਚਾ ਹੋਣਾ ਕਿਉਂਦਾ ਤੂੰ ਗੱਲਾਂ ਬਾਕੀ ਚਾਏ ਕੋਈ ਬਸ ਕਾਨੂੰਨ ਬੈਠਾ ਸਾਰੇ ਬੈਠੇ ਉੱਥੇ ਕੰਪੀਟੀਸ਼ਨ ਦਿਖਾਇਆ ਜਾਂਦਾ ਕੋਆਪਰੇਸ਼ਨ ਕਿਹਨਿਸ ਕਰੀ ਜਾਂਦੀ ਮੈਂ ਤਾਂ ਕਹਾਂਗਾ ਮੈਂ ਕਹਿੰਦਾ ਵੀ ਸੋ ਕਾਲਡ ਜਿਹਨੂੰ ਮੈਂ ਸੰਤ ਕਰਨਾ ਹਰ ਸਕੂਲ ਚਾਹੀਦਾ ਜਿਹੜੇ ਦੱਸੇ ਕੱਕਾ ਇਹ ਪੈਸੇ ਕਮਾਉਣ ਦਾ ਤਰੀਕਾ ਵਗੈਰਾ ਸਕੂਲ ਦੱਸਿਆ ਜੀਵਨ ਜੀਣ ਦੀ ਜਾਚ ਇਹ ਹੈ ਅਕਾਦ ਇੱਕ ਬੈਠਾ ਹੋਣਾ ਚਾਹੀਦਾ ਉਸਤਾਦ ਹੋਵੇ ਜਿਹੜਾ ਕੰਪੀਟੀਸ਼ਨ ਨਾ ਸਿਖਾਵੇ ਕੋਆਪਰੇਸ਼ਨ ਸਿਖਾਵੇ ਜਿਹੜਾ ਜੈਲਸੀ ਵੀ ਤੇਰਾ ਹੀ ਭੈਣ ਭਾਈ ਹੈ ਪ੍ਰੇਮ ਸਿਖਾਵੇ ਕੋਈ ਨਹੀਂ ਸਿਖਾਂਦਾ ਬਸ ਇਹ ਗਰੀਬਸ ਲੱਗੀ ਹੋਈ ਹੈ ਜੀ ਕਿ ਤੁਸ ਨੂੰ ਦੇਖ ਲੋ ਬਿਲਕੁਲ ਜੀ ਹੈ ਹੀ ਵਰਤਾਰ ਆ ਇਹ ਆ ਉਹਨੇ ਮਿਲੀਅਨ ਬਣਾ ਲਿਆ ਉਹਨੇ ਆ ਅਸੀਂ ਹਰ ਦੂਜੀ ਗੱਲ ਸਾਡੀ ਮਿਲੀਅਨ ਤੇ ਜਾ ਕੇ ਮੁੱਕ ਜਦੋਂ ਸਾਰੀ ਇੱਕ ਸਿਟੀ ਹੈ ਜਿਹਦੇ ਵਿੱਚ એનર્ਜੀ ਦਾ ਇੱਕ ਥੋਟ ਹੈ ਕਿ ਪਾਸਾ ਜਿੰਦਾ ਮਰਜ਼ੀ ਖੋਲਵਾ ਬਿਲਕੁਲ ਉਹ ਉਹਨੂੰ ਮੈਂ ਕਹਾਂਗਾ ਸ਼ੈਲੋ એનર્ਜੀ એનર્ਜੀ ਕੀਤਾ ਉਹਨੇ ਇਹ ਸ਼ੈਲੋ એનર્ਜੀ ਫੀਲਡ ਕ੍ਰੀਏਟ ਕੀਤਾ ਤੁਸੀਂ ਜੇ ਇਹ ਜੇ ਸਾਰਾ ਜਿਹੜੇ ਕੋਈ ਤੁਸੀਂ ਕਹਿੰਦੇ ਉਹਨਾਂ ਛੱਡ ਕੇ ਮਾਲੇ ਤੇ ਦੌੜ ਜਾਂਦੇ ਸੀ ਰੱਬ ਦਾ ਜਪ ਜਪਨ ਤੋਂ ਕੋਈ ਪੂਰੀ ਤਰ੍ਹਾਂ ਪਾਗਲ ਲੋਕ ਨਹੀਂ ਸਕੇ ਅੱਗ ਲੱਗੀ ਹੋਵੇ ਘਰ ਨੂੰ ਛੱਡ ਕੇ ਉਹ ਦੇਖਦੇ ਸੀ ਪਿੰਡ ਹੈ ਇਹ ਸ਼ਹਿਰ ਹੈ ਇਹਨਾਂ ਦੇ ਵਿੱਚ ਹਰ ਕੋਈ ਇੱਕ ਦੂਜੇ ਨੂੰ ਟੱਕ ਲੱਗਾ ਹੈ ਔਰ ਜਦੋਂ ਓਵਰਲ ਐਨਰਜੀ ਫੀਲਡ ਕ੍ਰੀਏਟ ਹੋ ਰਿਹਾ ਇੱਥੇ ਉਹ ਨੈਗੇਟਿਵ ਹੋ ਰਿਹਾ ਬਹੁਤ ਸ਼ੈਲੋ ਹੈ ਇਸ ਇੰਚਲੋ ਲਿਫਟ ਵੀ ਲੋਕੀ ਜੇਕਰ ਮੈਂ ਆਪਣੇ ਚੇਤਨਾ ਉੱਚੀ ਚੱਕਣੀ ਹੈ ਤਾਂ ਮੈਨੂੰ ਬਹੁਤ ਜ਼ੋਰ ਲਗਾਉਣਾ ਪਏਗਾ ਮੈਂ ਨੋਟੇਚ ਚਲਾ ਜਾਣਾ ਜਿੱਥੇ ਨੈਚਰ ਜਵਾਕ ਨਹੀਂ ਵਿਗੜੇ ਆ ਚਾਰ ਗੋਰੀਆਂ ਦੇ ਘਰਾਂ ਜਵਾਕ ਗਗੜੇ ਨਹੀਂ ਇੱਥੇ ਬਦਨਾਮ ਗੈਂਗ ਨੇ ਹੈਵ ਦੇ ਜੋਲਾ ਜਾਂ ਸਕੋਰਪੀਓਨ ਨੇ ਜਾਂ ਉਹਦਾ ਚੋਤਾ ਪੱਕੇ ਡੈਜ਼ਿਗਨੇਸ਼ਨ ਹੈ ਪਰ ਆਮ ਘਰਾਂ ਦੇ ਜੁਆਕੇ ਚਚਕਮਾ ਹੈ ਨਹੀਂ ਕਿ ਪਹਿਲੇ ਦਿਨ ਤੋਂ ਅਪਨੈਸ ਚ ਪਿਓ ਪੁੱਤ ਨੂੰ ਨਾਲ ਬਿਠਾਉਂਦਾ 16 ਸਾਲ ਤੋਂ ਬਾਅਦ ਉਹਨੂੰ ਇੰਡੀਪੈਂਡੈਂਟ ਕਰਦੇ ਨੇ ਉਹਨੂੰ ਕੁਝ ਵੀ ਦੱਸਿਆ ਜਾਂਦਾ ਪੈਸਾ ਕੀ ਆ ਉਹਨਾਂ ਕਹੇ ਆਪੇ ਕੱਪ ਖੜਾ ਇਹੀ ਟੱਬਰ ਬਿਲਕੁਲ ਉਹ ਨੂੰ ਕਿਸੇ ਰੇਸ 'ਚ ਨਹੀਂ ਰੱਖਿਆ ਜਾ। ਬਿਲਕੁਲ। ਆਪਣੇ ਹੁਣ ਇੱਥੇ ਮਲਟੀ ਆ ਜਿਹੜੇ ਆਪਾਂ ਮਹਿਲ ਛੱਤੇ ਹੋਏ ਨੇ ਉਹਨਾਂ ਦੇ ਦਸਾਂ ਮਹਿਲਾਂ ਦੇ ਪੰਜ-ਪੰਜ ਸਪੈਸ਼ਲ ਦੇ ਘਰ ਗੱਭੋ ਉਹਦੇ ਵਿੱਚ ਫੁੱਟ ਦਾ ਕਿਸੇ ਦਾ ਰੈਂਚਰ ਵੀ ਇਹ ਬੋਰੇ ਦਾ ਉਹਦੇ ਵਿੱਚ ਵੀ ਸੱਤਾ ਬਿਲਕੁਲ ਬਿਲਕੁਲ। ਔਰ ਤੁਸੀਂ ਦੇਖੋ ਨਾਲੇ ਇੱਕ ਸ਼ੀਂਗ ਅਗਲੀ ਪ੍ਰਾਣੀ ਕਿ ਆਪਣੇ ਆਉਣ ਵਾਲੀ ਕੰਸਟਰਕਸ਼ਨ ਵਾਸਤੇ ਸੜਕਾਂ ਮੁਲਾਇਮ ਕਰਨ ਦੀ ਲੋੜ ਨਿਮਨ ਚੱਲੰਦ ਵੀ ਜਾ ਸਖਾਓ। ਉਹ ਸੜਕਾਂ ਦੀ ਜ਼ਿੰਦਗੀ ਦੀ ਐਂ ਹੀ ਰਹਿਣੀ ਆ ਜਿੱਦਾਂ ਹੈਗੀਆਂ। ਉਹਨਾਂ ਨੂੰ ਚੱਲਣ ਵੀ ਜਾ ਸਖਾਓ। ਮੈਂ ਸਿਰ ਕੰਨ ਗੇ ਇਹ ਸਾਰੀ ਚੀਜ਼ਾਂ ਤੋਂ ਬਾਹਰ ਆਣ ਦਾ ਕੋਈ ਸ਼ਾਰਟਕਟ ਗਲਤ ਫੈਸਲੇ ਕੱਢ ਪਤਾ ਇੱਕ ਹੋਏਗਾ ਤੁਹਾਨੂੰ ਪਤਾ ਫੀਲਡ ਐਨਾ ਵੱਡਾ ਹੋਊਗਾ ਕਿ ਨਾ ਚੰਦ ਹੋਊਗਾ ਤੁਹਾਡੇ ਆਸ-ਪਾਸ ਦੇ ਬੱਚੇ ਆਸ-ਪਾਸ ਦੇ ਲੋਕ ਉਸ ਤੋਂ ਇਨਫਲੂਐਂਸ ਹੋਣਗੇ ਕਾਮ ਰਹਿਣਗੇ ਸੁਖਸ਼ੰਨ ਤੁਹਾਡੇ ਉੱਤੇ ਲੱਗਣਗੇ ਕਿਸ ਤਰ੍ਹਾਂ ਦਾ ਮੇਰਾ ਫਾਦਲਾ ਮੇਰਾ ਭਰਾ ਜਾਂ ਮੇਰਾ ਕਿਸ ਤਰ੍ਹਾਂ ਦਾ ਨਾਕਾਮ ਉਨਾ ਨਹੀਂ ਮੱਸੀ ਦੇ ਜਾਊਗਾ ਕਿ ਵੀ ਪਿਆਸੇ ਸਭ ਕੁਝ ਲੁੱਟੇ ਤੋਂ ਛੁੱਟ ਕਰ ਲੈ ਤੇ ਫਾਦਰ ਦਿਨ ਤੋਂ ਸ਼ਾਮ ਤੱਕ ਦੌੜ ਰਿਹਾ ਟੀਚਰ ਵੀ ਹੀ ਰਿਹਾ ਕਿ ਪਿਆਸਾ ਇੰਜੀਨੀਅਰ ਬਣ ਜਾ ਜਾ ਮੈਂ ਨਹੀਂ ਕਹ ਰਿਹਾ ਨਾ ਬਣੋ ਲੇਕਿਨ ਪਰਸਨਲ ਲਾਈਫ ਚਾਹੀਦੀ ਹੈ ਸਿਖਾਇਆ ਜਾਂਦਾ ਵੀ ਸਹਿਜ ਕੀ ਸਹਿਜ ਕੀ ਹੈ ਸਹਿਜ ਹੋ ਕੇ ਵੀ ਚੀਜ਼ਾਂ ਮਿਲਦਾ ਜੋ ਨਾ ਨਹੀਂ ਮਿਲਣ ਤੇਰੇ ਦੁੱਖ ਦਾ ਕਾਰਨ ਨਹੀਂ ਬਣਨਾ ਚਾਹੀਦਾ ਉਹ ਜਿਹੜਾ ਓਵਰਆਲ એનર્ਜੀ ਫੀਲਡ ਮਨਫਲ એનર્ਜੀ ਫੀਲਡ ਦਾ ਨਜ਼ਰ ਖਾਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਜਿਵੇਂ ਫੀਲਡ ਗੈਨ ਸੂਰ ਕਮਿਊਨਿਟੀ ਵੀ ਹੈ ਲੈਟਸ ਨੋਟ ਬਲੇਮ ਆਸਰਸ ਓਨਲੀ ਪਰ ਜਿੱਥੇ ਵੀ ਇਹ ਚੀਜ਼ ਕ੍ਰੀਏਟ ਕੀਤੀ ਜਾਂਦੀ ਹੈ ਕਿ ਸਿਰਫ ਇਹੀ ਦੌੜ ਹੈ ਇਹੀ ਭੱਜ ਹੈ ਇਹੀ ਪੈਸਾ ਉੱਥੇ ਅਨਫੋਰਚੂਨੇਟਲੀ ਇਨਸੀਡੈਂਟ ਹੋਣਗੇ ਔਰ ਤੁਸੀਂ ਕਹੋਗੇ ਵੀ ਪੇਰੈਂਟਸ ਕੱਲੇ ਨੋ ਲੈਟਸ ਨੋਟ ਓਨਲੀ ਬਲੇਮ ਪੇਰੈਂਟਸ ਐਜ਼ ਅ ਸੋਸਾਇਟੀ ਪੇਰੈਂਟਸ ਟੀਚਰਸ ਉਹ ਨਾਦਕ ਜਿੱਦਾਂ ਕਿਤਨਾ ਮੇਰੀ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਬੱਚੇ ਥੋੜੀ ਪੜਦੇ ਨੇ ਅੱਛਾ ਤਾਂ ਕਈ ਵਾਰ ਹੀ ਆ ਲੱਗਾ ਟੀਚਰ ਹੀ ਪੜਨ ਲੱਗ ਉਸ ਨੂੰ ਚਾਹੁੰਦਾ ਬੱਚੇ ਤਾਂ ਪੜਨ ਲੱਗ ਜਾਂਦੇ ਹੀ ਨਹੀਂ ਬਈ ਉਹ ਤਾਂ ਘਰ ਦੇ ਸੋਚਦੇ এডুকেশন ਦਾ ਮਤਲਬ ਇਹ ਹੁੰਦਾ ਕਿ ਡਾਰਕਨੈਸ ਤੋਂ ਲਾਈਟ ਵੱਲ ਜਾਣਾ ਪਰ ਅਸੀਂ ਤਾਂ ਅਸੀਂ ਕੀ ਕਰ ਰਹੇ ਹਾਂ ਕੇ ਅਸੀਂ ਡਾਰਕਨੈਸ ਵਿੱਚ ਹੱਥ ਪੈਰ ਡਾਰਕਨੈਸ ਵਿੱਚ ਕਿਵੇਂ ਤੁਸੀਂ ਹਾਂ ਇਹ ਹੋਵੇ ਤਾਂ ਸਾਨੂੰ ਕੁਝ ਇਹਦਾ ਸੋਚਣਾ ਚਾਹੀਦਾ ਕਿ ਲਾਈਫ ਕਿੱਦਾਂ ਸਮਝੀ ਜਾਏ ਪਹਿਲੇ ਪੇਰੈਂਟ ਸਮਝਣ ਤੇ ਮੇਰੇ ਸੋਸਾਇਟੀ ਬੀਨ ਕਰਦੇ ਹੋ ਸਮਝਣ ਦਾ ਮਤਲਬ ਕੀ ਹੈ ਕੱਲਾ ਸਿਖਾਓ ਕੋਆਪਰੇਸ਼ਨ ਯਾ ਲੈ ਸਿਨੇ ਸਿਖਾਓ ਔਰ ਪ੍ਰੇਮ ਸਿਖਾਇਆ ਨਹੀਂ ਹੁੰਦਾ ਪ੍ਰੇਮ ਕਰੀ ਪ੍ਰੈਜੈਂਸ ਬਣਾਉਂਦਾ ਉਹ ਡੰਡਾ ਵੜ ਗਿਆ ਇਹ ਤਾਂ ਹਨ ਉਹ ਕਹਿੰਦੇ ਕਹਾਣੀ ਸੁਣੀ ਸੀ ਕਹਿੰਦੇ ਕਰ ਰਹੇ ਬੱਚਿਆਂ ਨੂੰ ਕਹਿ ਰਹੇ ਨਾਨ ਵਾਇਲੈਂਟ ਪ੍ਰੋਪ੍ਰੀਟਸ ਭਾਈ ਤੁਸੀਂ ਆਪਣੇ ਲਾਖੀ ਕਰੋ ਜਿਹੜੀ ਭੱਜਨੱਠ ਪਈ ਹੋਈ ਹੈ ਹੌਲੀ ਜਿਹੜੀਆਂ ਚੀਜ਼ਾਂ ਚੇਂਜ ਆਏਗਾ એનર્ਜੀ ਫੀਲਡ ਹੀ ਚੇਂਜ ਕਰੂਗਾ ਕਿਉਂਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਸਾਇੰਟਿਫਿਕ ਗੱਲਾਂ ਨਾਲ ਬਾਰੇ ਸਟਾਟਲ ਐਗਜ਼ਾਮਪਲ ਕਿੱਥੇ ਕੁਝ ਬੰਦਿਆਂ ਨੇ ਚ ਮਿਲ ਕੇ ਹਜ਼ਾਰ ਕੇ 2000 ਬੰਦਿਆਂ ਨੇ ਇੱਕ ਮਹੀਨਾ ਲਗਾਤਾਰ ਅਵੇਲੇਬਲ ਹੈ ਜੋ ਸਿਟੀ ਵਿੱਚ ਕ੍ਰਾਈਮ ਰੇਟ ਉਸ ਦਿਨ ਡਾਊਨ ਆਇਆ ਕ੍ਰਾਈਮ ਰੇਟ ਇਸ ਵਿੱਚ ਕਈ ਸਮਾਗਰਿਕ ਹੈ ਕਿ ਤੁਹਾਡੇ ਕੁਝ ਬੰਦਿਆਂ ਦੇ ਨਾਲ ਮੈਡੀਟੇਟ ਕਰਨ ਨਾਲ ਗੱਲ ਸਮਝਣ ਨਾਲ ਕਿ ਕਿਹੋ ਜਿਹਾ એનર્ਜੀ ਫੀਲਡ ਕ੍ਰੀਏਟ ਹੁੰਦਾ ਮੇਰੀ ਬਣਾਈ ਦੀ ਕਰਨੀ ਹੈ ਜੋ ਅਵੇਲੇਬਲ ਹੈ ਡਾਟਾ ਕਿ ਭਈ ਜਿਹੜਾ ਕਈ ਸਾਲਾਂ ਦਾ ਡਾਟਾ ਉਸ ਤੋਂ ਵੀ ਆ ਗਿਆ ਕਹਿੰਦੇ ਅਸੀਂ ਕਹਿੰਦੇ ਇਹ ਹੋ ਗਿਆ ਵੀ ਹਰ ਚੀਜ਼ ਵੇਲੇ ਤੁਹਾਨੂੰ ਟਾਈਮ ਮਿਲਦਾ ਮੈਂ ਕਿਸੇ ਦੇ ਘਰ ਗਿਆ ਤੁਹਾਨੂੰ ਇੰਟਰਸਟਿੰਗ ਗੱਲ ਸੁਣਾਉਣਾ ਮੈਂ ਕਿਸੇ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਗੱਲ ਹੋ ਰਹੀ ਸੀ ਮੈਂ ਕਿਹਾ ਚਲੋ ਅੰਦਰ ਚਲੋ ਲਾਈਫ ਸਮਝੋ ਆਪਣੇ ਆਪ ਨੂੰ ਜਾਨੋ ਕਹਿੰਦੇ ਜਦੋਂ ਵਾਈ ਦੀ ਕਿਰਪਾ ਹੋਏਗੀ ਜੀ ਉਦੋਂ ਇਹ ਚੀਜ਼ਾਂ ਮੈਂ 15 ਮਿੰਟ ਮੈਂ ਦੱਸਿਆ ਰਿਹਾ ਬਾਤ ਉਹਨਾਂ ਦੀ ਬੇਟੀ ਸੀਗੀ ਮੈਂ ਕਹਿੰਦੇ ਗੁਰਜਸ ਨਕਾ ਕਹਿੰਦੇ ਹਾਂ ਨਾ ਕਹਾਂ ਜੀ ਕਹਿੰਦੇ ਤੇ ਕੁੜੀ ਦਾ ਵਿਆਹ ਹੋ ਜਾਣਾ ਕਿ 28 32 ਸਾਲ ਦੀ ਹੋ ਗਈ ਐਨਾ ਫਿਕਰ ਸਾਂ ਤੇ ਹੀ ਚਿੰਤਾ ਕਰਾਈ ਜਾਂਦੀ ਮੈਂ ਕਹਿੰਦੀ ਜੇ ਰਾਇਗੁਰੂ ਦੀ ਕਿਰਪਾ ਹੋਏਗੀ ਹੋ ਜਾਏਗਾ ਕਹਿੰਦੇ ਕੀ ਮਤਲਬ ਤੁਹਾਡਾ ਮੈਂ ਕਿਹਾ 15 ਮਿੰਟ ਪਹਿਲੇ ਤੁਸੀਂ ਹੋਈ ਕਿਹਾ ਜੇ ਮੈਂ ਤੁਹਾਨੂੰ ਕਿਹਾ ਅੰਦਰ ਦੇਖੋ ਤੁਸੀਂ ਕਹਿੰਦੇ ਰਾਇਗੁਰੂ ਦੀ ਕਿਰਪਾ ਹੋ ਜਾਏਗੀ ਹੁਣ ਵਿਆਹ ਦਾ ਐਨਾ ਫਿਕਰ ਕਿਉਂ ਲਾਇਆਗਾ ਜਾਂਦੇ ਤੱਕ ਬੱਸ ਹੋ ਜਾਓ ਰਾਇਗੁਰੂ ਦੀ ਕਿਰਪਾ ਹੋ ਲੰਗੋ ਹੋ ਵਿਆਹ ਨਹੀਂ ਹੋ ਨਾ ਸਹੀ ਕਿਤੇ ਵੀ ਇੰਟਰਫੇਰ ਨਹੀਂ ਕਰੂੰ ਲੇ ਡਬਲ ਫੇਸ ਡਬਲ ਫੇਸ ਜੇ ਤੁਸੀਂ ਆਪਣੇ ਆਪ ਦੇ ਕੰਮ ਕਰਨਾ ਧਿਆਨ ਕਰਨਾ ਸਾਧਨਾ ਕਰਨੀ ਹੈ ਮੈਡੀਟੇਸ਼ਨ ਕਰਨੀ ਹੈ ਗੁਰਬਾਣੀ ਸਮਝਣੀ ਹੈ ਤਾਂ ਨਹੀਂ ਡੋੜੇ ਬੱਚੇ ਨੂੰ ਇੰਜੀਨੀਅਰ ਬਣਾਉਣਾ ਹੈ ਕਰ ਬਸ ਉਦੋਂ ਅਸੀਂ ਛੰਡਾ ਚੱਕ ਕੇ ਸਭ ਤੋਂ ਅੱਗੇ ਜਾ ਉੱਟ ਗਏ ਲੈ ਲਈਏ ਜੀ ਵਾਪਸ ਆਉਨੇ ਆ ਤੇ ਗੱਲਬਾਤ ਤੁਹਾਡੇ ਇਸ એનર્ਜੀ ਫੀਲਡ ਦੇ ਬਾਰੇ ਸਟਰਕਚਰ ਤੇ ਬਾਹਰ ਇਹਦਾ ਅਫੈਕਟ ਕੀ ਹੈ ਅੱਗੇ ਚੱਲੋ ਸੇਂਗੋੜਨ ਨਾਲ ਗੱਲਬਾਤ ਚੱਲ ਰਹੀ ਸੀ ਇਹ ਉਹਨਾਂ ਦੀ ਪੇਟ ਸੈਗਮੈਂਟ ਹੈ ਜੀ ਪਰ ਫੇਰ ਇਹਦੇ ਵਿੱਚ ਵੀ ਆਮ ਲੋਕਾਈ ਦੀ ਗੱਲ ਸ਼ੁਰੂ ਹੋ ਗਈ ਘੰਟਿਆਂ ਵੱਧੀ ਗੱਲ ਕਰ ਰਹੇ ਸੀ ਬਾਹਰ ਦੀਆਂ ਮਾਪਿਆਂ ਦੀਆਂ ਇੱਕ ਘਰ ਦੇ ਵਿੱਚ ਦੋ ਬੰਦੇ ਰੱਬ ਦਾ ਨਾਮ ਲੈਂਦੇ ਆ ਚਾਰ ਨਹੀਂ ਲੈਂਦੇ ਕੰਮ ਠੀਕ ਰਹਿ ਸਕਦਾ ਜਾਂ ਕੁਝ ਦੇਖਣਾ ਪਊ ਕੀ ਕਰਨਾ ਪਊ ਦੇਖੋ ਇਹ ਜ਼ਰੂਰ ਯਾਦ ਰੱਖੋ ਰੱਬ ਦਾ ਨਾਮ ਵਰਗੀ ਜਿਹੜੀ ਚੀਜ਼ ਹੈ ਰੱਬ ਵੈਸੇ ਜਿਹੜਾ ਸ਼ਬਦ ਹੈ ਤੁਹਾਨੂੰ ਇਹ ਲੈਂਗੁਏਜ ਜਿਆਦਾ ਦੀ ਰੱਬ ਦਾ ਮਤਦਾ ਹੁੰਦਾ ਨਾਲ ਰਹਿਣ ਵਾਲੀ ਰੌਸ਼ਨੀ ਹੈ ਨਾ ਇਹ ਬਣਦਾ ਉਹ ਦੂਜੇ ਨੂੰ ਇਨਫਲੂਐਂਸ ਜ਼ਰੂਰ ਕਰਦਾ ਦੂਜੇ ਅਗਰ ਵੱਲ ਦੇਖੇਗਾ ਤੇ ਰਿਸਪੀਕਟਿਵ ਸੋ ਪਰ ਜਿਹੜਾ ਬਿਲਕੁਲ ਕਲੋਜ਼ ਦਾ ਸ਼ਰਨਾ ਵੀ ਹੋਵੇ ਪਰ ਵੀ ਕਰਨਾ ਉਹਨੇ ਆਪਣੇ ਵਾਸਤੇ ਕਰਨਾ ਤਿੰਨੋਂ ਪੱਖਾਂਾਂ ਦੀ ਗੱਲ ਕਰਦੇ ਹਾਂ ਕਿ ਸਟਰਕਚਰ ਕਿਦਾਂ ਇਨਫਲੂਐਂਸ ਕਰਦੇ ਆਂ ਦੇਖੋ ਜੀ ਸਰ ਮੈਂ ਪਹਿਲੇ ਵੀ ਆ ਜਿਨ੍ਹਾਂ ਤੇ એનર્ਜੀ ਬਲੌਕ ਹੋ ਜਾਏ ਤਾਂ ਬਿਮਾਰੀ ਆ ਮੇਰਾ ਸਰੀਰ ਮੈਨੂੰ ਅੰਕਲ ਆ ਉਹ ਕਹਿਣ ਲੱਗੇ ਮੇਰੀ ਪਤਨੇ 75% ਦੇ ਕਰੀਬ ਆਰਟਰੀਜ਼ ਬਲੌਕੇਜ ਚ ਗਈ ਸ਼ੁਰੂ ਕਰਤਾ ਉਗਾਂ ਦੇ 3-4 ਮਹੀਨੇ ਬੜੀ ਦੁਆ ਡਾਕਟਰ ਉਹ ਗਾਂ ਦੇ 35% ਹੀ ਰਹਿ ਗਈ ਸੀ ਜਿਸ சுவாਸ ਨਾਲ ਕਰਨ ਨਾਲ ਸ਼ਰੀਰ ਦੇ ਵਿੱਚ ਵੀ ਨਿਰੋਗਤਾ ਆਂਦੀ ਹੈ ਤਾਂ ਇਹਦਾ ਮਤਲਬ ਐਲਰਜੀ ਸ਼ਰੀਰ ਨੂੰ ਇਫੈਕਟ ਕਰ ਰਹੀ ਹੈ ਹਮ similur ਗ੍ਰੋਨਰ ਕਰਦੇ ਵਿੱਚ ਇਹਦੀ એનર્ਜੀ ਉੱਪਰ ਕੀਤੀ ਜਿਹੜੀ ਜਮੀਨ ਚੋਂ એનર્ਜੀ ਆ ਰਹੀ ਹੈ ਇਹਦੇ ਕੋਈ ਬਲੀਵ ਨਾ ਨਾ ਬਲੀਵ ਘੰਟੇ ਠਗੀਆਂ ਮਾਰ ਕੇ ਆਏ ਹੋ ਤੇ ਘੰਟਾ ਘਰੇ ਆ ਕੇ ਜਿੰਨੇ ਮਰਜ਼ੀ ਪ੍ਰੀਮ ਦੀ ਗੱਲਾਂ ਕਰ ਲਓ ਕਿਸੇ ਤੇ ਕੋਈ ਅਸਰ ਨਹੀਂ ਹੁੰਦਾ ਤੁਸੀਂ ਤੁਹਾਨੂੰ ਪਤਾ ਲੱਗਿਆ ਜਾਂ ਨਾ ਲੱਗੇ ਸੇਮ ਤਰੀਕਾ ਹੈ ਜਿੱਥੇ ਤੁਸੀਂ ਰਹਿੰਦੇ ਹੋ ਜਿੱਥੇ 12 ਘੰਟੇ ਦੀ ਸੌਣਾ ਚਲਦੇ ਫਿਰਦੇ ਰਹਿਣਾ ਉਹ ਸਟਰਕਚਰ ਦੇ ਵਿੱਚ ਜਿਹੜੀ ਜੇ ਤੁਸੀਂ ਕਹਿੰਦੇ ਆ ਕਿ ਉਹ ਇਨਫਲੂਐਂਸ ਨਹੀਂ ਕਰਦੀ ਤੇ ਆਪਾਂ ਸਿਰਫ ਥੋਲੇ ਹੀ ਬਣ ਰਹੇ ਆ ਪਰ ਇਹ ਸਿਰਫ ਮੈਂ ਹੀ ਨਹੀਂ ਕਹਿ ਰਿਹਾ ਬੜੀ ਰਿਸਰਚ ਹੋਈ ਹੈ ਕਈ ਡਾਕਟਰਸ ਹਨ ਡਾਕਟਰ ਵਾਲਫ ਗੈਲਿਤ ਕੋਈ ਨਾਮ ਦਾ ਦੱਸਣਾ ਡਾਕਟਰ ਐਚ ਹੈਕਰਲ ਤੇ ਇਹਨਾਂ ਨੇ ਇੱਕ ਰਿਪੋਰਟ ਬਣਾਈ ਸੀਗੀ ਡਾਕਟਰ ਐਚ ਹੈਕਰਲ ਨੇ ਜੀ 134 ਦੀ ਰਿਪੋਰਟਾਂ ਰਿਪੋਰਟ ਕਹਿੰਦੇ V I G N N A ਉਹਦੇ ਵਿੱਚ ਪੂਰਾ ਦੱਸਿਆ ਹੋਇਆ ਹੈ ਕਿ ਜਿਹੜੀ ਜ਼ਮੀਨ 'ਚ એનર્ਜੀ ਲੀਕ ਹੁੰਦੀ ਹੈ ਜਾਂ ਜਿਹੜੀ ਜਿਹੜੀ ਬੜੀ ਹਾਈ ਫ੍ਰੀਕੁਐਂਸੀ ਰੇਡੀਏਸ਼ਨਸ ਹੈ ਜਮੀਨ ਦੇ ਵਿੱਚ ਉਹ ਸਾਨੂੰ ਨੀਂਦ ਲਾਣ ਤੋਂ ਡਿਪਰੈਸ਼ਨ ਤੋਂ 네ਗੇਟਿਵ ਥਿੰਕਿੰਗ ਤੋਂ ਜਦੋਂ ਥਿੰਕਿੰਗ 네ਗੇਟਿਵ ਹੋਵੇ ਰਿਲੇਸ਼ਨਸ਼ਿਪ ਵੀ ਖਰਾਬ ਹੋ ਲੈ ਕੇ 95% ਕੇਸ 'ਚ ਕੈਂਸਰ ਤੱਕ ਸਾਨੂੰ ਇਹ ਡਿਜ਼ੀਜ਼ ਪੈਦਾ ਕਰਦੀ ਹੈ ਔਰ ਜਿਹੜੇ ਹਰ ਘਰ ਜਿਹੜਾ ਉਸ એનર્ਜੀ ਤੋਂ ਫ੍ਰੀ ਹੋਣਾ ਚਾਹੀਦਾ ਕੋਨੇ ਦੇ ਵਿੱਚ ਮੈਕਸਿਮਮ ਡਾਕਟਰ ਇਹ ਹੈ ਕਿ ਆਪਣਾ ਜਦ ਤੱਕ ਗਏ ਨਾ ਡਾਕਟਰ ਕੋਲ ਤੁਸੀਂ ਗਏ ਨਾ ਫਟਾਫਟ ਦਵਾਈ ਲਿਖੀ ਤੁਸੀਂ ਪ੍ਰੈਸਕ੍ਰਿਪਸ਼ਨ ਘਰ ਜਾ ਕੇ ਪਹਿਲੇ ਦਾ ਪੈਡ ਚੁਕੂਗਾ ਇਹ ਆਸਟਰੀਆ ਵੀ ਜੇ ਜੇ ਮੇਨਸਟ੍ਰੀਮ ਫਾਰਮੇਸੀ ਫਾਰਮੇਸੀਕਲ ਪੀਪਲ ਆ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਜਿੱਦਾਂ ਮਤਲਬ ਸਰਕਾਰ ਨੂੰ ਤੁਹਾਡਾ ਕੋਈ ਇੰਟਰਸਟ ਨਹੀਂ ਸਾਇਲੈਂਟ ਹੋਊਗਾ ਨਾ ਆਊਗਾ ਸਰਕਾਰ ਨੂੰ ਤੁਸੀਂ ਆਪ ਨਹੀਂ ਦੇਖ ਤੇ ਕਿਸੇ ਨੇ ਤੁਹਾਨੂੰ ਨਾ ਸਰਕਾਰ ਨੇ ਸਰਕਾਰ ਨੇ ਤਾਂ ਗ੍ਰੋਸ ਜੁਨ ਵਿੱਚ ਤੁਹਾਡੇ ਬੱਚੇ ਜਾ ਕੇ ਵਾਰਸ਼ ਮਰਨ ਕੋਈ ਗੱਲ ਨਹੀਂ ਦੇਖਿਆ ਕਿਸੇ ਲੀਡਰ ਨੇ ਆਪ ਬੱਚਾ ਭੇਜਿਆ ਹੋਵੇ ਦੇਸ਼ ਅਸਤੇ ਬਿਨਾਂ ਸੀਟ ਤੇ ਸਰਕਾਰਾਂ ਦੇ ਮੋਟਿਵਜ਼ ਹੋਰ ਹੈ ਤੁਹਾਡੇ ਮੋਟਿਵਜ਼ ਹੋਰ ਹੈ ਉਸੀ ਤੁਹਾਡੇ ਵਿੱਚ ਸਰਕਾਰ ਉਹ ਹੀ ਹੈ ਤੁਹਾਡਾ ਘਰ ਸੋ ਜਿੱਥੇ ਸਟਰਕਚਰ ਹੈਗਾ ਉੱਥੇ એનર્ਜੀ ਹੈਗੀ ਹੈ ਜਿਸ ਜਿੱਦਾਂ ਮੈਂ ਹੁਣੇ ਸਾਇੰਟਿਸਟਾਂ ਜਦੋਂ ਪਿਛਲੀ ਵਾਰ ਮੈਂ ਐਗਜ਼ਾਮਪਲ ਦਿੱਤਾ ਸੀ ਵਾਨ ਦਾ ਉਹਨੂੰ ਸਿਟੀ ਦੇ ਵਿੱਚ ਜਾ ਕੇ ਪੁਲਿਸ ਕੋਲ ਮੇਅਰ ਕੋਲ ਇਜਾਜ਼ਤ ਲੈ ਕੇ 54 ਉਹ ਕਰ ਚੱਕੇ ਜਿੱਤੇ ਜਿਨ੍ਹਾਂ ਚਿੱਕੇ ਸਾਰਿਆਂ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਕੈਂਸਰ ਨਾਲ ਡੈਥ ਹੋਈਆਂ ਜਾਂਦੀਆਂ ਪਰ ਹਰ ਕਰਦੇ ਨੇ ਸੇਮ એનર્ਜੀ ਪਾਈ ਜਿੱਥੋਂ ਨੇ ਕਿਹਾ ਆ ਇਸ ਤੋਂ ਆਪਾਂ ਨੂੰ ਘਰਾਂ ਨੂੰ ਫ੍ਰੀ ਕਰਨਾ ਚਾਹੀਦਾ ਉ ਟਿਪੀਕਲ ਜਿਹੜਾ ਡਾਕਟਰ ਹੈ ਉਹ ਉਸ ਵੀ ਬੀਕ੍ਰੋਸਟ ਹੈ ਨਾ ਜਿਸ ਤਰ੍ਹਾਂ ਮੈਂ ਕਹਿੰਦਾ ਵੀ ਸਿਗਰਟ ਸਾਲ ਲੱਗੇ ਇਹ ਚੀਜ਼ ਲਿਖਣ ਪਰਤੇ ਇਹੀ ਗੱਲਾਂ ਮੈਂ ਕਰਦਾ ਵੀ ਅੱਜ ਤੋਂ 50 ਸਾਲ ਬਾਅਦ ਤੁਹਾਨੂੰ ਪਤਾ ਲੱਗੇ ਕਿ ਨੈਗੇਟਿਵ ਰੇਡੀਏਸ਼ਨ ਸੀਗੀ ਆ ਬੀਤ ਵਾਲੀ ਤੁਸੀਂ ਆਪਣੇ ਪੁੱਤਰ ਨੂੰ 2001 ਵਿੱਚ ਗਿਊਨ ਸਾਹਿਬ ਦੇ ਪ੍ਰੋਗਰਾਮ ਤੇ ਗੁਰਜਾ ਅਜੇ ਤੱਕ 40 ਸਾਲ ਬਾਅਦ ਪਤਾ ਲੱਗੇ ਵੀ ਇਹ ਟਿਊਮਰ ਹੁੰਦਾ ਸੀਗਾ ਔਰ ਇਹ ਸਪਾਈਨ ਦਾ ਟਿਊਮਰ ਹੁੰਦਾ ਸੀਗਾ ਛੋਟੇ ਜ਼ਿਆਦਾ ਹੁੰਦਾ ਇੱਕ ਡਾਕਟਰ ਹੈਗਾ ਡਾਕਟਰ ਡਾਕਟਰ ਸੰਜੀਤ ਗੁਪਤਾ ਹਾਂ ਸੀਐਨਐਨ ਹਾਂ ਇੰਟਰਵਿਊ ਪਈ ਕਹਿੰਦਾ ਵੀ ਇਫੈਕਟ ਹੁੰਦਾ ਇਹਨਾਂ ਚੀਜ਼ਾਂ ਦਾ ਔਰ ਜਿਹੜੀ ਸੈਲਫੋਨ ਕੰਪਨੀ ਹੈ ਉਹਨਾਂ ਦੇ ਸੀਈਓ ਕਹਿੰਦੇ ਸੀ ਇਹ ਨਹੀਂ ਕਹਿ ਸਕਦੇ ਵੀ ਇਫੈਕਟ ਨਹੀਂ ਹੁੰਦਾ ਪਰ ਅਜੇ ਪੂਰੀ ਰਿਸਰਚ ਕੀਤਾ ਸੀ ਜਿਹਦੇ ਕਰਕੇ 25 ਮਿਲੀਅਨ ਡਾਲਰ ਸੈਲਫੋਨ ਕੰਪਨੀਆਂਜ਼ ਨੇ ਰੱਖੇ ਸਾਈਡ ਤੇ ਰਿਸਰਚ ਕਰਨਾ ਸਤੇ ਨੂੰ ਡਾਕਟਰ ਦਾ ਨਾਮ ਪੁੱਲ ਗਿਆ ਜਿਹਨੇ ਰਿਸਰਚ ਕੀਤੀ ਕਰਨਾ ਕਿ ਸੀਗਾ ਅਸੀਂ ਤੇ ਆ ਗਏ ਥੋੜੀ ਜਿਹੀ ਰਿਸਰਚ ਆਪ ਕਰਨੀ ਪੈਣੀ ਹੈ ਸਾਰਾ ਕੁਝ ਇਹੀ ਨਹੀਂ ਹੈ ਪੁਰਾਣੇ ਸ਼ਾਸਤਰ ਪੜ ਲਓ ਇਸ ਚੀਜ਼ ਰਿਸਰਚ ਕਰ ਲਓ ਜਿਸ ਘਰ ਤੇ ਸੀ ਰਹਿੰਦੇ ਔਰ ਬਿਲਕੁਲ ਸਾਇੰਟੀਫਿਕ ਹੈ ਜਿਹੜਾ ਅਰਥ ਰੋਟੇਟ ਕਰਦੀ ਹੈ ਉਹਨੂੰ ਸਮਝੋ ਜਿਹੜੀ ਇਲੈਕਟ੍ਰੋਮੈਗਨੈਟਿਕ ਵੇਵਸ ਨਿਕਲ ਉੱਤੇ 7.83 ਸ਼ੌਮਨ ਰੈਜ਼ੋਨੈਂਸ ਨੈਚੁਰਲ ਫ੍ਰੀਕਵੈਂਸੀ ਆبتدي ਔਰ ਤੁਸੀਂ ਕਹੋ ਵੀ ਇਹਦੇ ਨਾਲ ਕੁਝ ਨਹੀਂ ਹੁੰਦਾ ਫਿਰ ਤਾਂ ਐਕੂਪੰਕਚਰ ਵੀ ਗਲਤ ਹੈ ਤੁਸੀਂ ਕਹੋ ਵੀ ਇਹ ਇਤਨ ਤੋਂ ਬੱਤਰ ਪੁਆਇੰਟ ਹੁੰਦੀ ਨਹੀਂ ਉਹ ਕਹਿੰਦੇ ਜਿੱਥੇ એનર્ਜੀ ਬਲੌਕ ਹੋ ਜੇ ਉੱਤੇ ਬਿਮਾਰੀ ਲੱਗਦੀ ਹੈ ਹੂੰ ਲਾਈਫ ਵਿੱਚ ਹੋਈ ਨਾ ਜਿੱਥੇ ਸਾਰੀ ਲਾਈਫ ਇੱਕ ਮੂਵਮੈਂਟ ਹੈ ਜਿੱਥੇ ਤੁਸੀਂ ਪਾਣੀ ਖੜਾ ਕਰ ਲਿਆ ਨਾ ਉੱਥੇ ਸਮੱਲ ਮਾਰਦਾ ਉੱਥੇ ਮੱਛੀ ਆਉਂਦਾ ਉੱਥੇ ਜ਼ਿੰਦਗੀ ਬਣਦੀ ਹੈ ਇਸੇ ਤਰੀਕੇ ਨਾਲ ਜਿਸ ਤਰੀਕੇ ਜਿਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉੱਦਾਂ ਦਾ ਰਿਲੇਸ਼ਨਸ਼ਿ ਤੁਰ ਚਾਹੇ ਤੇਰੀ ਲਾਈਫ ਚ ਮਹਿਵਾਨੀ ਹੈ ਨਹੀਂ ਜ਼ਿੰਦਗੀ ਖੜ ਗਈ ਜ਼ਿੰਦਗੀ ਪਰ ਖੜਨਾ ਦਾ ਸੁਭਾਵ ਨਹੀਂ ਆ ਯਾ ਸੋ ਇਸ ਕਰਕੇ ਇੱਕ ਇੱਕ ਇੱਕ ਚੀਜ਼ ਹੈ ਜੋ ਸੁਭਾਵ ਹੀ ਨਹੀਂ ਹੈ ਅੱਛਾ ਇੱਕ ਕਮੈਂਟ ਆ ਗਿਆ ਜੀ ਹੁਣ ਆਪਣਾ ਸੁਨੇਹਾ ਦੇ ਕੇ ਦਿਨ ਪੂਰਾ ਕਰੂੰਗਾ ਤੁਸੀਂ ਦੱਸੋ ਹੁਣ ਆਪਣੇ ਤੁਹਾਡਾ ਫੋਨ ਨੰਬਰ ਕਿਸ ਤਰ੍ਹਾਂ ਇਹਨੂੰ ਕਰਦੇ ਹੋ ਇੱਕ ਮਿੰਟ ਆਪਣਾ ਕੋਲ ਅਜਿ ਮੇਰਾ ਫੋਨ ਨੰਬਰ 6047211004 604721004 ਔਰ ਤੁਸੀਂ ਮੈਨੂੰ ਫੋਨ ਕਰਕੇ ਦੇ ਬਾਰੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਜੇ ਸੈਲ ਫੋਨ ਦੀ ਚਿਪਸ ਜਿਹੜੀ ਮੈਂ ਬਣਾਈਆਂ ਤੇ ਬਾਇ ਕਰਨੀਆਂ ਤੇ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਹੀ ਐਲ ਓ ਵਾਈ ਐਸ ਆਈ ਏ ਐਲੀਸੀਆ ای ਐਨ ਔਰ ਜਿਹੜੀ ਵੀ ਮੈਂ ਇਹ ਗੱਲ ਕਰ ਆ ਤੇ ਗੱਲ ਕਰਦੇ ਮੈਂ ਕੋਈ ਵੀ ਗੱਲ ਇਹ ਨਹੀਂ ਕਰਦਾ ਜਿਹੜੀ ਮੈ ਟੱਚ ਕਰਦੀ ਹੈ ਚੀਜ਼ ਤੇ ਆਪਾਂ ਟੁਗੇਦਰ ਹੋਾਂ ਯਸ ਕਰ ਸਕਦੇ ਆ ਤੇ ਤੁਸੀਂ ਮੇਰੇ ਕੋਲ ਕੁਝ ਸਿੱਖੋ ਮੈਂ ਤੁਹਾਡੇ ਕੋਲ ਕੁਝ ਸਿੱਖਦਾ ਮੇਰਾ ਹਰ ਇੱਕ ਨੂੰ ਪਿਆਰ ਕਰੀ ਲੇਕਿਨ ਅੱਜ ਕੱਲ ਮੰਗਲਵਾਰ 647 ਖਬਰਾਂ ਖਬਰਾਂ ਤੋਂ ਬਾਅਦ ਬਾਅਦ ਤੋਂ ਗਰਜਤ ਸਿੰਘ ਉਹਨੇ ਤੁਹਾਡੇ ਘਰ ਆ ਕੇ ਘਰ ਦੇ ਵਿੱਚ ਜਿਹੜਾ ਜੀਓਪੈਥਿਕ ਸਟ੍ਰੈਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੀ ਸਰਚ ਸਾਰਾ ਕੁਝ ਚੈੱਕ ਕੀਤਾ ਹੋਇਆ एनर्जी चेक करदे उसके बाद उसनु हल उसदा करदे है साइंटिफिकली फिर करके दिखाउंदे है ओना दा वादा है पर ए गल्ला काम दोई करदे जब तुसी मानसिक तौर ते इस गल नु एक्सेप्ट करोगे जे उस तरह वे हां ਘਰ पा लिया वड्डा ते मैं पौणा अस्सी ऑफ दी ईयर गल कर रहे की साडा जेड़ा कंपटीशन आ ਉਹੋ ਵੀ ਕੜੀਆਂ ਇੰਨੀਆਂ ਕੜੀਆਂ ਜਿਹਨੂੰ ਤੋੜਨਾ ਬਹੁਤ ਔਖਾ ਪਹਿਲਾਂ ਤਾਂ ਸਾਡਾ ਦੇ ਫਿਰ ਦੇ ਪੁੱਤ ਭੂਆ ਮਾਮੇ ਦੇ ਬਲੱਡ ਰਿਲੇਸ਼ਨ ਦਾ ਉਦੋਂ ਅਗਲਾ ਫਿਰ ਸਾਡਾ ਮੁਕਾਬਲਾ ਆਉਂਦਾ ਹੈ ਪਿੰਡੂਆਂ ਦਾ 36 ਘਰ ਪਿੰਡ ਦੇ ਤੀਆਂ ਚ ਕੀ ਦਾ ਹੈ ਕਿਹੜੀ ਕਹਾਣੀ ਕਿਵੇਂ ਪਿੰਡ ਦਾ ਨਿਕਲ ਕੇ ਫੇਰ ਇਲਾਕੇ ਦਾ ਆਉਂਦਾ ਅੱਛੇ ਹੋਵੇ ਸਾਡੇ ਇਲਾਕੇ ਚ ਕਿੰਨੇ ਘਰ ਨੇ ਤੇ ਉਹਨਾਂ ਵਿੱਚੋਂ ਕਿਹੜਾ ਉੱਪਰ ਹੈ ਇਲਾਕੇ ਤੋਂ ਉੱਪਰ ਹੋ ਸਕਦਾ ਜ਼ਿਲ੍ਹੇ ਦੇ ਕੱਠੇ ਚ ਵੀ ਕਦੇ ਪਤਾ ਲੱਗ ਜਵੇ ਫਲਾਣੇ ਦੀ ਛੰਡੀ ਆ ਪੂਰਾ ਦਿੰਦਾ ਚੈੱਕ ਉਹਦੇ ਤੋਂ ਅੱਗੇ ਫਿਰ ਉੱਥੇ ਦਾ ਹੀ ਕਰ ਰਹੇ ਹਾਲੇ ਸਰੀ ਦਾ ਨਹੀਂ ਮੈਂ ਆਇਆ ਉਹਦੇ ਤੋਂ ਫਿਰ ਏਰੀਏ ਦਾ ਆਉਂਦਾ ਮਾਲ ਵਿੱਚ ਆਪਣੀ ਚੜਤ ਹੈ ਦੁਆਬੇ ਚ ਪਰਲਿਆਂ ਦੀ ਹੈ ਉਹਦੇ ਚ ਫੇ ਸ਼ਹਿਰ ਚ ਸਰੀ ਚ ਕਿਹੜੇ ਬਿਲਡਰ ਨੇ ਅੱਛਾ ਇਹ ਬਿਲਡਰ ਨੇ ਇਹਨਾਂ ਜਿਵੇਂ ਆਪਾਂ 300 ਟਾਊਨ ਹਾਊਸ ਬਣਾਉਂਦੇ ਆ ਦੂਜੇ ਐਨੇ ਬਣਾਉਂਦੇ ਆ ਤੇ ਐਨੇ ਘਰ ਬਣਾਉਂਦੇ ਆ ਤੇ ਫਿਰ ਜਿਨ੍ਹਾਂ ਦਾ ਹੱਥ ਨਹੀਂ ਪੈਂਦਾ ਉਹ ਮੇਰੇ ਅਰگە ਬੈਂਦਾ 15 ਸਾਲ ਪਹਿਲਿਆਂ ਨੂੰ ਯਾਦ ਕਰਕੇ ਆ ਦੇਖ ਲੈ ਹਲੇ ਪਰਸੋਂ ਕਰਦਾ ਸੀ ਹੁਣ ਦੇਖ ਲੈ ਖੜਾ ਹੈ ਫਿਰ ਲਾਉਂਦਾ ਜੁਗ ਘਰ 'ਚ ਵੀ ਫਿਰ ਗੱਲ ਕਰਦਾ ਫਲਾਣੇ ਜਦ ਮੈਂ ਪੁੱਤ ਆਇਆ ਸੀ ਮੇਰੇ ਸਾਹਮਣੇ ਡਰਾਈਵਾਲ ਕਰਦਾ ਹੁੰਦਾ ਸੀ ਅੱਜ ਦੇਖ ਲੈ 2 ਲੱਖ ਦੀ ਕਾਰ ਆ ਬਸ ਫਿਰ ਉਹ ਗੇਅਰ ਚ ਪਾਉਂਦਾ ਜਵਾਕ ਨੂੰ ਸਾਡੇ ਸ਼ੋਅ ਆਫ ਨੇ ਸਾਨੂੰ ਪੱਟਿਆ ਹੈ ਨੇ ਜਵਾਕ ਸਵਾ ਹੁਣ ਕਦ ਕਦਰ ਪਾਉਣੀ ਆ ਦੇ ਸਵਾ ਲੱਖ ਦੀ ਗੱਡੀ ਮਰਸੀਡੀਜ਼ ਦੀਆਂ ਏ ਜੀ ਬੀ ਮਰ 7 ਉਸ ਤੋਂ ਬਾਅਦ ਮਤਲਬ ਪੁੱਛਣਾ ਤੋਂ ਕੁਛ ਤੇ ਫਿਰ ਉਹ अच्छा बापਾ ਜਿਹੜਾ ਲੱਕ ਤੋੜ ਕੇ ਜਿਹਨੇ ਕਮਾ ਲਿਆ ਉਹ ਕਹਿੰਦਾ ਹੁਣ ਮੈਂ ਕਰਾਂ ਕੀ ਹੋਰ ਮੇਰੇ ਕੋਲ 10 ਮਿਲੀਅਨ ਡਾਲਰ ਮੈਂ ਕਰੋਲਾ ਚ ਕਿੱਥੋਂ ਬਹਿ ਜਾ ਮੈਂ ਇਹ ਗੱਲ ਦੇਣੀ ਮੇਰੀ ਜ਼ਿੰਦਗੀ ਜਾਂਦੀ ਹੈ ਜੇ ਮੇਰੇ ਡرائیਵ ਵਿੱਚ ਖੜੀ ਹੈ ਤਾਂ ਮੇਰਾ ਪੁੱਤ ਉਹਦੀ ਚਾਬੀ ਮੰਗਦਾ ਮੈਂ ਜਵਾਬ ਨਹੀਂ ਦੇ ਸਕਦਾ ਪਤਾ ਨਹੀਂ ਇਹ ਤਾਂ ਦੇਖੋ ਤਰੱਕੀ ਆ ਜਿਹੜੀ ਕਿਸੇ ਵੀ ਪੱਧਰ ਤੇ ਕੋਈ ਮਾੜੀ ਨਹੀਂ ਚਾਹੇ ਬૌਧਿਕ ਹੈ ਸਮਾਜਿਕ ਹੈ ਪੈਸਿਆਂ ਚੋਂ ਤਰੱਕੀ ਕਰੋ ਜਿੰਨੇ ਮਰਜ਼ੀ ਆਪ ਆਪਣੀ ਔਲਾਦ ਨੂੰ ਬੇਸਿਕ ਰੂਸਤਾ ਪਤਾ ਹੋਣਾ ਚਾਹੀਦਾ ਅਸੀਂ ਨਾ ਪੱਕੇ ਕਿੱਲੇ ਗੱਡੀ ਬੈਠਾ ਆ ਗਏ ਅਸੀਂ ਮਰਨਾ ਥੋੜਾ ਇਹ ਤਾਂ ਅਸੀਂ ਉਹ ਦੇਖਣਾ ਜਿਗਾਰ ਅਸੀਂ ਉਹ ਦੇਖਣਾ ਹੈ ਕਹਾਣੀ ਔਰ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜਾਣਾ ਹੋਏ ਦੇ ਥੋੜਾ ਜਿਹਾ ਸਲੋ ਡਾਊਨ ਆਪਾਂ ਹੋਈਏ ਕੋਸ਼ਿਸ਼ ਕਰੀਏ ਜ਼ਿੰਦਗੀ ਦਾ ਸਹਜ ਦੇ ਵਿੱਚ ਲੈ ਕੇ ਉਸ ਪਰਮਪੁਰਖ ਪੂਰਨ ਪ੍ਰਮਾਤਮਾ ਦੀ ਹੋਂਦ ਦਾ ਅਹਿਸਾਸ ਕਰਕੇ ਅੱਧਾ ਘੰਟਾ ਪੌਣਾ ਘੰਟਾ ਘੰਟਾ ਸਵੇਰੇ ਬੈਠ ਕੇ ਕਿਸੇ ਰੂਪ ਵੀ ਹੋ ਜਾਏ ਰਾਮ ਰਾਮ ਕਹਿ ਲਏ ਉਹ ਅੱਲਾਹ ਕਹਿ ਲਏ ਉਹ ਜੀਸੂ ਨੂੰ ਲੱਭ ਲਏ ਉਹ ਗੁਰੂ ਮਹਾਰਾਜ ਦੀ ਗੱਲ ਕਰ ਲੈ ਪਰ ਜਿਹੜੀ ਪੜਪੜ ਲੱਗਦੇ ਆ ਨਾ ਗਰ ਕਰ ਗਰਗਰਾਰੀ ਚੱਲਦੀ ਹੈ ਉਹਨੇ ਕੱਖ ਨਹੀਂ ਦੇਣਾ ਓਸ਼ੋਦੀ ਰਜਨੀਸ਼ ਦੀ ਇੱਕ ਸੇਂਗ ਹੀ ਇਨਸਾਨਾਂ ਵਰਗਾ ਇਨਸਾਨ ਸੀ ਪਰ ਬੜਾਂਗਾ ਉਹ ਬਹੁਤ ਕਰਦਾ ਸੀ ਤਾਂ ਹੀ ਤਾਂ ਪੋਪ ਨੂੰ ਉਹਨੇ ਕੀਤਾ ਚੈਲੰਜ ਵੀ ਆ ਜਾ ਵੈਟਿਕਨ ਆਉਣਾ ਮੇਰੇ ਨੂੰ ਤਰਕ ਦੇ ਦੀ ਮੈਂ ਸਾਰੇ ਕ੍ਰਿਸਚੀਅਨ ਬਣਾ ਦੂ ਨਹੀਂ ਸਾਰੇ ਕ੍ਰਿਸਚੀਅਨ ਨੂੰ ਤੈਨੂੰ ਮੰਦਰਾਂ ਵਾਲਿਆਂ ਨੂੰ ਮਸਜਦਾਂ ਵਾਲਿਆਂ ਨੂੰ ਸਾਰਿਆਂ ਨੂੰ ਪੈਂਦਾ ਸੀ ਉਹਦੀ 1.7 ਮਿੰਟ ਦੀ ਵੀਡੀਓ ਮੈਂ ਵਖਰਿਆ ਸੀ ਉਹ ਕਹਿੰਦਾ ਇਹ ਧਾਰਮਿਕ ਸਥਾਨਾਂ ਨੇ ਬੰਦੇ ਨਿਮਰਤ ਬਣਾਤੇ ਖੱਸੀ ਬਣਾਤੇ ਉਹ ਹਫ਼ਤੇ ਦੀ ਹਫ਼ਤੇ ਜਾਂਦੇ ਆ ਉੱਥੇ ਸਜਦੇ ਕਰਦੇ ਆ ਉੱਥੇ ਮੱਥੇ ਟੇਕਦੇ ਆ ਉੱਥੇ ਕਹਿੰਦੇ ਲੈ ਮਿੱਤਰਾ ਅਸੀਂ ਹਫ਼ਤੇ ਲਈ ਬਰੀਆਂ ਹੁਣ ਤੂੰ ਜਾਣੇ ਤੇਰਾ ਅਸੀਂ ਤੈਨੂੰ ਮੱਥਾ ਟੇਕਤਾ ਉਹ ਕਹਿੰਦੇ ਉਹਦੀ ਹੋਂਦ ਨੂੰ ਮਹਿਸੂਸ ਤਾਂ ਜੇ ਉਹਦੀ ਹੋਂਦ ਨੂੰ ਮਹਿਸੂਸ ਕਰ ਰਹੇ ਨੇ ਹੋਂਦ ਨਹੀਂ ਮਹਿਸੂਸ ਕਰਨੀ ਉਹਦਾ ਹਿੱਸਾ ਬਣਨਾ ਉਹਦੇ ਅੰਤਰੀਵ ਜਾਣਾ ਆਪਣਾ ਮੂਲ ਪਛਾਣਨਾ ਬੜੇ ਉਹਦੇ ਕਰੜੇ ਸ਼ਬਦ ਸੀ ਤਾਂ ਹੀ 크ਰਿਸਚੀਅਨਿਟੀ ਦੇ ੱਤੇ ਚੜ ਗਿਆ ਤੇ ਉਸ ਨੂੰ ਜਾਣਾ ਪਿਆ ਪਰ ਜਿਹੜੇ ਇਨਸਾਨ ਨੇ ਆਪ ਲਿਖਿਆ ਕਿ ਮੈਂ ਇਹ ਪਲਾਨਟ ਸਿਰਫ ਸਫ਼ਰ ਕੀਤਾ ਇੱਥੇ ਐਨੇ ਤੋਂ ਐਨੇ ਤੱਕ ਤੇ ਉਹਦੀ ਗੱਲ ਕਰਦੇ ਕਰਦੇ ਬਹੁਤ ਵਧੀਆ ਅਲੱਥੇ ਉਸ ਕਿਤਾਬਾਂ ਦੇ ਵਿੱਚ ਗੁਰਨਾਨਕ ਬਾਣੀ ਇੱਕ ਉਹਦੀ ਪੁਸਤਕ ਰਜਨੀਸ਼ ਦੀ ਲਿਖੀ ਹੈ ਜਿਹਦੇ ਵਿੱਚ ਉਹ ਕੰਨ ਖੋਲਦਾ ਜੇ ਕਿਤੇ ਉਹਦੀਆਂ ਸੇਇੰਗਸ ਦੇ ਵਿੱਚ ਦੇ ਵਿੱਚ ਬਾਕੀ ਧਰਮਾਂ ਦੀਆਂ ਬੁੱਕਸ ਉਸਨੇ ਕਿਹਾ ਉਹ ਸਾਹਿਬ ਇੱਕ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਉਹਦਾ ਕਾਰਨ ਇਹ ਸੀ ਵੀ ਇਹਦੇ ਵਿੱਚ ਬੈਠੇ ਆ ਉਹਨਾਂ ਕਿਸੇ ਦਾ ਸੁਆਰਥ ਨਹੀਂ ਉਹਨਾਂ ਨੇ ਸਿਰਫ ਪ੍ਰੋਮੀਨੇਸ਼ਨ ਨਹੀਂ ਕੀਤੀ ਕਿਸੇ ਕਿਸੇ ਗੁਰੂ ਨੇ ਆਪਣੇ ਤੌਰ ਤੇ ਆਪਣੀ ਵਡਿਆਈ ਨਹੀਂ ਕੀਤੀ ਉਹਨੇ ਪਰਮਪੁਰਖ ਪਰਮੇਸ਼ਰ ਦੀ ਗੱਲ ਕੀਤੀ ਉਹ ਕਹਿੰਦਾ ਆਏ ਦੇ ਨਾਲ ਸਾਹਬ ਲੱਗ ਸਕਦਾ ਬਾਕੀ ਉਹਨੇ ਪਛਖਰੇ ਜਿਹੜੇ ਅੜਾਏ ਨੇ ਤਾਂ ਹੀ ਜਿਹੜੀਆਂ 100-100 ਰੋਲਸ ਰੋਇਸਾਂ ਸੀ ਜੈਟ ਖੜੀ ਸੀ ਚਾਰ ਔਰ ਇਹ ਗੰਦੇ ਟਿੱਬਿਆਂ ਦੇ ਵਿੱਚ ਇੱਥੇ ਛੱਡ ਕੇ ਤੁਰ ਗਿਆ ਮਤਲਬ ਗੱਲ ਇਹ ਹੈ ਵੀ ਇਹ ਪਲੈਨਟ ਤੇ ਅਸੀਂ ਆਏ ਆ ਤੇ ਇੱਥੋਂ ਜਾਣਾ ਹੈ ਗੱਲ ਮੰਨਣੀ ਪੈਣੀ ਹੈ ਸਸਕਾਰਾਂ ਤੇ ਜਾਂਦੇ ਆ ਫਿਊਨਰ ਹੌਮ ਜਾਂਦੇ ਆ ਉੱਥੇ ਆਪਾਂ ਕਰਦੇ ਹੀ ਆ ਵੇ ਬੱਲਾ ਬੱਲਾ ਬੱਲਾ ਉਹ ਪਿਆ ਭਾਈ ਨਾਲ ਦਾ ਇਹਲਾ ਬੈਟ ਸਟਾਰਬਕਸ ਤੇ ਗੱਲਾਂ ਕਿਵੇਂ ਸੁਣਾਉਦਾ ਹੀ ਰੇਡੀਓ ਪੂਰੇ ਪਰ ਡਰਤਾ ਰੱਬ ਦਾ ਰੂਪ ਨਹੀਂ ਨਾ ਡਰ ਕੇ ਰੱਬ ਨਹੀਂ ਬਨਾਇਆ ਜਾ ਸਕਦਾ ਰੱਬ ਦੀ ਤਾਂ ਹੋਂਦ ਨੂੰ ਮਹਿਸੂਸ ਕਰ ਸਕਦੇ ਆ ਲੈਸ ਟ੍ਰਾਈ ਆਵਰ ਬੈਸਟ ਵੀ ਆਪਾਂ ਕੋਸ਼ਿਸ਼ ਕਰੀਏ ਸਾਰੀ ਗੱਲ ਸਹਿਜ ਤੇ ਆ ਕੇ ਖੜਦੀ ਹੈ ਜੇ ਤੁਹਾਡੇ ਅੰਦਰ ਨਹੀਂ ਖੜਦਾ ਕੁਝ ਆਣੀ ਪੀਮੋ ਗਏ ਕਿ ਮੈਂ ਜੇ ਪਾਹ ਹੱਥ ਚ ਸੇਖੋ ਸਾਹਿਬ ਕਰੇ ਵੀ ਇਹ ਗਲਤ ਪ੍ਰਚਾਰ ਗਲਤ ਪ੍ਰਚਾਰ ਨਹੀਂ ਸੀ ਇਹ ਜੋਤਸ਼ਾਲਾ ਕੰਮ ਨਹੀਂ ਹੈ ਕੁਛ ਨਹੀਂ ਹੈ ਇਸ ਤਰ੍ਹਾਂ ਦਾ ਜੋਤਸ਼ਾਲੇ ਜੇ ਪ੍ਰਚਾਰ ਨੇ ਹੁੰਦੇ ਤਾਂ ਦਸਾਂ ਸਾਲਾਂ ਦੇ ਜੋਤਸ਼ੀ ਗੇੜੇ ਕੱਢਦੇ ਫਿਰਦੇ ਆ ਇਸ ਮੰਚ ਲਈ ਜੋਤਸ਼ੀ ਵਾਲੀ ਕੋਈ ਕਹਾਣੀ ਨਹੀਂ ਪਲੀਜ਼ ਟਾਈ ਟੂ ਅੰਡਰਸਟੈਂਡ ਆਪਣੇ ਵਲਫੇਅਰ ਚ ਗੱਲ ਨਹੀਂ ਆਉਂਦੀ ਇਹ એનਰਜੀ ਦੀ ਕੋਈ ਫੀਲਿੰਗ ਹੈ ਉਸ ਵੀ ਉਹ ਗੱਲ ਕਰਦੇ ਆ ਜਿਹਨੂੰ ਨਹੀਂ ਫਿੱਟ ਬਹਿੰਦੀ ਇਹ ਮੈਂ ਕੋਈ ਤੱਕਾ ਨਹੀਂ ਕਰਦਾ ਆ ਪੇਡ ਸੈਗਮੈਂਟ ਆ ਉਹਨਾਂ ਦੀ ਆਮ ਜੀਵਨ ਬਾਰੇ ਉਹ ਗੱਲ ਜਿਹੜੀ ਕਰਦੇ ਆ ਆ ਆ ਉਹ ਦਾ ਮੈਂ ਸਟੂਡੈਂਟ ਆ ਇੰਜੀਨੀਅਰਿੰਗ ਹੋ ਜਨੇ ਕੁਝ ਗੱਲਾਂ ਵਧੀਆ ਲੱਗਦੀਆਂ ਨੇ ਦੱਸ ਵਾਟ ਵੀ ਸ਼ੇਅਰ ਜਦੋਂ ਨਹੀਂ ਠੀਕ ਲੱਗੂ ਲਿਖ ਕੇ ਭੇਜ ਦਿਓ ਕਿ ਆ ਗੱਲ ਠੀਕ ਨਹੀਂ ਉਹਨੂੰ ਠੀਕ ਕਰ ਲੈਣਗੇ ਔਰ ਬੁਲਖ ਦੀ ਹੰਦਰਦੀ ਜਾਗ ਪਈ ਕਿ ਜੁੱਤੀ ਮਾਰਨੀ ਸੀ ਫੇਸਬੁੱਕ ਜੁੱਤੀਓ ਜੁੱਤੀ ਹੋਈ ਪਈ ਐ ਦਲੀਲ ਦਿੰਦੇ ਆ ਕਿ ਰੋਸ ਪ੍ਰਗਟਾਉਣ ਦੇ ਹੋਰ ਤਰੀਕੇ ਹੈਗੇ ਨੇ ਧਰਨੇ ਆ ਨੇ ਜਦੋਂ ਪੁਰਾ ਨਰਮਾ ਮੱਚਿਆ ਸੀ ਪਠੰਡਿਆ ਦੇ ਜਿੰਦ ਕਾਲਜ ਲਵੇ ਸਾਰੇ ਬਾਦਵੇ ਦੇ ਨੇ ਸ਼ਾਂਤਮਈ ਧਰਨਾ ਲਾਇਆ ਸੀ ਉੱਥੇ ਰੋਟੀ ਬਣਦੀ ਦਾਲਾਂ ਰਜਦੀਆਂ ਚਾਹਾਂ ਦੇ ਲੰਗਰ ਉਦੋਂ ਨਹੀਂ ਬਾਦਲ ਸਾਹਿਬ ਨੂੰ ਦੱਸਿਆ ਕਿ ਮੰਟੈਰੋ ਚ ਉੱਤਰ ਕੇ ਇਹਨਾਂ ਦੀ ਸੁਣਾ ਮਾੜੇ 20 ਸਪਰੇਹਾਂ ਕੀਤੇ ਹੋਈ ਉਹ ਆਦ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਦੂਰੋਂ ਦੇਖ ਕੇ ਬੰਦਾ ਹੱਥ ਜੋੜ ਕੇ ਜੋੜੇ ਲਾ ਕੇ ਖੜ ਜਾਂਦਾ ਹੈ ਜਨਮ ਮਰਨ ਵਿਆਹ ਸਾਰੀਆਂ ਦੇ ਨਾਲ ਪੂਰੀਆਂ ਉਸੇ ਗੁਰੂ ਗ੍ਰੰਥ ਸਾਹਿਬ ਨਾਲ ਨਿਤ ਖਬਰ ਨਿਤ ਖਬਰ ਕਾਇਦਾ ਸੀ ਜਰ ਦੋਸ਼ੀ ਨਹੀਂ ਲੱਭ ਸਕੀ ਸਰਕਾਰ ਮਰਜਾ ਚੱਪੜੀ 'ਚ ਨੱਕ ਡਬੋ ਕੇ ਲੋਕ ਸਜ਼ਾ ਖਾਤਰ ਧਰਨੇ ਲੱਗ ਗਏ ਸਿੱਧੀ ਫਾਇਰਿੰਗ ਚੱਕਤੀ ਸਰਬੱਤ ਖਾਲਸਾ ਕਰਦਾ ਹੱਕ ਨਹੀਂ ਆਕੇ ਦੋ ਰੋ ਦੇ ਰੋਕਾਂ ਤੇ ਰੋਕਾਂ ਦਰبار ਸਾਹਿਬ ਚ ਸਰੂਪਾ ਨਹੀਂ ਦਿੱਤਾ ਕਿ ਅਰਦਾਸੀ ਸਿੰਘ ਦੀ ਬਦਲੀ ਕਰੋ ਕਿਉਂ ਤੇਰੇ ਫੁੱਫੜ ਦਾ ਹਰਮੰਦਰ ਸਾਹਿਬ ਸੀ ਨਾਬੇ ਜੇਲ ਬਰੇਕਰੀ ਤੋਂ ਬਰੋਕਰੀ ਬਰੇਕਰੀ ਤੋਂ ਬਾਅਦ ਸਿੱਧੀ ਗੋਲੀ ਜੁੱਤੀ ਮਾਰ ਖਾਤਰ ਬੱਠਲ ਜਿੱਡਾ ਜਿਗਰਾ ਚਾਹੀਦਾ ਰੋਸ ਯਾ ਹਰ ਦਾ ਸਹੀ ਤਰੀਕਾ ਸੀਗਾ ਹੁਣ ਫੀਲ ਨਾ ਬਣੋ ਪੰਜਾਬ ਜਿੰਦਾਬਾਦ ਨਾਲੇ ਲੋੜੀਆਂ ਮੁਬਾਰਕਾ ਸਾਰੀ ਸਾਧ ਨੂੰ ਬਹੁਤ ਕਹਿੜਾ ਲਿਖਿਆ ਅੱਜ ਮੁਹੰਮਦ ਫਰੀਦ ਦਾ ਇੱਕ ਗੀਤ ਤੇ ਬਾਤ ਸੌਣੇ ਸਰ ਜਤਿੰਦਰ ਤੇ ਆਨਲਾਈਨ ਹਾਂ ਜੀ ਸਰਦਾਰ ਅਭੀ ਸਿੰਘ ਜੀ ਮੈਂ ਦੋ ਤੀਜਾ ਵੀ ਤੁਹਾਡੀ ਇਜਾਜ਼ਤ ਮੰਗਦਾ ਦੋ ਗੱਲਾਂ ਮੈਂ ਕਰੂੰਗਾ ਤੁਹਾਡੇ ਨਾਲ ਇੱਕ ਤੇ ਜਿਹੜਾ ਤੁਸੀਂ ਹੁਣੇ ਹੁਣੇ ਰਜਨੀਸ਼ ਬਾਰੇ ਦੱਸਿਆ ਮੈਂ ਡਾਕੂਮੈਂਟਰੀ ਵੀ ਦੇਖੀ ਸੀ ਹੂੰ ਦੀ ਬਚਪਨ ਤੋਂ ਲੈ ਕੇ ਮਨ ਜਲਪੁਰ ਮਨ ਯੂਨੀਵਰਸਿਟੀ ਵਿੱਚ ਪ੍ਰੋਸਪਰ ਦੇ ਰਹੇ ਆ ਆਪਣੇ ਪ੍ਰੋਫੈਸਰ ਵੀ ਤੇ ਇਹ ਚੀਜ਼ ਨਾ ਮੈਂ ਬਿਲਕੁਲ ਸਹਿਮਤ ਹਾਂ ਤੁਸੀਂ ਮੇਰੇ ਨਾਲ ਹਜ਼ਾਰ ਬੰਦੇ ਉਹ ਸਰਵੇ ਕਰਕੇ ਦੇਖੋ 99.9% ਪਰ ਬੰਦੇ ਲੋਕ ਹੈ ਉਹ ਰੱਬ ਤਾਂ ਕਰਦੇ ਹੀ ਸਾਡੀ ਜਿਹੜੀ ਧਾਰਮਿਕ ਗੁਰੂ ਜਿਹੜੇ ਸਾਡੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਉਹਨਾਂ ਵੀ ਚਾਤੀ ਨਹੀਂ ਮਾਰ ਕੇ ਦੇਖਿਆ ਕਿ ਕੀ ਲਿਖਿਆ ਆ ਤੇ ਉਹਦੇ ਉਪਦੇਸ਼ ਦਾ ਤਾਂ ਕੋਈ ਕਾਰ ਨਹੀਂ ਬਸ ਉਹ ਤੋਂ ਡਰ ਕੇ ਭੱਜੀ ਫਿਰਦੇ ਪਤਾ ਨਹੀਂ ਉੱਠ ਕੇ ਪੜਨਾ ਲਵੇ ਸਾਨੂੰ ਅਸਲ ਦੇ ਵਿੱਚ ਇਹ ਚੀਜ਼ ਉਹਨਾਂ ਨੇ ਦੱਸੀ ਆ ਵੀ ਅਸੀਂ ਇਸੇ ਦਾ ਹੀ ਹਿੱਸਾ ਆ ਇਸੇ ਵੇਲੇ ਸਮੋਣਾ ਤੇ ਇਹ ਚੀਜ਼ ਨੂੰ ਸਮਝਣ ਦੀ ਜ਼ਰੂਰਤ ਆ ਮੈਨੂੰ ਉਦੋਂ ਲੱਖ ਦੀ ਭੇਜੀ ਆ 9 ਲੱਖ ਤੋਂ ਚੋਕੇ ਕੇ ਕੋ 17 ਲੱਖ ਦਾ ਕੋਈ ਚਾਈਨੀਜ਼ ਨੇ ਘਰ ਲੈ ਲਿਆ ਚైనా ਤੋਂ ਤੇ ਇਹਨਾਂ ਨੇ ਚੋਕੇ ਉਹ ਵੀ ਸਾਰੀਆਂ ਉਸੇ ਬਿਹਾਰਤ ਤੇ 17 18 18 ਲੱਖੀਆਂ ਕਰਤੀਆਂ ਤੇ ਕ੍ਰਿਸ਼ਤੀ ਨੇ ਕਿਹਾ ਕਿ 16 ਲੱਖ ਤੋਂ ਜਿਹੜੀ ਤਾਂ ਗ੍ਰਾਂਟ ਨਹੀਂ ਦੇਣੀ ਇੱਕ ਤੇ ਪਲੱਸ ਜਿਹੜਾ ਦੂਜਾ ਟੈਕਸ ਵਧਣਾ ਉਹ ਇਹ ਮੇਰਾ ਖਿਆਲ ਹੈ ਕਿ ਸਾਨੂੰ ਇਹ ਪੁੱਛ ਕਰ ਰਹੇ ਨੇ ਇੱਥੋਂ ਨਿਕਲ ਜਾਣ ਲਈ ਕਿ ਤੁਸੀਂ ਇੱਥੋਂ ਨਿਕਲ ਨਿਕਲ ਜਿਓ ਚੰਗੀ ਗੱਲ ਹੈ ਜਿਹੜਾ ਏਰੀਆ ਕਰਕੇ ਲੈ ਆਊਗਾ ਤੇ ਬਾਕੀ ਜਿਹੜੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਬਾਕੀ ਤੁਹਾਡੇ ਲਈ ਇੱਥੇ ਰਹਿਣ ਲਈ ਕੋਈ ਜਗ੍ਹਾ ਨਹੀਂ ਆਗੀ ਮੇਰਾ ਇਹੋ ਹੀ ਸੀ ਦੱਸਣਾ ਮੇਰੀ ਇਵੈਸਟਮੈਂਟ ਦੇ ਨਾਲ ਕੇ 17 ਲੱਖ ਦੀ ਕੀਤੀ ਹੈ ਜੀ ਥੈਂਕ ਯੂ ਬਾਬਾ ਜੀ ਇਹ ਗੱਲ ਠੀਕ ਹੈ ਕਿ ਹੁਣ 16 ਲੱਖ ਵਾਲੀ ਚਲੇ ਗਏ ਇਹੀ ਗੱਲ ਪਿਛਲੇ ਦਿਨ ਨੇ ਕਹੀ ਸੀ ਵੈਸਟ ਮਿਲੀਅਨ ਦੀ ਠੱਗੀ ਮਾਰ ਕੇ ਚਾਈਨੀਜ਼ ਬੰਦੇ ਨੇ ਬੈਂਕਰਪਸੀ ਕਰਕੇ ਚైనా ਚੋਂ ਆ ਕੇ ਕੈਸ਼ ਉਹ ਪ੍ਰਾਪਰਟੀ ਲੈ ਲਈਆਂ ਪੰਜ ਪ੍ਰਾਪਰਟੀਆਂ ਦੀ ਬੇਸ ਤੇ 6-6 ਲੱਖ 5 ਲੱਖ ਘਰ ਵਧਾ ਦਿੱਤੇ ਚਲੋ ਇਸ ਨੂੰ ਛੱਡੀਏ ਮੈਂ ਅਸਲ ਵਿਸ਼ੇ ਵੱਲ ਆਵਾਂ ਹੁਣ ਇਹਨੂੰ ਛੱਡਦੀ ਆਪਾਂ ਇਹਦੇ ਤੇ ਗੱਲ ਸੋਮਵਾਰ ਨੂੰ ਕਰਾਂਗੇ ਸਾਢੇ 11 ਵਜੇ ਮੇਅਰ ਨੇ ਤੇ ਟੌਮ ਗਿੱਲ ਉਹਨਾਂ ਨੇ ਟਾਈਮ ਦਿੱਤਾ ਹੋਇਆ ਹੈ ਸਾਢੇ ਵਜੇ ਉਹਨਾਂ ਨਾਲ ਗੱਲ ਕਰਕੇ ਪੁੱਛਾਂਗਾ ਸਵਾਲ ਜਿੰਨਾ ਜਿੰਨੇ ਕੋ ਹੋਏ ਤੇ ਉਸ ਤੁਹਾਡੇ ਨਾਲ ਵੀ ਗੱਲ ਕਰਾਂਗਾ ਗੱਲ ਹੁਣ ਬੀਸੀ ਦੇ ਹਾਈਵੇਜ਼ ਦੀ ਕਰਨੀ ਹੈ ਜੀ ਮੈਂ ਰਕਦ ਜਿੰਨੇ ਨੇ ਉਹਨਾਂ ਦਾ ਇਹ ਤਰਕ ਹੈ ਵੀ ਕੋਕਾ ਹਾਲਾ ਤੋਂ ਜ਼ਿਆਦਾ ਟੋਲ ਇਹਨਾਂ ਨੇ ਚੱਕਿਆ ਤੇ ਉਸ ਹਾਈਵੇ ਦੀ ਕੋਈ ਸਾਰ ਨਹੀਂ ਲੈ ਰਿਹਾ ਤੇ ਅੱਗੇ ਕਿਲੋ ਕੈਮਲੂਪਸ ਤੋਂ ਐਡਮਿੰਟਨ ਨੂੰ ਜਾਂਦੇ ਉਸ ਹਾਈਵੇ ਤੇ 5 ਤੇ ਕਲੀਅਰ ਵਾਟਰ ਤੇ ਅੱਗੇ ਬੈਲਮਾਉਂਟ ਹੈ ਸ਼ਹਿਰ ਜਸ ਦੇ ਵਿੱਚ ਟਰੱਕਰਜ਼ ਕਹਿੰਦੇ ਅਸੀਂ ਬਹੁਤ ਔਖੇ ਰਕ ਤਿਰਕ ਰਹੇ ਨੇ ਮਾੜਾ ਹਾਲ ਹੈ ਇਹ ਤਾਂ ਗੱਲ ਮੰਨਣੀ ਪਊ ਵੀ ਅਮਰੀਕਾ ਜੇ ਟਰਕਿੰਗ ਹੁੰਦੀ ਆ ਤਾਂ ਅਮਰੀਕਾ 'ਚ ਹੁੰਦੀ ਆ ਸਾਡਾ ਤਾਂ ਫਹਾਵੜ 'ਤੇ ਨਹੀਂ ਕੇ ਰੈਸਟ ਹੂਮ 'ਚ ਮੈਨੂੰ ਲੱਗਦਾ ਵੀ ਫੜ ਕੇ ਲੈ ਕੇ ਆਉਣਾ ਪੈਂਦਾ ਉੱਥੇ ਹਾਲ ਇੰਨਾ ਮਾੜਾ ਹੈ ਅੱਜ ਤੋਂ 40 ਸਾਲ 50 ਸਾਲ ਪਹਿਲਾਂ ਖੂ ਅਸੀਂ ਪਿੰਡਾਂ 'ਚ ਪੱਟੇ ਸੀ ਚੰਗੇ ਭਲੇ ਸਵੇਰ ਬਾਹਰ ਤੁਰੇ ਫਿਰਦੇ ਲੋਕ ਤਾਜ਼ੀ ਹਵਾ ਲੈਂਦੇ ਘਰ ਦੇ ਵਿੱਚ ਜਿਹੜੇ ਕੰਮ ਸ਼ੁਰੂ ਕੀਤੇ ਤੇ ਉਹੀਓ ਖੂਜਾ ਪਟਕੇ ਉੱਪਰ ਫਲੈਬਾਂ ਪਾਤੀਆਂ ਉਹ ਹਾਲ ਕੀਤਾ ਉਹਨਾਂ ਦਾ ਬੰਦਾ ਹਾਲ ਔਰ ਕੱਲੇ ਪੰਜਾਬੀ ਦੇ ਟਰੱਕਰ ਨਹੀਂ ਹੈ ਤੇ ਸਾਰੀ ਕਮਿਊਨਿਟੀ ਟਰੱਕਰਸ ਦੀ ਬਹੁਤ ਔਖੀ ਹੈ ਹਾਈਵੇ ਇੰਨੇ ਖਰਾਬ ਨੇ ਕਿ ਦੂਜੇ ਬੰਨੇ ਇੱਕ ਵਾਰ I5 ਟੱਪ ਜਾਓ ਤੁਸੀਂ ਬਲੇਨ ਤੋਂ ਮਸਾ 40 70 80 ਮੀਲ ਲੰਘਣ ਜਾਂਦੇ ਜਦ ਹੀ ਦੇਖ ਲੋ ਕਿਵੇਂ ਗੱਡੀ ਨਿਕਲਦੀ ਆ ਕਿਵੇਂ ਟਰੱਕ ਵੱੜਦਾ ਇੱਕ ਸਟੇਟਸ ਨੇ ਕੇ ਉਹਨਾਂ ਸਟੇਸਿਲ ਤਾਂ ਬਜ਼ੁਰਗ ਚਾਹ ਕੌਫੀਆਂ ਸਵੇਰੇ ਬਣਾ ਕੇ ਜਿਹੜੇ ਕਾਰ ਲੈ ਕੇ ਆ ਕੇ ਮੀਆਂ ਬੀਬੀ ਬਹਿ ਜਾਂਦੇ ਬੇਬੇ ਨਾਲ ਸੁਰਖੀ ਬਿੰਦੀ ਲਾਈ ਬੈਠੀ ਹੁੰਦੀ ਐ ਚਾਹਾਂ ਪੀਓ ਬਿਸਕਟ ਖਾਓ ਤੇ ਤੁਸੀਂ ਡਾਲਰ ਇੱਥੇ 50 ਸੈਂਟ ਪਾਉੜਿਆ ਪਾ ਦੋ ਨਹੀਂ ਤਾਂ ਬੰਦੇ ਤੁਰੇ ਨੇ ਪਾ ਕੇ ਆਉਣੇ ਚਾਹੀਦੇ ਉਹਨਾਂ ਦਾ ਦੇ ਹੁਣ ਤੱਕ ਯਾਦ ਨੇ ਮੈਨੂੰ ਵੀ ਇੰਨੇ ਵਧੀਆ ਜਿਹੜੇ ਨੇ ਬੇੜਾ ਗਰਕ ਹੋ ਗਿਆ ਇਹਨਾਂ ਦਾ ਗੱਲਾਂ ਕਰਦੇ ਨੇ ਮੈਂ ਦੂਜੇ ਸੂਬੇ ਦੀ ਤਾਂ ਗੱਲ ਨਾ ਕਰਾਂ ਮੈਂ ਦੀ ਗੱਲ ਕਰਾਂ ਸੜਕਾਂ ਤੇ ਜਿਨ੍ਹਾਂ ਤੇ ਹਜ਼ਾਰਾਂ ਹੀ ਕਿਲੋਮੀਟਰ ਲੋਕ ਰੋਟੀ ਪਾਣੀ ਦਾ ਥੋੜਾ ਹੀਲਾ ਕਰਦੇ ਥੋੜੀਆਂ ਬੰਦਰਗਾਹਾਂ ਚੱਲਦੀਆਂ ਥੋੜਿਓ ਲੋਗਾਂ ਲਿਉਂਦੇ ਨੇ ਢੋਂਦੇ ਨੇ ਸਵੇਰੇ ਜਾਜ ਪ੍ਰਿੰਸ ਜਾਰਜਾਂ ਲੇਕ ਜਾ ਕੇ ਮੁੰਡੇ ਮੁੜ ਕੇ ਆਉਂਦੇ ਨੇ ਉਹਨਾਂ ਨੂੰ ਕੌਣ ਸੰਭੂ ਰਾਜ ਕਿੱਥੇ ਕਿੰਨਾ ਕੁ ਖਰਚ ਆਉਂਦਾ ਮੈਨੂੰ ਐਂ ਦੱਸੋ ਬਈ ਰੈਸਟ ਰੂਮ ਬਣਾਉਣ ਲਈ ਕਿੰਨਾ ਖਰਚ ਆਉਂਦਾ ਕਿੰਨਾ ਖਰਚ ਸਰਕਾਰ ਜਿਹੜੀ ਬਿਲੀਅਨਸ ਆਫ ਡਾਲਰ ਆ ਜਿਹੜੇ ਕਦੇ ਵਧਾ ਦੇ ਕਦੇ ਘਟਾ ਦੇ ਕਦੇ ਆਈਸੀਬੀਸੀ ਤੋਂ ਲੈ ਲੈ ਤੋਂ ਲੈ ਲੈ ਕਦੇ ਬੀਸੀ ਗੈਸ ਤੋਂ ਲੈ ਲੈ ਕਦੇ ਆਹ ਕਰਤਾ ਸਾਰੇ ਜਿਹੜੇ ਆਰਗੇਨਾਈਜੇਸ਼ਨ ਬੀਸੀ ਟਰੱਕਰਸ ਜੇ ਉਹ ਬਹੁਤ ਉਹ ਬਹੁਤ ਮਹਿੰਗੀਆਂ ਤਨਖਾਹਾਂ ਨੇ ਪਹਿਲੇ ਪ੍ਰੋਗਰਾਮ ਤੇ ਆਉਂਦਾ ਹੁੰਦਾ ਸੀ ਤੁਹਾਡਾ ਇੱਕ ਮੈਂ ਨਾਮ ਭੁੱਲ ਰਿਹਾ ਹਾਂ ਪ੍ਰੈਜ਼ੀਡੈਂਟ ਜਦੋਂ ਆਪਣੀ ਸਟ੍ਰਾਈਕ ਚੱਲਦੀ ਹੁੰਦੀ ਸੀ ਇਹ ਡਰਾਈਵਰ ਜਿੰਨੇ ਵੀ ਨੇ I5 ਤੇ ਸੌਰੀ ਕੋਕਾ ਹਾਲਾ ਨੂੰ ਜਾਂਦੇ ਤੇ ਜਾਂ ਫਿਰ ਪਰਲੇ ਬਨੇ ਕੈਸ਼ ਕ੍ਰੀਕ ਚ ਜਾਂਦੇ ਉਹ ਮਾੜਾ ਜਿਹਾ ਫੋਨ ਕਰਕੇ ਦੱਸੋ ਤਾਂ ਵੇ ਹਾਲਾਤ ਕੀ ਹੈ ਕਿਉਂਕਿ ਜਿਹੜੇ ਤੁਹਾਡੇ ਫੋਨ ਆਉਂਦੇ ਆ ਉਹਦੇ ਹਿਸਾਬ ਨਾਲ ਤਾਂ ਬਹੁਤ ਮੰਦਾ ਹਾਲ ਆ ਆ ਇੱਕ ਪੁਲ ਨਹੀਂ ਚੇਂਜ ਹੋਇਆ ਚਿਲਾ ਵੈਕ ਵਾਲਾ ਉਹਦੇ ਚ ਕਿੰਨੇ ਬੰਦੇ ਮਰ ਗਏ ਵੈਦਰ ਕਨਾਲ ਦਾ ਜਿਹੜਾ ਬਣਿਆ ਬੈਂਟ ਟਰੱਕ ਥੱਲੇ ਜਾ ਗਿਰਦਾ ਹਲੇ ਵੀ ਲਿਸਟੇ ਦੂਰ ਲਾਤਾ ਹੈ ਡੇਂਜਰਸ ਆ ਪਰ ਉਹਦਾ ਹੀਲਾ ਕੋਈ ਨਹੀਂ ਕੀਤਾ ਕੋਣੀ ਮੋੜ ਹੈ ਟਰੱਕ ਉੱਤੇ ਬੇਨਤੀ ਕਰਦਾ ਇਸ ਰੂਟ ਤੁਸੀਂ ਮੁੰਡੇ ਜਾਣੇ ਹੋ ਜਾਂ ਕੈਲਗਰੀ ਨੂੰ ਜਾਣੇ ਹੋ ਜਾਂ ਪ੍ਰਿੰਸ ਜਾਰਜ ਨੂਲਸ ਏਰੀਆ ਨੂੰ ਜਾਣੇ ਹੋ ਦੱਸੋ ਕਿਹੜੇ ਏਰੀਆ 'ਚ ਕਿੱਥੇ ਸੜਕਾਂ ਖਰਾਬ ਨੇ ਉਹਨਾਂ ਦਾ ਕਾਰਨ ਕੀ ਹੈ ਇਹ ਗੱਲ ਠੀਕ ਹੈ ਵੀ ਕੋਕਾ ਹਾਲਾ ਜਦ ਤੱਕ ਟੋਲ ਸੀ ਜਦ ਤੱਕ ਉਹ ਸਾਫ਼ ਸੀ ਜਦ ਤੱਕ ਟੋਲ ਚੱਕੀ ਗਈ ਤੇ ਹੁਣ ਉਹਦਾ ਕੋਈ ਵਾਰੀ ਹੈ ਨਹੀਂ 1043 247 1550 ਸਮਾਂ ਦਿਨਾ ਹੁਣ ਆ ਕੇ ਦੱਸਿਆ ਕਰੋ ਇਹ ਤੁਹਾਡੀ ਗੱਲਬਾਤ ਨਾਹਾਂ ਪਹੁੰਚਦੀ ਆ ਗ੍ਰੀਨ ਟਿੰਬਲ ਵਾਲਿਆਂ ਦਾ ਜਿਹੜਾ ਕੱਲ ਦੀ ਤਫਸ਼ੀਪਾ ਦਿੱਤੀ ਹੋਈ ਆ ਕੱਲ ਮੀਟਿੰਗਾਂ ਵੱਡਿਆਂ ਵੱਡਿਆਂ ਸਰਦਾਰਾਂ ਦੀਆਂ ਹੋਈਆਂ ਉੱਥੇ ਪ੍ਰੋਵਿੰਸ਼ੀਅਲ ਕੌਂਸਲ ਦੀ ਗੱਲ ਚੱਲ ਰਹੀ ਆ ਵੀ ਇੱਥੇ ਨੋਮੀਨੇਸ਼ਨ ਹੋਊਗੀ ਪੁਰਾਣੇ ਮੈਂਬਰਾਂ ਦੇ ਵਿੱਚੋਂ ਨਹੀਂ ਤਾਂ ਨਵੇਂ ਮੈਂਬਰ ਬਣਾਉਣ ਲਈ ਸਾਰੇ ਨੂੰ ਸਮਾਂ ਦਿੱਤਾ ਜਾਊ 90 ਦਿਨ ਦਾ ਰੂਲ ਤੋੜਿਆ ਜਾਊ ਸਹੇ ਪੈ ਜਾਂਦੀ ਆ ਆਪਣੀ ਗੁੱਲੀ ਦਣ ਪੈ ਜਾਂਦੀ ਆ ਮੈਨੂੰ ਲੱਗਦਾ ਦੱਸ ਦਿੰਦੇ ਨੇ ਆਪਣਾ ਤਰਜਮਾ ਤੁਰਜਮਾ ਪੰਜਾਬੀ ਦਾ ਪੰਜਾਬੀ ਚੇ ਕਰਕੇ ਵੀ ਆ ਆ ਕਹਦਾ ਆ ਮਤਲਬ ਆ ਇਹਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲੀ ਗੱਲ ਦਾ ਹਾ ਜੋ ਕੋਕਾਂ ਦਾ ਜਦੋਂ ਆ ਹੋਪ ਟੁਇਨੀਆਂ ਸਕੂਲ ਵਾਲਿਆਂ ਨੂੰ ਗਲਤੀ ਇਹਦੇ ਵਿੱਚ ਜ਼ਿਆਦੇ ਡਰਾਈਵਰਾਂ ਦੀ ਆ ਕਹਿੰਦੇ ਨਹੀਂ ਜੀ ਬੋਲਦੇ ਨਹੀਂਗੇ ਜਦੋਂ ਸਕੂਲ ਵਾਲਾ ਕੱਢਦਾ ਉਹਨੂੰ ਪੁੱਛਦਾ ਬ੍ਰੇਕਾਂ ਨਹੀਂ ਟੈਸਟ ਚੈੱਕ ਕੀਤੀਆਂ ਉਹਨੂੰ ਪੁੱਛੇ ਵੀ ਤੂੰ ਥੱਲੇ ਵੜ ਕੇ ਵੇਖ ਉਹ ਕਹਾਲਾ ਦੇ ਉੱਤੇ ਸਨੋਹ ਤਾਂ ਪਈ ਹੋਈ ਐ ਥੱਲੇ ਟਰੱਕ ਦੇ ਕਿਵੇਂ ਬੜੇ ਜਾਊਗਾ ਉਦੋਂ ਬਾਅਦ ਜੀ ਆਪਣੇ ਆਪ ਜੋ ਤੁਸੀਂ ਟੇਲ ਮਾਉਂਟ ਤੋਂ ਗਾ ਜਾ ਕੇ ਹਾਈਵੇ ਬਿਲਕੁਲ ਸਾਫ਼ ਨਹੀਂ ਕੀਤਾ ਹੁੰਦਾ ਅਮਰੀਕਾ ਦੇ ਵਿੱਚ ਤੁਸੀਂ ਪਲੇਨ ਦੀ ਗੱਲ ਕਰਦੇ ਟੋਲ ਹਾਈਵੇ ਜਿਹੜਾ ਏਟੀ ਆ ਛਾਵਰ ਲੱਗੇ ਹੋਏ ਆ ਪੂਰੀ ਕਲੀਨ ਅਪ ਹੁੰਦੀ ਆ ਬਹੁਤ ਸੋਹਣੇ ਆ ਉਹ ਰੂਟ ਆਪਣੇ ਤਾਂ ਇਹ ਕਹਿੰਦੇ ਨਹੀਂਗੇ ਜੋ ਸਕੇ ਵਾਲੇ ਹੁੰਦੇ ਟਰੈਕਟਰ ਨੂੰ ਨਾਲ ਹੁਣ ਨਾ ਜਦੋਂ ਖੜਦਾ ਨਾ ਟਰੈਕਟਰ ਦਿੰਦਾ ਉਹਨਾਂ ਨੂੰ ਕਹੋ ਦੀ ਵੇਟਿੰਗ ਬੋਤਲਾਂ ਦੇ ਕੇ ਆਪ ਦਾ ਲੋਡ ਲੱਦਿਆ ਗਿਆ ਦੂਜੇ ਦਾ ਫਿਕਰ ਨਹੀਂ ਹੁੰਦਾ ਵੀ ਘੰਟੇ ਪਹਿਲਾਂ ਵਾ ਖੜਾ ਵਾ ਯਾਰ ਆਪ ਹੀ ਆਹੇ ਡਰਾਈਵਰਾਂ ਦੀ ਗਲਤੀ ਜਾਦੇ ਆ ਉਹਨਾਂ ਦੀ ਘੱਟ ਇੰਨਾ ਹੀ ਕਹਿਣਾ ਸਿੰਘ ਜੀ ਲਾਈਨ ਨੰਬਰ 2 ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸਲ ਮੈਂ 8 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ ਰਾਈਟ ਨਾਉ ਵੀ ਮੈਂ ਮੈਂ ਵਿੱਚ ਬ੍ਰੈਂਡ ਤੋਂ ਰਹਿਣਾ ਨਾ ਰਾਈਟ ਦੇ ਵਿੱਚ ਤੇ ਮੈਂ ਇੱਥੇ ਵੀ ਆਉਂਦਾ ਰਿਹਾ ਮੈਂ ਸ਼ੁਰੂ ਜਦ ਚਲਾਉਣਾ ਸ਼ੁਰੂ ਕੀਤਾ ਮੈਂ ਤੁਸੀਂ ਤਿੰਨ ਚਾਰ ਮਹੀਨੇ ਬਾਅਦ ਮੇਰੇ ਹੱਥ ਫੜੇ ਹੋ ਗਏ ਨਾ ਕਿ ਨੀਮਾ ਦਾ ਚਲਾਉਣਾ ਹੀ ਜਗਾ ਪਰ ਜੋ ਮਰਜੀ ਆ ਕਈ ਪੈਸੇ ਤੋਂ ਘੱਟ ਬਣਾਵਾਂਗੇ ਬਟ ਟ੍ਰੈਕਿੰਗ ਆਪਾਂ ਦੇਖੀਏ ਟ੍ਰੱਕ ਪ੍ਰਕਰਨ ਲਈ ਲੈ ਦੀ ਗੱਲ ਕਰਦੇ ਹੋ ਇੱਥੇ ਤੁਸੀਂ ਆਪਣਾ ਵੈਸਟ ਵੈਲੋ ਦੀ ਟੁਰਪੀਏ ਇੱਥੇ ਨਾਰਥ ਦਾ ਮੈਂ ਕਹਿੰਦਾ ਇੰਨਾ ਬੁਰਾ ਹਾਲ ਆ ਸ਼ਹਿਰ ਵੀ ਇਤਾਂ ਦੇ ਹੈਗੇ ਰਾਤ ਨੂੰ ਇਤਾਂ ਲੱਗਦਾ ਜਿਵੇਂ ਪਰਫਿਊਮ ਲੱਗਿਆ ਹੋਇਆ ਇੱਥੇ ਕਿ ਵੀ ਟ੍ਰੱਕ ਵੀ 24 ਘੰਟੇ ਰਹੇਗਾ ਕੋਈ ਕੋਈ ਟ੍ਰੱਕ ਤੋਂ ਵਿਚਾਲੇ ਜਿਹੜਾ 24 ਘੰਟੇ ਹੈਗਾ ਠੀਕ ਆ ਮੁੜ ਉੱਥੇ ਰਾਤ ਨੂੰ ਪਾਰਕਿੰਗ ਨਹੀਂ ਮਿਲਦੀ ਪਾਸਿੰਗ ਉਸ ਤੋਂ ਬਾਅਦ ਤੁਸੀਂ ਆ ਦੇਖੋ ਟ੍ਰਾਂਸਵਾਲ ਹਾਈਵੇ ਨੇ ਜਿਹੜੇ ਟ੍ਰਾਂਸਵਾਲ ਹਾਈਵੇ ਕੈਨਟ ਦਾ ਮੇਨ ਹਾਈਵੇ ਹੈ ਜਿਹੜੇ ਸ਼ੋਲਡਰ ਨੇ ਉਹਦੇ ਪੱਛੇ ਹੈ ਜੀ ਉਹਦੇ ਉੱਤੇ ਵੀ ਐਵੇਂ ਹੋਈ ਹੈ ਉਹਦੇ ਉੱਤੇ ਵੀ ਕੁਝ ਨਹੀਂ ਹੈਗਾ ਕਿ ਟਰੈਕਟਰ ਦੇ ਉਹ ਤੁਹਾਨੂੰ ਐ ਨਹੀਂ ਪਤਾ ਕਿ ਟਰੱਕ ਦੱਬ ਜਾਊਗਾ ਠੀਕ ਹੈ ਜੀ ਉਹ ਇਧਰ ਤੋਂ ਪੀਸੀ ਦੇ ਵਿੱਚ ਤੋਂ ਮੈਂ ਦੇਖਿਆ ਵਿੰਟਰ ਇਜ਼ ਲਾਈਕ ਕਾਈਂਡ ਆਫ ਆ ਤੇ ਆਉਂਦੀ ਹੈ ਉਹ ਹੋ ਗਿਆ ਕਿਧਰੇ ਤੁਹਾਨੂੰ ਵਾਸ਼ਰੂਮ ਜਾਣਾ ਪੈ ਵੀ ਹਾਰਡਲੀ ਕੁੱਛ ਨਾ ਕੁਛ ਆ ਜਾਂਦਾ ਇਹ ਸੇ ਮਤਲਬ ਕੀ ਵੰਗੀ ਸਰਵਿਸ ਕਾਲ ਵੀ ਜੇ ਕਰਨੀ ਪੈ ਜਾਵੇ ਤਾਂ ਤੁਹਾਨੂੰ ਸਰਵਿਸ ਕਾਲ ਵਾਲਾ ਵੀ ਕਿਸੇ ਨੇੜੇ ਤੇ ਨੇ ਕਿਸੇ ਅਵੇਲੇਬਲ ਹੀ ਹੁੰਦਾ ਬਹੁਤ ਜੀ ਟ੍ਰੱਕਰ ਕੁਛ ਵੀ ਨਹੀਂ ਦਿੱਸਦਾ ਜੈਮੀ ਜੈਮੀ ਨੂੰ ਤਾਂ ਦਿਖਾਈ ਜਾਂਦੇ ਆ ਬੇ ਕੋਕਾ ਹਾਲਾ ਤੋਂ ਕੋਕ ਤੋਂ ਕਿਵੇਂ ਲਿਉਂਦਾ ਲਾ ਕੇ ਰੱਖ ਦੇਖਿਆ ਉੱਥੇ ਦੀਆਂ ਦੇ ਲੈ ਆਉਂਦਾ ਲਿਫਟਰ ਹੀ ਦਿਖਾਈ ਜਾਂਦੇ ਔਰ ਸੰਗ ਆਉਂਦੀ ਸੂਬੇ ਦੀ ਸਰਕਾਰ ਨੂੰ ਵੀ ਤੁਹਾਡੇ ਇੱਕ ਸੜਕ ਦੇ ਟੋਟੇ ਤੋਂ ਉਹ ਬੰਦਾ ਐਡਾ ਬਿਜ਼ਨਸ ਰਨ ਕਰ ਰਿਹਾ ਤੁਸੀਂ ਉਹਦਾ ਹੀਲਾ ਕਰੋ ਸੜਕਾਂ ਤੇ ਤਿਲਕਦੇ ਆ ਜਿਹੜਾ ਕੁਝ ਕੋਈ ਉਹਦਾ ਕੋਈ ਕਰੋ ਕੋਈ ਮੁਸ਼ਕਲ ਉਹਦੀ ਹੱਲ ਕਰੋ ਕੋਈ ਕਿ ਰਸਤੇ ਦੇ ਨਵਿੰਦਰ ਸਿੰਘ ਜੀ ਲਾਈਨ ਨੰਬਰ 3 ਸਤਿ ਸ਼੍ਰੀ ਅਕਾਲ ਜੀ ਸਰ ਜੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਟਰੱਕ 2012 ਚ ਮੈਂ 100 ਮਾਈਲ ਨੇੜੇ ਸੀ ਮੈਂ 100 ਫੁੱਟ ਥੱਲੇ ਗਿਆ ਸੀ ਮੈਂ ਚਲੋ ਮੇਰਾ ਬਚਾਅ ਹੋ ਗਿਆ ਸੀ ਜਦੋਂ ਸੇਫਟੀ ਦੀ ਗੱਲ ਆਉਂਦੀ ਹੈ ਜੇਕਰ ਤੁਹਾਡਾ 200 ਪਾਉਂਡ weight ਓਵਰ ਹੋ ਜਾਂਦਾ ਹੈ ਤੇ ਤੁਹਾਨੂੰ ਟਿਕਟ ਆ ਅਗਰ ਦੇਖ ਲੋ ਤਾਂ ਹੀ ਕੈਨੇਡਾ ਤੇ ਅਮਰੀਕਾ ਦੇ ਹਾਈਵੇ ਵਿੱਚ ਕੰਪੇਅਰ ਕਰੋ ਤੋਂ ਬਾਅਦ ਆਪਣਾ ਇਹ ਬਣਾਇਆ ਤਾਂ ਕਿ ਮੈਂ 3 ਮਹੀਨੇ ਟਰੱਕ ਨਹੀਂ ਚਲਾ ਮੈਂ ਨਵਾਂ ਟਰੱਕ ਲਿਆ ਸੀ ਮੈਂ 3 ਮਹੀਨੇ ਸੱਕ ਖੜਾ ਕਰ ਦਿਆ ਜਨੂਅਰੀ ਫਰਵਰੀ ਮਾਰਚ ਮੈਂ ਕੰਮ ਨਹੀਂ ਕਰਦਾ ਉਸ ਤੋਂ ਬਾਅਦ ਜੀ ਇਹ ਗੱਲ ਲੱਗ ਗਿਆ ਮੇਰੀ ਦਾ ਮੇਰਾ ਰੋਟੀ ਪਾਣੀ ਚੱਲਣਾ ਜਿਹਦਾ ਬਸ ਡੈੱਟ ਤੇ ਮੈਂ ਮੈਨੂੰ ਸਾਲਿਆ ਵਿੱਚ ਨਾ ਕਿਦਾ ਕਿਹਦਾ ਜਾਂਦਾ ਹੀ ਨਹੀਂ ਜਿਹਦੇ ਸਮਾਂ ਟ੍ਰਾਂਟੋ ਗਿਆ ਸੀ ਮੈਨੂੰ ਕੰਮ ਸੀ ਜਨਵਰੀ ਪਰ ਮੈਂ ਖਾਲੀ ਆ ਗਿਆ ਜੀ ਹੂਸਟਨ ਚੁੱਕ ਕੇ ਗਿਆ ਆਇਆ ਸੀ ਨਾ ਵਾਪਸ ਨੂੰ ਵੇਟ ਵੱਧ ਤੋਂ ਵੱਧ ਚੁੱਕੀ ਜਾਂਦੇ ਨੇ ਲੋਕ ਕਰਦੇ ਮੇਰੇ ਟ੍ਰਾਂਟੋ ਜਾ ਮੈਨੂੰ ਲੋਡ ਮਿਲੇ ਭਾਰਾ 8000 ਪਾਉਂਡ ਦਾ ਭਾਰ ਮੈਂ ਤੇ ਰਿਫਿਊਜ਼ ਕਰਦਾ ਚਾਹੇ ਗਰਮੀਆਂ ਹੋਣ ਸਰਦੀਆਂ ਮੈਂ ਚੁੱਕਦਾ ਹੀ ਲੋਡ ਔਰ ਇਹਦਾ ਕੋਈ ਸੇਫਟੀ ਨਹੀਂ ਆ ਗਈ 1400 ਨੀਂ ਸਿੰਗਲ ਹਾਈਵੇ ਆ ਅਨਟਾਰੀਓ ਦਾ ਕੋਈ ਰਸਤੇ ਦੇ ਏਰੀਆ ਦਾ ਖਰਦ ਨੂੰ ਕੋਈ ਜਗ੍ਹਾ ਨਹੀਂ ਮਿਲਦੀ। ਥੈਂਕ ਯੂ। ਅਮਰ ਠੰਡ ਦੇ ਸਮੇਂ ਉਹ ਬੰਦ ਨੇ ਤੇ ਉਹਦੇ ਬਾਅਦ ਕੋਈ ਫੋਨ ਐਮਰਜੈਂਸੀ ਲਈ ਨਹੀਂ ਪ੍ਰਿੰਸ ਜੋਰਜ ਏਰੀਏ ਚ ਕਿਤੇ ਵੀ ਫੋਨ ਨਹੀਂ ਚੱਲਦਾ। ਕੋਈ ਮੁਸ਼ਕਲ ਪੈ ਜਾਂਦੀ। ਇੱਕ ਵਾਰ ਅਸੀਂ ਮੁੜੇ ਆਉਂਦੇ ਸਮੂਥ ਰੌਕ ਫਾਲਸ ਦੇ ਵਿੱਚ ਕਿਨਾਰੀ ਬਹੁਤ ਵੱਡੀ ਸੀ ਅਨਟਾਰੀਓ ਦੇ ਵਿੱਚ। ਨਾਰੀ ਤੋਂ ਟ੍ਰੇਲਰ ਉੱਤਰ ਗਿਆ ਤੇ ਉਹਨੇ ਸਪਰਿੰਗ ਤੋੜ ਤੇ ਸਪਰਿੰਗ ਤੋੜ ਤੇ ਉਹ ਥੱਸ ਗਿਆ ਥੱਲੇ ਨੂੰ ਕਿਉਂਕਿ ਕੱਚਾ ਸ਼ੋਲਡਰ ਸੀ ਮੈਂ ਕਿਹਾ ਯਾਰ ਇਹ ਜਿਆਦਾ ਤਾਂ ਕਲਕੱਤੇ ਟ੍ਰੇਲਰ ਥੱਲੇ ਨੂੰ ਗਰੇ ਨਾਲ ਤੋਬਾ ਕ੍ਰੇਨ ਵਾਲਾ 1800 ਡਾਲਰ ਲੈ ਗਿਆ ਚੱਕ ਬਹੁਤ ਔਖਾ ਕੰਮ ਹੈ ਬੜੀ ਮਿਹਨਤ ਦੀ ਕਮਾਈ ਆ ਪਰ ਗੱਲ ਇਹ ਹੈ ਸਹੂਲਤ ਚਾਹੀਦੀ श्याम जी लाइन नंबर 4 अभी मैं काफी टाइम से अंदर हूं ट्रंक पर हूं चल रहा है ट्रैक और सेफ्टी तरीके से चला रहा है बिल्कुल ਕਿਵੀ ਪਹਿਲਾਂ ਸਾਡੀ ਗੱਲ ਕਰਦੇ ਹਾਂ ਕਿਉਂਕਿ ਕੁਛ ਇੱਕ ਵਾਰ ਲੰਬੀ ਲੈ ਜਿੰਦੇ ਮਾਫ਼ ਕਰਿਓ ਇੱਕ ਨਾ ਕਰਾ ਤਾ ਗੱਲ ਵੀ ਤੇ ਲਾਈਟ ਆਪੇ ਪਰ ਜੋ ਤੁਸੀਂ ਕਿਹਾ ਜਿਵੇਂ ਮਹਿਮਾਨੋਂ ਜ਼ਿਆਦਾ ਲੱਗਦਾ ਮਾਸਾ ਵਜਲੇ ਵੀਰ ਬੋਰਜਾ ਕਰ ਲੱਗ ਪੈਂਦਾ ਮੈਂ ਇਹ ਗੱਲ ਵਿੱਚ ਸ਼ੂਰ ਹੈ ਨਹੀਂ ਨਾਲੇ ਵੀ ਕੈਲਰ ਲਾਵੇ ਵੀ ਸ਼ੂਰ ਜਿਹਾ ਲੜਦਾ ਸਾਡੀ ਬੋਡੀ ਸਦੀ ਪੁੱਲੀ ਆ ਦਾ ਸੀਰੀਆਂ ਲਹਿਰਾ ਕੇ ਹੀ ਜ ਵੱਡੀ ਵੱਡੀ ਹੈ ਜੇ ਨੂੰ ਰੋਕੋਗੇ ਤੇ ਇਹ ਸਿਆਰ ਲੈ ਮੱਧੜ ਆ ਤੇ ਜੇ ਇਹ ਗੱਲ ਮੈਂ ਕਹਿੰਦੇ ਇਹ ਜਿਹੜੇ ਹਾਈ ਬੇਸ ਦੀ ਇੱਥੇ ਗੱਲ ਕੀਤੀ ਪੋਲੀਟੀਸ਼ੀਨ ਦੇ ਨਾਲ ਉਦੋਂ ਅਸਲ ਪਹਿਲਾਂ ਦੀ ਗੱਲ ਹੈ ਵੀ ਹਾਲ ਉਹ ਕਹਿੰਦਾ ਵੀ ਛੱਟ ਤੋਂ ਬੋਲ ਨਹੀਂ ਹੋ ਰਹੀਆਂ ਅਸੀਂ ਬਣਾ ਤਾਂ ਲਈਏ ਅਮਰੀਕਾ ਨੂੰ ਮੁਰਕੇ ਕਹਿੰਦਾ ਸਾਡੀ ਆਬਾਦੀ ਘਟ ਇਹਨਾਂ ਦਾ ਇਹ ਆ ਇੱਕ ਹੋਰ ਟੋਲ ਇੱਥੇ ਤਾਂ ਐ ਏਰੀਆ ਚ ਲਾਈ ਜਾਂਦੇ ਜਿੱਥੇ ਸਭ ਤੋਂ ਵੱਧ ਟੈਕਸ ਟੇ ਕਰਦੇ ਆ ਉਹ ਥੇਰੀ ਚ ਟੋਲ ਨਹੀਂ ਲਾਉਂਦੇ ਅੱਜ ਕਲੋਨਾ ਨੂੰ ਦੇਖੋ ਸਾਨੂੰ ਮੈਂ ਇਹ ਗੱਲ ਥੈਂਕ ਯੂ ਭਾਈ ਜੀ ਬੜੀ ਤੁਹਾਨੂੰ ਵੇਟ ਕਰਨਾ ਪਿਆ ਮੈਂ ਢੇੜਾ ਉੱਪਰ ਦੀ ਖੋ ਵਾਲਾ ਲਾਤਾ ਤੁਸੀਂ ਪਹਿਲਾਂ ਵੇਟ ਕਰਦੇ ਸੌਰੀ ਖਿਆਲ ਰੱਖੂਗਾ ਕੁਲਵੀਰ ਸਿੰਘ ਜੀ ਲਾਈਨ ਨੰਬਰ 5 ਕੁਲਵੀਰ ਸਿੰਘ ਜੀ ਵਪਾਰ ਸੰਦੇਸ਼ ਬਾਰਸਾਉ ਉਹ ਜਿਹੜੀ ਸੜਕਾ ਹੈ ਪਾਣੀ ਲੈਣ ਜਾਂਦੇ ਮੁੰਡਿਆਂ ਲਈ ਬਹੁਤ ਔਖੀ ਜਗ੍ਹਾ ਹੈ ਇਹ ਤਾਂ ਬਣਾ ਦੇਣ ਸਰਕਾਰ ਸਵਾ ਦੋ ਡਾਲਰ ਲੈਂਦੀ ਆ 10 ਲੱਖ ਲੀਟਰ ਬਹਿਣਾ ਤੋਂ ਦੇ ਪੈਸੇ ਲੈਂਦੀ ਆ ਇੱਕ ਲੀਟਰ ਉਹ 2 ਡਾਲਰ ਦਾ ਵੇਚਦੇ ਆ ਤੁਹਾਨੂੰ ਸਾਡਾ ਪਾਣੀ ਸਾਡੇ ਸੂਬੇ ਦਾ ਬੱਲੇ ਬੱਲੇ ਹੋਈ ਪਈ ਐ ਸੁਰਿੰਦਰ ਸਿੰਘ ਜੀ ਲਾਈਨ ਨੰਬਰ 2 ਹਾਂਜੀ ਗੱਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਸੀ ਗੱਲ ਕੀਤੀ ਸੀ BC ਸਫਲ ਐਸੋਸੀਏਸ਼ਨ ਦੀ ਇੱਕ ਵਾਰੀ ਮੌਕਾ ਮਿਲਿਆ ਉਹਨਾਂ ਨੇ ਜਾਣਦਾ ਤੇ ਮੈਂ ਸਿੱਧਾ ਜਿਹਾ ਸਵਾਲ ਉਹਨਾਂ ਨੂੰ ਤੁਸੀਂ ਸਿਰਫ ਕੰਪਨੀਆਂ ਵਾਸਤੇ ਕੰਮ ਕੇ ਸਾਰੇ ਵੈਨਕੂਵਰ ਟੋਟਲੀ ਵੈਨਕੂਵਰ ਏਰੀਆ ਦੇ ਵਿੱਚ ਸਿਰਫ ਦੋ ਆਪਣੇ ਰੈਸਟ ਏਰੀਏ ਨੇ ਜਿਹੜੇ ਅਰਪੋਰਟ ਦੇ ਸੈਕਟਰ ਦੇ ਪਾਸੇ ਆ ਕੋਡਮ ਦੇ ਪਾਸੇ ਉਦੋਂ বিনা ਇੱਕੋ ਇੱਕ 91 A ਤੇ ਜਿਹੜਾ ਹੈਗਾ ਫਾਲ ਆਊਟ ਹੈਗਾ ਜਿਹੜਾ ਕਿ ਆਪਣੇ ਲੋਕਾਂ ਨੇ ਉਹ ਪਰਸਨਲੀ ਬਣਾਇਆ ਹੋਇਆ ਹੋਰ ਆਪਦੀਆਂ ਕਾਰਾਂ ਵੀ ਉਸ ਤੇ ਕਰ ਜਾਂਦੇ ਹੈ ਉਹ ਸੱਖਰਾ ਵਾਸਤੇ ਜੰਦੇ ਗੱਡੇ ਨੂੰ ਬੰਦ ਕਰੇ ਐਮਰਜੈਂਸੀ ਵਾਸਤੇ ਲੋੜ ਹੈ। ਤੀਸਰੀ ਗੱਲ ਜਦੋਂ ਹਾਈਵੇ 17 ਨਿਕਲਣਾ ਇਹਨਾਂ ਪਰਸਨਲੀ ਆਪਣੇ ਤੌਰ ਤੇ ਜਾਂ ਸੈਡਲ ਦੇ ਨਾਲ ਕੌਨਟੈਕਟ ਕਰਕੇ ਇੱਕ ਹਫਤਾ ਹੀ ਬੰਦਾ ਸੀ ਮੈਨੂੰ ਨਾ ਪੁੱਲ ਗਿਆ ਉਹਦੇ ਨਾਲ ਗੱਲ ਕੀਤੀ ਵੀ ਕੰਮ ਸੀ ਕੰਮ ਰੈਸਟ ਏਰੀਆ ਤਾਂ ਬਣਾ ਦਿਓ ਇਹ ਜਿਹੜੇ ਟਰੱਕਰ ਜਿਹੜੇ ਥੋੜੇ ਤੁਹਾਡੇ ਵਾਸਤੇ ਸਾਰਾ ਕੁਝ ਲੈ ਕੇ ਆਉਂਦੇ ਜੀ ਇੱਕ ਹਫ਼ਤਾ ਸਬਸਕ੍ਰਾਈਬ ਕਰ ਲੈਣ ਇੱਕ ਹਫ਼ਤਾ ਆਪਣਾ ਹਾਈਵੇ ਬੰਦ ਹੋ ਜਵੇ ਆਪਾਂ ਨੂੰ ਪਤਾ ਕੀ ਹਾਲ ਆਪਣਾ ਹੁੰਦਾ ਹੈਗਾ ਉਸ ਬੰਦੇ ਨੇ ਮੇਰੇ ਨਾਲ ਵਾਅਦਾ ਕਰਕੇ ਹਾਂ ਮੈਂ ਗੱਲ ਵੀ ਕਰੂੰਗਾ ਬਣਾਵਾਂਗੇ ਕੋਈ ਕਿਸੇ ਨੇ ਕੋਈ ਪੁਲ ਆਊਟ ਵੀ ਬਣਾਇਆ ਤਾਂ ਵਨਪੀਸ ਤੋਂ ਬਿਨਾ ਜਿੰਨੇ ਵੀ ਆਪਾਂ ਬੀਸੀ ਦੇ ਵਿੱਚ ਜਾਣਦੇ ਆ ਨਾ ਆਲ ਦਾ ਵੀ ਹਾਈਵੇ ਵਨ ਤੇ ਲਾਲੋ ਤੁਸੀਂ ਕਰ ਨਿੱਕੇ ਟਾਊਨਾਂ ਦੇ ਵਿੱਚ ਚਾਰਜ ਪੇਰੇ ਤੁਹਾਨੂੰ ਦਾ ਸਾਈਨ ਆ ਜਾਂਦਾ ਹੈ ਨੋ ਪਾਰਕਿੰਗ ਇਸ ਤਰ੍ਹਾਂ ਫੀਲ ਹੁੰਦਾ ਵੀ ਉਹ ਟਰੱਕਰਾਂ ਨੂੰ ਐਜ਼ ਅ ਕ੍ਰਿਮੀਨਲ ਉਹ ਕਰਦੇ ਆ ਆ ਬੰਦੇ ਨੇ ਵਾਸ਼ਰੂਮ ਵੀ ਜਾਣਾ ਹੁੰਦਾ ਬੰਦੇ ਨੇ ਖਾਣਾ ਵੀ ਹੁੰਦਾ ਬੰਦੇ ਨੇ ਰਿਸ਼ਤ ਵੀ ਕਰਨੀ ਹੁੰਦੀ ਆ ਜਸ ਦਾ ਛੋਟੇ ਟੋਲਾਂ ਦੇ ਵਿੱਚ ਸਪੈਸ਼ਲੀ ਤੇ ਹਾਈਵੇ ਜਿਵੇਂ ਟੋਟਲੀ ਵੀ ਬਹੁਤ ਹੀ ਬਹੁਤ ਹੀ ਭੜੀ ਹਾਲਤਾ ਮੈਨੂੰ ਵੀ 15-16 ਸਾਲ ਹੋ ਗਏ ਇਸ ਕੇਸ ਦਾ ਵਿੱਚ ਰਹੇ ਨੂੰ ਹਮੇ ਪਿਛਲੇ 8-9 ਸਾਲਾਂ ਤੋਂ ਉਹ ਦੱਸਦਾ ਜਾਂਦਾ ਬਾ ਦੇ ਵਿੱਚ ਜਿੱਨਾ ਪੀਸ ਆਫ ਮਾਈਂਡ ਹੈਗਾ ਅਕਦੀਵਰੀ ਵਿੱਚ ਘਰਦਿਆਂ ਨੂੰ ਨਾਲ ਲਿਆਂਦਾ ਤੇ ਉਹ ਵੀ ਦੇਖ ਕੇ ਰਾਰ ਰਗੇ ਵੇਖਾ ਐਡਾ ਸੋਹਣਾ ਸਿਸਟਮ ਸੋ ਇਹ ਰੀਅਲੀ ਸਿੰਘ ਜੀ ਲਾਈਨ ਨੰਬਰ 2 ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਮੈਂ ਇੰਟੈਰੀਅਰ ਮੈਂ ਵੀ ਬੋਲਦਾ ਬੇਸਿਕ ਦੇ ਬੱਚਾ ਪਾਉਂਦੇ ਗਵਰਨਮੈਂਟ ਕਰਦੀਆਂ ਦੇਖੋ ਸਾਰਾ ਕੁਝ ਇਕੱਲੇ ਰੋਡਸ ਦੀ ਹੀ ਗੱਲ ਹੈਗੀ ਮੈਂ ਜਦੋਂ ਤੋਂ ਆਇਆ ਤੁਸੀਂ ਦੇਖੋ ਤੁਸੀਂ ਵੀ ਜਦੋਂ ਤੋਂ ਆਏ ਆ ਗਿਣ ਕੇ ਦੇਖਿਓ ਬੈਨੀਫਿਟ ਘਟੀ ਜਾ ਰਿਹਾ ਘਟੀ ਜਾ ਰਿਹਾ ਔਰ ਮੈਂ ਕਹਿੰਦੀ ਸਾਡੇ ਕੋਲ ਪੈਸਾ ਨਹੀਂ ਟੈਕਸ ਵਧੀ ਜਾ ਰਿਹਾ ਬੈਨੀਫਿਟ ਘਟ ਰਿਹਾ ਟੈਕਸ ਵਧ ਰਿਹਾ ਤੁਹਾਡੇ ਬਹੁਤ ਚਿਰ ਪਹਿਲਾਂ ਲਾਇਆ ਸੀ ਨਹੀਂ ਕਾਰਬਨ ਟੈਕਸ ਸਾਡੇ ਹੁਣ ਲਾਇਆ ਸਾਲ ਤੋਂ ਨਾ ਕਾਰਬਨ ਟੈਕਸ ਕਾਰਬਨ ਟੈਕਸ ਨੇ ਕੀਤਾ ਕੀ ਇਹ ਬਈ ਟੈਕ ਲੱਗ ਗਿਆ ਰਹਿ ਚੁੱਕੇ ਕੋਈ ਗਾ ਨਹੀਂ ਟੈਕਸ ਤੁਸੀਂ ਲਾਤਾ ਕਾਰਬਨ ਘਟੀਦਾ ਹੈ ਹੀ ਨਹੀਂ ਇਕਦਾ ਕਰ ਰਿਹਾ ਹੈ ਪਤਾ ਨਹੀਂ ਘਾਤੇ ਹੈ ਬੇਸਿਕ ਚਾਰ ਪੰਜ ਚੀਜ਼ਾਂ ਹੈ ਗਵਰਨਮੈਂਟ ਜਿਹੜੀ ਕਰਦੀ ਆ ਰੋਡ ਤੇ ਆ ਮਿਲਟਰੀ ਤੇ ਡਾਕਟਰਸ ਆ ਹਸਪੀਟਲ ਚਾਰੇ ਜਾਂ ਤਾਂ ਮੈਨੂੰ ਇਦਾਂ ਲੱਗਦਾ ਹੁੰਦਾ ਸੋਲੂਸ਼ਨ ਇੱਕੋ ਸਾਲ ਦੇ ਉਹਨੂੰ ਦੁਬਾਰਾ 4 ਸਾਲ ਨਹੀਂ ਦਿੱਤੇ ਜਾਣ ਦਾ ਚੰਗੀ ਗੱਲ ਹੈ 14 19 ਪਾਰਟੀਆਂ ਕੈਨੇਡਾ ਦੀ ਇਹਨੂੰ ਪਤਾ ਲੱਗ ਜਾਵੇ ਮੇਰੀ 80 ਸਾਲ ਬਾਅਦ bari ਆਉਣੀ ਹੈ ਨਾ ਉਹ ਕੰਮ ਚੰਗੇ ਘਰੂ ਮੈਨੂੰ ਇਦਾਂ ਲੱਗਦਾ ਸੀ। ਥੈਂਕ ਯੂ ਗੁਰਪ੍ਰੀਤ ਸਾਹਿਬ। ਜੀ। ਥੈਂਕ ਯੂ ਤੁਸੀਂ ਦੁੱਧ ਛਸਣਦੇ ਹੋ। ਸਾਹ ਗੁਰਮੀਤ ਸਿੰਘ ਜੀ ਲਾਈਨ ਅਪ ਨੰਬਰ 4। ਜੈ ਸ੍ਰੀ ਅਕਾਲ ਜੀ। ਸਰ ਜੀ ਸਤਿ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਵਿਸ਼ਾ ਲੈ ਕੇ ਆਂਦਾ ਬਸ ਬਹੁਤ ਜ਼ਰੂਰੀ ਆ ਸਮੇਂ ਦੀ ਲੋੜ ਮੁਤਾਬਕ। ਏ ਯੇ ਗੱਲ ਕਰ ਲਿਆ ਜੀ ਆਪਾਂ ਬੀਸੀ ਦੀ ਹੋਈ ਸਕੇਲ ਦੇ ਜਮਾ ਮੋਢਰ ਨੇ ਬ੍ਰੇਕ ਬੈਠੇ ਆ ਇੱਕ ਟਾਪ ਦੀ ਫੈਸਿਲਿਟੀ ਮੰਨ ਰਹੇ ਆ ਤੇ ਜਿਹਨਾਂ ਦੇ ਸਿਰ ਤੋਂ ਸਭ ਕੁਝ ਚੱਲ ਰਿਹਾ ਤੇ ਉਹ ਨਰਕ ਭੋਗ ਰਹੇ ਆ ਹੂੰ ਅਸੀਂ ਕਿਲੋਮੀਟਰ ਤੇ ਹਰੇਕ ਕੰਟਾਰੀਓ ਚ ਫੂਡ ਬੰਤ ਤੇ ਜਾਂਦੇ ਪ੍ਰੋਪਰ ਉਹਦੇ ਵਿੱਚ ਫੂਡ ਪਾਰਕ ਇਹ ਥੋੜੇ ਸਮੇਂ ਦੀ ਬਾਰਕੀ ਹੈ ਪਰ ਫੈਸਿਲਿਟੀ ਤਾਂ ਦਿੱਤੀ ਹੋਈ ਇਹਨਾਂ ਨੂੰ ਉੱਤੇ ਕਸੂਰ ਤਾਂ ਦੱਸ ਦੇਣ ਵੀ ਘੱਟੋ-ਘੱਟ ਇਹ ਸਾਰੀ ਇਕਨੋਮੀ ਇਹਦੇ ਤੋਰ ਅੰਨ ਕਰਦੀ ਹੈ ਤੇ ਸਹੂਲਤ ਕੋਈ ਨਹੀਂ ਗਈ ਵੋਟਾਂ ਨਹੀਂ ਸਿਆਣਪ ਨਾਲ ਸਿਆਣਪ ਨਾਲ ਨਹੀਂ ਪਾਉਂਦੇ ਆਹ ਕਸੂਰ ਹੈ ਅਰਵਾਦੀ ਗੱਲ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਆਪਾਂ ਬਿਜ਼ਨਸ ਤੇ ਆ ਜਾਂਦੇ ਆ ਨਾ ਵੀ ਅਸੀਂ ਬਿਜ਼ਨਸਮੈਨ ਆ ਤੇ ਬਿਜ਼ਨਸਮੈਨਾਂ ਨੂੰ ਵਾਲੀ ਸਰਕਾਰ ਤੁਹਾਡੇ ਦਾ ਟਰੱਕ ਚਲਦੇ ਰਹਿਣਾ ਤੇ ਜਿਹਦੀ ਮਰਜ਼ੀ ਤੁਹਾਡੇ ਬਿਨਾ ਦੁੱਧ ਆਵੇ ਨਾ ਸਬਜ਼ੀਆਂ ਆਉਣ ਨਾ ਨਾ ਘਰ ਨਾ ਬਣੇ ਨਾ ਲੱਗਣ ਪੰਗਾ ਇਹ ਬਹੁਤ ਕੁਛ ਕਰਕੇ ਦੇਖ ਲਿਆ ਪਿਛਲੇ 3 ਸਾਲ ਹੋ ਗਏ ਭੱਜ ਜਾਂਦੇ ਆ ਪਿਛਲੇ ਪਾਸੇ ਦੀ ਲੋਕ ਮੈਂਨੇ ਹੱਥ ਮਿਲਾ ਜਾ ਕੇ ਅੰਦਰਲੇ ਦਫ਼ਤਰ 'ਚ ਬੈਠੇ ਕਮਲਾ ਨਾ ਪਿਛਲਾ ਜਿਹੜਾ ਬੋਲਦਾ ਹੈ ਕੁਲਵੰਤ ਸਿੰਘ ਜੀ ਲਾਈਨ ਨੰਬਰ 5 ਕੁਲਵੰਤ ਸਿੰਘ ਜੀ ਸਾਬ ਬਲਵੀਰ ਸਿੰਘ ਲਾਈਨ ਨੰਬਰ 3 ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਮੈਂ ਆਪਣਾ ਕੈਨੇਡਾ ਕੈਨੇਡਾ ਅਨਟਾਰੀਓ ਦੀ ਸਾਡੇ ਜਦੋਂ ਅਨਟਾਰੀਓ ਬਾਰਡਰ ਟਾਪ ਬਾਰਡਰ ਤੋਂ ਅਵੈਂਜਰ ਟੂ ਨੂੰ ਜਾਂਦੇ 300 ਕਿਲੋਮੀਟਰ ਚ ਤਿੰਨ ਸੇਲਾ ਬਣਾਗੇ ਆ ਬਾਈ ਜੀ ਤੇ ਇਹ ਠੇਕੇਦਾਰ ਬਣੇਗੇ ਦੇ ਜਦੋਂ ਉਹ ਇਫੀਅਰ ਇਹ ਲਾਗ ਰਿਹਾ ਕੋਈ ਮਾੜੀ ਜਿਹੀ ਮਿਸਟੇਕ ਨਿਕਲ ਜੇ ਅਪਰਕਾਰ ਚਲੀ ਆਫ 490 ਦੀ ਟਿਕਟ ਆ ਹੂੰ ਤੇ ਟ੍ਰਾਂਸ ਕੈਨੇਡਾ ਇਹਨਾਂ ਨੂੰ ਕਿਹਦਾ ਨੀਗਾ ਉਥੇ ਇੰਨੀ ਖੜਨ ਲਈ ਕਿਸੇ ਵੀ ਜਗ੍ਹਾ ਨਹੀਂ ਆਉਂਦੀ ਸਟੋਪ ਲਈ ਗਈ ਪਰ ਵਿਸ਼ਵਾਸ ਕਰਨਾ ਹੁੰਦਾ ਹੈਗਾ ਤੇ ਸੋਲਡਰ ਰਹਿੰਦੇ ਆ ਸਨੋ ਪਈ ਦੀ ਐ ਪਾਸੇ ਆ ਕੇ ਡਰਦੇ ਉੱਤਰਦੇ ਨਹੀਂਗੇ ਰੋਕ ਸਕਦੇ ਨਹੀਂ ਕਿਤੇ ਇੰਨਾ ਕੁ ਮਤਲਬ ਕਈ ਵਾਰ ਹਾਟਮ ਕਵੀ ਦਾ ਪੰਜ ਪੰਜ ਘੰਟੇ ਸੁਰੇ ਜਾਂਦੇ ਰਹਿੰਦੇ ਆ ਕੋਈ ਫੈਸਿਲਿਟੀ ਨਹੀਂ ਇਹਨਾਂ ਦੀ ਉਹ ਪੈਨ ਨੂੰ ਦੇਂਦੀ ਨਹੀਂ ਸਕੇਲਾ ਬਾਰਡਰ ਕ੍ਰਾਸ ਡਰਾਈਵਰ ਗਲਤੀਆਂ ਕਰਦੇ ਆ ਅਸੀਂ ਇਹਨਾਂ ਨੂੰ ਫੜਦੇ ਆ ਅਸੀਂ ਮੈਰੀਕਾ ਨੂੰ ਚਲਦਾ ਹੈ ਦੇ ਵਿੱਚ ਜੇ ਥੋੜੀ ਲੌਂਗ ਬੁੱਕ ਚ ਮਾੜੀ ਮੋਟੀ ਕੋਈ ਮਸਤੀਤ ਕਈ ਵਾਰ ਪੈ ਜਾਂਦੀ ਹੈ ਹਰ ਇੱਕ ਵਾਰ ਹੋ ਜਾਂਦੀ ਹੈ ਨਿੱਕੀ ਮੋਟੀ ਕਈ ਵਾਰ ਬਗਟੇ ਕੰਮ ਕਰ ਜਾਂਦੇ ਉਹ ਕਹਿੰਦੇ ਕਾਂ ਟੈਲੀ ਖਲੀਫ ਕਰਨ ਤੇਰੀ ਮਿਸਟੇਕ ਆ ਬੁਕਚਕ ਸਟ੍ਰਿਕਟ ਲੈਣੀ ਐ ਹਾਲਾਂਕਿ ਇਹਨਾਂ ਚਲ 10 ਘੰਟੇ ਸੌ ਜਾਂਦੇ ਆ ਹਣਾ ਉਹ ਕਹਿੰਦੇ ਵਾਰਨਿੰਗ ਦੇ ਦਿੰਦੇ ਆ 10 ਘੰਟੇ ਸੌ ਤੇ ਪਲੱਸ ਮੁੜ ਤੇ ਤੇ ਮਿਨਿਸਟਰੀ ਦਾ ਵੀਡੀਓ ਬਣਾਉਣੀਆ ਸ਼ੁਰੂ ਕਰੋ ਤੁਹਾਡੇ ਕੋਲ ਸਾਰਾ ਦਿਨ ਫੋਨ ਨੂੰ ਚਿੰਬੜੇ ਰਹਨੇ ਆ ਕਾਟੂ ਵਾਂਗੂ ਫੜਿਆ ਹੁੰਦਾ ਦੋਨੇ ਹੱਥਾਂ ਨਾਲ ਪੱਟਾਂ ਨਾਲ ਸਟੀਅਰਿੰਗ ਫੜੀ ਬੈਠੇ ਹੁੰਨੇ ਹੋ ਵੀਡੀਓ ਬਣਾਉਣੀਆ ਸ਼ੁਰੂ ਕਰੋ ਇਹਨਾਂ ਦੇ ਜਿਹੜਾ ਰੈਸਟ ਰੂਮ ਨੇ ਰੈਸਟ ਹਾਲ ਨੇ ਸੋਰੀ ਰੈਸਟ ਏਰੀਆ ਉਹਦਾ ਜਾਂ ਕਿਤੇ ਮੁਸ਼ਕਲ ਹੈ ਉਹਦੀ ਜਿੱਥੇ ਵੀ ਤੁਹਾਨੂੰ ਮਹਿਸੂਸ ਕਰਦਾ ਕਿ ਸਰਕਾਰ ਦੀ ਕਟਾਈ ਹੋ ਵੀਡੀਓ ਬਣਾਓ ਤੇ ਟ੍ਰਾਂਸਪੋਰਟ ਮਿਨਿਸਟਰ ਨੂੰ ਭੇਜੋ ਜੇ ਟ੍ਰਾਂਸਪੋਰਟ ਮਿਨਿਸਟਰ ਨੂੰ ਨਹੀਂ ਭੇਜਣਾ ਮੈਨੂੰ ਭੇਜੋ ਇਕੱਠਿਆਂ ਸੌ ਕਰਕੇ ਮੈਂ ਭੇਜਾਂ ਤੇ ਜੋ ਮੈਨੂੰ ਆਪਾਂ ਇਹਦਾ ਕਰਕੇ ਦੇਖੀ ਹੀ ਲਾ ਵੀ ਕੀ ਬਣਦਾ ਉਹਨੂੰ ਕਹਦੇ ਵੇਖ ਤੇਰੇ ਦੇਸ਼ ਤੇਰੇ ਸੂਬੇ ਦੇ ਵਿੱਚ ਤਰਕਸ ਦਾ ਕੀ ਹਾਲ ਹੁਣਾਂ ਦੋ ਤਿੰਨ ਮਹੀਨੇ ਲਓ ਕੁਝੇ ਨੂੰ ਮੰਨ ਜਾਣ ਜੇ ਜਸਵਿੰਦਰ ਸਿੰਘ ਜੀ ਲਾਈਨ ਨੰਬਰ 4 ਕੀ ਗੱਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਵੀਰ ਜੀ ਇਹਦਾ ਆਪਨੇ ਜਿਹੜੇ ਵਾਲੇ ਆ ਗੰਦੇ ਆ ਸਕੇਲਾ ਇਨਾਂ ਦਾ ਰਹਿ ਰੱਬ ਦਾ ਨਾਮ ਅਕੈਲੀਫੋਰਨੀਆ ਔਰ ਆ ਤੇ ਇਹੇ ਲਾਉਂਦੇ ਆ ਜੀ ਪੂਰੇ ਪੌਣੇ 2 2 ਘੰਟੇ ਤੇ ਦੂਜੀ ਗੱਲ ਜਦੋਂ ਆ स्ਨੋ ਪੈਂਦੀ ਆ स्ਨੋ ਹਜੇ ਕੇ ਪਹਿਲਾਂ ਕੋਕ ਲੈਂਦੇ ਆ ਵੀ 5-500 ਡਾਲਰ ਡੁਕਣਾ ਵਾਲਾ ਡਰਾਈਵਰ ਆਦਾ ਭਰਾ ਨਹੀਂ ਡਰਾਈਵਰ ਕਿੱਥੋਂ ਨਹੀਂ ਵੀ ਕਿੱਥੋਂ ਲੈ ਕੇ ਆਉਂਦੇ ਆ ਜੀ ਕੋਈ ਕੋਈ ਇਹਨਾਂ ਨੇ ਕੋਈ ਐਕਸੀਡੈਂਟ ਕੋਈ ਹਾਪਨ ਹੋ ਜਵੇ ਉਦੋਂ ਪਾਣੀ ਵਗਾ ਦਿੰਦੇ ਆ ਰੋੜਾਂ ਤੇ ਪਹਿਲਾਂ ਨੇ ਪਿਓ ਦੇ ਨੇ ਸੱਜਣਾ ਯੋ ਥੋੜ ਦੇ ਉੱਤੇ ਪਤਾ ਨਹੀਂ ਕਹਿ ਦਿੰਦੇ ਆ ਵੀ ਇਹ ਤਾਂ ਚਲ ਟਰੱਕ ਡਰਾਈਵਰ ਆ ਇਹ ਆ ਚਾਉਂਦੇ ਆ ਆ ਜੀ ਜਾਂਦੇ ਆ ਨਾਲੇ ਉਹਦੀਆਂ ਵੀਡੀਓ ਬਣਦੀਆਂ ਨੇ ਫਿਲਮਾਂ ਦੇਖਦੇ ਸਟੋਇੰਗ ਵਾਲੇ ਦੀਆਂ ਜੀ ਚ ਜਾਂਦੇ ਆ ਗੱਲ ਸਾਬ ਜਦੋਂ ਦਨ ਅਮਰੀਕਾ ਚ ਰਹਿਦਾ ਵਾ ਇੱਕ ਦਿਨ ਕੈਲਗਰੀ ਦਾ ਐਡਮੈਂਟਨ ਤੋਂ ਖਾਲੀ ਆਉਂਦਾ ਸਿੰਘ ਲਾਈ ਨੰਬਰ 4 ਸਤਿ ਸ਼੍ਰੀ ਅਕਾਲ ਜੀ ਗੱਲ ਸਾਹਿਬ ਸਤਿ ਸ਼੍ਰੀ ਬਾਈ ਜੀ ਬਾਈ ਜੀ ਮੈਂ ਇੱਕ ਜਿਉ ਤੁਹਾਡੇ ਆਪਾਂ 72 ਤੇ ਔਰ ਲੈਫਟ ਕਰਕੇ ਕਿੰਗ ਜ਼ੋਰ ਪੈ ਕੇ 80 ਤੋਂ ਲੈਫਟ ਕਰ ਦੇਣਾ ਜੀ ਹੂੰ ਆਪਣਾ ਫਾਸਟ ਗੈਸ ਸਟੇਸ਼ਨ ਇੱਕ ਪਾਸੇ ਦੂਸਰੇ ਪਾਸੇ ਹੈਗਾ ਬਹੁਤ ਕਾਰਾਂ ਦੇ ਦੋ ਤਿੰਨ ਵਾਰੀ ਟਰਾਂਸਪੋਰਟ ਵਿਭਾਗ ਨੂੰ ਈਮੇਲ ਵੀ ਕਰ ਚੁੱਕਾ ਹਾਂ ਪਰ ਪਤਨ ਜੀ ਕੀ ਆ ਪਲੀਜ਼ ਜ਼ਰੂਰ ਇਸ਼ੂ ਉਠਾਓ ਤੁਸੀਂ ਦੇਖਿਓ ਵੀ ਤੇ ਥੈਂਕ ਯੂ ਵੀਰ ਜੀ ਠੀਕ ਹੈ ਜੀ ਮੈਂ ਦੇ ਸਿੰਘ ਬਰਾੜ ਲਾਈਨ ਨੰਬਰ 5 ਸਤਿ ਗੁਰੂ ਸਤਿਕਾਰ ਜੀ ਹਾਂਜੀ ਗੱਲ ਸਾਬ ਮੁੰਡਾ ਬੋਲਦਾ ਖੋੜ ਮਖਰੀਆ ਦਾ ਬਰਾੜੀ ਬਰਜੀਤ ਜੀ ਜੀ ਬਾਈ ਜੀ ਜੀ ਲਾਈਸੈਂਸ ਲਖ ਇਹਨਾਂ ਨੇ ਜਨ ਸਾਬ ਆਪਣਾ ਕਰ ਲਿਆ ਕੀ ਆ ਟੈਕ ਲੈਣ ਲਈ ਜੇਕਰ ਮਾੜੀ ਜੁਨੀ 21 ਹੋ ਜਾਂਦੀ ਹੈ ਨਾ ਫਿਰ ਸਾਰੇ ਟੱਬਰ ਨੂੰ ਬਾਣੀ ਪਾ ਲੈਂਦੇ ਪਾ ਲੈਂਦੇ ਆ ਕਿ ਨਹੀਂ ਪਾ ਲੈਂਦੇ ਇਹਨਾਂ ਨੇ ਕੁਛ ਨਹੀਂ ਕਰਨਾ ਤੁਹਾਨੂੰ ਚੇਤਾ ਹੋਣਾ ਮੇਰਾ 10ਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਸਮਝੂਨ ਲਾਇਆ ਸੀ ਤੇ ਮੈਂ ਉਦੋਂ ਦਾ ਜਾਨੀ ਇਹਨਾਂ ਕੋਲੇ ਆਈਸੀਬੀਸੀ ਚ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਆਹ ਹੈ ਨਹੀਂ ਐਸ ਲਿਆ ਦੇ ਉਹ ਲਿਆ ਬੰਦੇ ਜੇ ਚ ਮਾੜਾ ਮੋਟਾ ਹੋਵੇ ਨਾ ਕਈ ਭਾਈਚਾਰੇ ਦੇ ਹੈਗਾ ਵੀ ਆ ਤੇ ਪਰ ਇਹ ਟਰੱਕਾਂ ਨਾਲ ਲਈ ਓਨੀ ਗੱਲ ਕਰਦੇ ਨਹੀਂ ਜਿੰਨੇ ਟਰੱਕ ਵਾਲੇ ਆਪਣੀ ਕਰਦੇ ਆ ਕਿ ਆ ਸਿਟੀ ਲਈ ਠੀਕ ਹੈ ਜੀ ਬੜੇ ਬੰਦੇ ਹੁਣ ਮੇਰੇ 2.5 ਮਹੀਨੇ ਹੋ ਉੱਥੇ ਜਾਂਦੇ ਨੂੰ ਮੇਰੀ ਤਾਂ ਕੋਈ ਨਹੀਂ ਸੁਣੀ ਹੈ ਸਾਲ ਹੋ ਗਏ ਮੈਂ ਟਰੱਕ ਚਲਾਉਂਦੇ ਨੂੰ ਇੱਕ ਬੰਦਾ ਨਹੀਂ ਲੋੜ ਐ ਲੋ ਸਾਰੀ ਆਈਸੀਪੀਸੀ ਤੋਂ ਉਹ ਵੀ ਆਪਣਾ ਪੰਜਾਬੀ ਭਾਈ ਜਾਰਾ ਕਾਨੂੰਨ ਨਾਲ ਲੈਣਾ ਤੁਹਾਨੂੰ ਪਤਾ ਹੀ ਐ ਤੁਹਾਨੂੰ ਦੱਸਿਆ ਸੀ ਮੈਂ ਠੀਕ ਐ ਥੈਂਕ ਯੂ ਥੈਂਕ ਯੂ ਸਰਪਿੰਦਰ ਲਾਈਨ ਨੰਬਰ 2 ਹਾਂਜੀ ਬੜੀ ਖਸਤੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹਾਂਜੀ ਮਾਰਾ ਨੰਬਰ ਵਾਲਾ ਹੈ ਵੀ ਤਾਂ ਪਹਿਲਾਂ ਆਪਣੇ ਮਾਲ ਬਿਜਰੇ ਤੋਂ ਸਾਲ ਪਹਿਲਾਂ ਕਹਿੰਦੇ ਸੀ ਕਿੱਧਰ ਜੰਗਲ ਜਾ ਗਏ ਤੇ ਕਿਹੇ ਜੇ ਆਉਂਦੇ ਸੀ ਉੱਦਾਂ ਦੇ ਬਾਦੂ ਮਾਪੇ ਨੇ ਬਣਾਏ ਹੋਏ ਬੰਦੇ ਅੰਦਰ ਜਾ ਕੇ ਨੀਂਦ ਕਰਤਾ ਤਾਂ ਲੋਕ ਬਾਹਰ ਬਾਸੂ ਹੋ ਜਾਂਦੇ ਆ ਫਿਰ ਕੀ ਕਰਨਗੇ ਲੋਕ ਟ੍ਰੱਕਾਂ ਆ ਇਹ ਵੈਸੇ ਤੁਸੀਂ ਦੇਖੋ ਅੱਜ ਤੋਂ 50 ਸਾਲ ਪੁਰਾਣੇ ਜਿਹੜੇ ਬਸ਼ਡੇਰੀਆ ਜਿਹੜੇ ਵਾਲੇ ਉਹੋ ਇਹਨਾਂ ਦੇ ਬਾਦੂ ਮਾਪੇ ਕੀ ਕਹਿਗਾ ਥੈਂਕ ਯੂ ਇਹ ਗੱਲ ਠੀਕ ਹੈ ਭਾਈ ਜੀ ਦੀ ਦੁਖੀ ਨੇ ਲੋਕ ਮੁੰਡੇ ਬਹੁਤ ਪ੍ਰਕਾਸ਼ ਨੂੰ ਜਿਹੜਾ ਮੁੰਡਾ ਬਰਾੜ ਹੈ ਉਹ ਅਲਬਰਟਾ ਚਲਾਉਂਦਾ ਆਇਆ ਸਿਰਫ ਇੱਥੇ ਟਰੱਕੋ ਚਲਾਈ ਰਿਹਾ ਸੀ ਤੇ ਉਹਨੇ ਕੋਸ਼ਿਸ਼ ਕੀਤੀ ਕਿ ਮੈਂ BC ਦਾ ਲਾਇਸੈਂਸ ਲੈ ਲਵਾਂ ਸੱਚ ਬੋਲਿਆ ਉਹਨੂੰ ਬਾਣੀ ਪਾਈ ਫਿਰਦੇ ਆ ਉਹ ਕਹਿੰਦਾ ਆਪਣਾ ਹੀ ਆ ਕਹਿੰਦਾ ਤੇਰਾ ਦੇਣਾ ਕੀ ਹੈ ਮੈਂ ਨਹੀਂ ਤੈਨੂੰ ਦੰਦਾ ਕਰਿਆ ਲਿਆ ਦੇ ਕਦੇ ਉਹ ਲਿਆ ਦੇ ਕਰਿਆ ਲਿਆ ਦੇ ਉਹ ਦੂਜਿਆਂ ਚ ਪਾਈ ਬੈਠੇ ਨੇ ਜਿਹੜੇ ਜਾ ਕੇ ਅਲਬਰਟਾ ਤੋਂ ਛੇਤੀ ਇੱਧਰ ਨੂੰ ਮੁੜਦੇ ਆ ਉਹਨਾਂ ਦੇ ਖਾਤੇ ਚ ਪਾਈ ਬੈਠੇ ਆ ਮੁੰਡੇ ਨੂੰ ਸੁਣਵਾਈ ਮੇਰੀ ਤਾਂ ਤੁਹਾਡੇ ਤੱਕ ਯਾ ਇਸ ਵਿੱਚ ਆਪਣੀ ਜਿਨ੍ਹਾਂ ਨੇ ਸੁਣਵਾਈ ਤੁਹਾਡੀ ਕਰਨੀ ਆ ਜਾ ਕੇ ਵਿਕਟੋਰੀਆ ਹੁਣ ਉਹ ਤੁਹਾਡੇ ਘਰਾਂ ਚ ਆਉਣਗੇ 2 ਕੁ ਮਹੀਨੇ ਨੂੰ ਫੇਰ ਹੁਣ ਅਗਲਾ ਦਾ ਕੰਮ ਤੁਸੀਂ ਉਹ ਕਰ ਸਕਦੇ ਮੈਂ ਸਿੱਧੇ ਤਰੀਕੇ ਨਾਲ ਨਹੀਂ ਦੱਸ ਸਕਦਾ ਕੀ ਕਰ ਸਕਦੇ ਖਬਰਾਂ ਖਬਰਾਂ ਤੋਂ ਬਾਅਦ ਬਾਤ ਸੌਣ ਇੱਕ ਵਾਰ ਜਿੱਤੇ 10 ਮਿੰਟ ਹੋਏ ਨੇ ਜੀ ਦੇਵਨਕੋਸ ਸੇਖੋਂ ਐਵਸਪੋਰਟ ਦੇ ਵਿੱਚ ਇਹ ਬੱਚੀ ਰਹਿੰਦੀ ਹੈ ਜੀ ਸੇਖੋਂ ਪਰਿਵਾਰ 'ਚ ਮੁਬਾਰਕਾਂ ਬੜੀ ਖੁਸ਼ੀਆਂ ਵਰਸੇ ਚੜ੍ਹਦੀ ਕਲਾ ਦੇਵਨਕੋਸ ਸੇਖੋਂ ਮੁਬਾਰਕਾਂ ਨਾਲ ਹੀ ਜਿਹੜੀਆਂ ਤੁਸੀਂ ਮੁਸ਼ਕਲ ਦੱਸ ਕੇ ਗਏ ਹੋ ਬੇਨਤੀ ਇਹ ਹੈ ਕਿ ਵੀਡੀਓ ਵਾਲਾ ਕੰਮ ਮੇਰੇ ਖਿਆਲ ਆਪ ਨੂੰ ਠੀਕ ਭੇਜੂ ਬਹੁਤ ਵੀਡੀਓ ਬਣਾ ਕੇ ਰੱਖੋ ਤੇ ਵੀਡੀਓ ਇਕੱਠੀਆਂ ਕਰਕੇ ਜਾਂ ਹਰ ਰੋਜ਼ ਹੀ ਮਿਨਿਸਟਰ ਨੂੰ ਟ੍ਰਾਂਸਪੋਰਟੇਸ਼ਨ ਮੱਤੇ ਮਿਨਿਸਟਰ ਨੂੰ ਭੇਜੋ ਬਹੁਤ ਸੌਖਾ ਹੁੰਦਾ ਹੁਣ ਤਾਂ ਟੂਲਸ ਤੁਹਾਡੇ ਕੋਲ ਇਹੋ ਗੱਲਾਂ ਤੁਸੀਂ ਜਿਹੜੀਆਂ ਕੀਤੀਆਂ ਉਹ ਉਹਨਾਂ ਤੱਕ ਪਹੁੰਚਦੀਆਂ ਪਰ ਅਸਲ ਕਹਾਣੀ ਜਦ ਬਣਨੀ ਜਦੋਂ ਕਹਿੰਦੇ ਆ ਸਰੀ ਐਵਸਫੋਰਡ ਵੈਨਕੂਵਰ ਦੇ ਦਫਤਰ ਨੇ ਅਮਨ ਖੜਕੜ ਦੇ ਮੌਰ ਦੇ ਲੈਣੀ ਹੈ ਤਾਮਨ ਖੜਕੜ 6048251314 ਸਾਮੀ ਨਾਰਿੰਗ ਐਂਡ ਕੰਪਨੀ ਵਕੀਲਾਂ ਦੀ ਵੱਡੀ ਕੰਪਨੀ 664646131 ਸਰੀ ਐਵਸਫੋਰਡ ਵੈਨਕੂਵਰ ਦੇ ਦਫਤਰ ਨੇ ਅਥ ਵਕੀਰ ਨੇ ਹੋਰ ਅਮਲਾ ਫੈਲਾ ਤੁਹਾਡੇ ਆਈਪੀਸੀ ਕੰਪਨੀ ਵਕੀਲਾਂ ਦੀ ਵੱਡੀ ਕੰਪਨੀ ਮੈਕ ਰੈਸਟ੍ਰੈਕਟ 94 ਤੇ ਨਵੀਂ ਮੈਨੇਜਮੈਂਟ ਥੱਲੇ ਖੁੱਲ ਗਿਆ ਬਿਲਕੁਲ ਰੈਨੋਵੇਟ ਕੀਤਾ ਹੋਇਆ ਬਹੁਤ ਵਧੀਆ ਰੈਸਟੋਰੈਂਟ ਬਣਾਇਆ ਤੇ ਤੁਸੀਂ ਜਾ ਕੇ ਖਾਣਾ ਖਾ ਸਕਦੇ ਹੋ ਆਰਡਰ ਕਰ ਸਕਦੇ ਹੋ 6555853331 ਮਹਿਕ ਰੈਸਟੋਰੈਂਟ ਜਿਹੜਾ ਸੀ 99 ਤੇ ਸਕਾਟ ਤੇ 4-5 ਸਾਲ ਪਹਿਲਾਂ ਬਹੁਤ ਘੱਟ ਰੈਸਟੋਰੈਂਟਸ ਅਰੀਚ ਹੁੰਦੇ ਸੀ ਤਾਂ ਉੱਥੇ ਸਾਰੇ ਆਪਾਂ ਜਾਣਦੇ ਸੀ ਤੇ ਬਹੁਤ ਵਧੀਆ ਅੰਦਰ ਜਗ੍ਹਾ ਉਹਨਾਂ ਨੇ ਬਣਾਈ ਸੀ ਮਹਿਕ ਰੈਸਟੋਰੈਂਟ ਹੁਣ ਨਵੀਂ ਮੈਨੇਜਮੈਂਟ ਨਾਲ 604585 3331 ਗ੍ਰਾਂਟ ਸਰ ਸ੍ਰੀ ਦਾਤਾ ਜੈ ਕੁਲਤਾ ਸਿੰਘ ਖੜਾ ਹਰਪਾਲ ਸਿੰਘ ਸੂਚਕ ਸਿੱਛ ਸੰਪੱਡਾ 604 617 ਅੰਤਰਾਸੀ 604 592 4342 ਵੱਡੀਆਂ ਛੋਟੀਆਂ ਪਾਰਟੀਆਂ ਕੋਈ ਰਾਜਨੀਤਿਕ ਕਾਠ ਕੋਈ ਪੈਂਡੂਆਂ ਦਾ ਇਕੱਠ ਕਰਨਾ ਕਾਲਜ ਦਾ ਕੋਈ ਪ੍ਰੈਸ ਕਾਨਫਰੰਸ ਕਰਨੀ ਕੋਈ ਸੰਗਠਨ ਕਰਨੀ ਹੈ ਸ੍ਰੀ ਸਿੰਘ ਖੜਾ ਹਰਪਾਲ ਸਿੰਘ ਸੂਚਕ ਸਿੱਛ ਸੰਪੱਡਾ 604 592 4742 604 617 ਅੰਤਰਾਸੀ Ravinder Pend 6048287213 thinkinsurance.ca Alberta de vich te itthe swaama dende hai life insurance critical illness mortgage supervisor di shauran desteability isvali ki ਇਸ ਲਈ ਨੇ ਇੱਕ ਗੀਤ ਆ ਪੰਜਾਬ ਦੇ ਬਾਰੇ ਪੰਜਾਬ ਦੇ ਵਿੱਚ ਰਾਜਨੀਤਿਕ ਤੰਗੜੇ ਬਾਰੇ ਤੇਜ ਉੱਠ ਚੁੱਕੇ ਆ ਕਾਗਜ਼ਾਂ ਦੀ ਕਾਰਵਾਈ ਹੋ ਰਹੀ ਆ ਕਾਗਜ਼ ਜਿਹੜੇ ਨੇ ਫਰੇ ਜਾ ਰਹੇ ਨੇ ਪਤਾ ਲੱਗਿਆ ਕਿ ਲੰਬੀ ਤੇ ਜਲਾਜ਼ਾਬਾਦ ਤੋਂ ਬਾਦਲ ਅਕਾਸ਼ੀ ਮਬਦ ਸੁਖਵੀਰ ਸਿੰਘ ਬਾਦਲ ਦੀ ਕਵਰਿੰਗ ਕੈਂਡੀਡੇਟ ਜਿਹੜੀ ਉਹ ਸਿਮਰਤ ਕੌਰ ਬਾਦਲ ਆ ਇਹ ਪਤਾ ਲੱਗਿਆ ਇਹ ਇਸ ਦਾ ਕਾਰਨ ਕੀ ਹੋ ਸਕਦਾ ਵੀ ਦੋਨਾਂ ਦੇ ਵਿੱਚੋਂ ਕੋਈ ਕਾਗਜ਼ ਵਾਪਸ ਲੈ ਸਕਦਾ ਸੋ ਕਵਰ ਕਰਨ ਪਏ ਹੁੰਦਾ ਵੀ ਕਾਲਜ ਕਾਲਜ ਨੇ ਜਿਹੜੇ ਖਟ ਨਾ ਬੈਠਣ ਬੜੀ ਤੇਜ਼ੀ ਚੱਲ ਰਹੀ ਹੈ ਪਹਿਲਾਂ ਕਾਗਜ਼ ਬਹੁਤ ਲਾਸਟ ਸਮੇਂ ਭਰੇ ਜਾਂਦੇ ਹੁਣ ਨਰਸੀਖਿੰਗ ਬਾਦਲ ਨੇ ਬਦਲ ਜਿਸ ਨੇ ਨੇ ਬਾਕੀਆਂ ਨੇ ਵੀ ਭਰੇ ਨੇ ਸਾਰੀਆਂ ਪੋਲਿਟੀਕਲ ਪਾਰਟੀਆਂ ਪੰਜਾਬ ਦੀ ਸਾਥ ਦੇ ਵਿੱਚ ਮੇਰਾ ਪਿੰਡ ਮੇਰੇ ਖੇਤ ਤੋਂ ਪਿੰਡ ਦੀ ਸਾਥ ਹੈ ਜਿਹੜੀ ਉਸ ਨਾਮ ਰੱਖਿਆ ਜੀ ਤੁਸੀਂ ਆਪਣੇ ਤੌਰ ਤੇ ਕਿਸੇ ਵਿਸ਼ੇ ਤੇ ਗੱਲ ਕਰ ਸਕੋ ਲੋਹੜੀ ਦਾ ਅਜ ਤਿਹਾੜ ਹੈ ਉਸ ਦੇ ਬਾਰੇ ਗੱਲ ਕਰਨੀ ਹੈ ਪੰਜਾਬ ਦਾ ਕੋਈ ਸੱਭਿਆਚਾਰ ਕੋਈ ਦੀ ਯਾਦ ਹੈ ਏਰੀਆ ਦੀ ਯਾਦ ਹੈ ਕੋਈ ਮੇਲੇ ਦੀ ਯਾਦ ਹੈ ਕੋਈ ਮੇਲੇ ਮਸਾਵਿਆਂ ਵੀ ਕੋਈ ਚੀਜ਼ ਯਾਦ ਹੈ ਰਾਜਨੀਤਿਕ ਕੋਈ ਗੱਲ ਕਰਨੀ ਚਾਹੁੰਦੇ ਹੋ ਕੋਈ ਛੇਡ ਦੀ ਗੱਲ ਕਰਨੀ ਚਾਹੁੰਦੇ ਹੋ ਛੋਟੇ ਹੁੰਦੇ ਖੇਡਦੇ ਰਹੇ ਕੁਝ ਵੀ ਤੁਹਾਡੇ ਯਾਦ ਹੈ ਇਸ ਨੂੰ ਟਾਰਗੇਟ ਨਾ ਕਰਿਓ ਸ਼ਕਾਵਲੀ ਵਧੀਆ ਹੋਵੇ ਤੇ 81442471550 ਅੱਜ ਦਾ ਦਿਨ ਇੱਕ ਤਾਰ ਰੱਖਿਆ ਤੁਹਾਡਾ ਵੀ ਕਈ ਵਾਰ ਵਕਤ ਵੀਕਡੇਜ਼ ਪੰਜਾਬ ਦੇ ਪਿਛਲੇ 7 ਸਾਲਾਂ ਦੇ ਵਿੱਚ ਅਲੱਗ-ਅਲੱਗ ਰੰਗਾਂ ਨੂੰ ਆਪਾਂ ਆਪਣੀ ਆਪਣੇ ਵਿਰੇਖੇ ਚੁੰਦੇ ਰਹੇ ਆ え ਉਹੋ ਹੁਣ ਉਹਨਾਂ ਨੂੰ ਰਿਪੀਟ ਕਰਨਾ ਸ਼ੁਰੂ ਕਰਾਂਗੇ ਪਰ ਮੈਂ ਕਿਉਂ ਕਿ ਤੁਸੀਂ ਅਗਲੇ ਦੋ ਮਹੀਨੇ ਇਹ ਆਪਣੀ ਸੈਗਮੈਂਟ ਠੀਕ ਕਰਲੇਗੀ ਤਾਂ ਅੱਗੇ ਵੀ ਚਲਾਵਾਂਗਾ ਤੁਸੀਂ ਇਸ ਦਿਨ ਸ਼ੁੱਕਰਵਾਰ ਵਾਲੇ ਦਿਨ ਪੰਜਾਬ ਨਾਲ ਸੰਬੰਧਤ ਕੋਈ ਵੀ ਗੱਲ ਕਰ ਸਕਦੇ 18442471550 ਧੰਨਵਾਦ ਦੀ ਲਾਈਨ ਨੰਬਰ 2 ਭਾਈ ਜੀ ਮੈਂ ਇਹੀ ਕਹਿਣਾ ਚਾਹ ਤ੍ਰੱਕਰ ਭਰਾਵਾਂ ਨੂੰ ਬਲੀ ਤੇ ਸੋਸ਼ਲ ਮੀਡੀਆ ਤੇ ਬਣਾਓ ਮੈਂਬਰਸ਼ਿਪਾਂ ਲਓ ਤੇ ਪੋਲੀਟਿਸ਼ੀਅਨਾਂ ਨਾਲ ਸ਼ੇਅਰ ਕਰੋ ਇਹ ਸੋਸ਼ਲ ਮੀਡੀਆ ਬਹੁਤ ਪਾਵਰਫੁਲ ਆ ਹਾ ਹਾ ਇਹਨਾਂ ਵਿੱਚ ਜਿਹੜੇ ਕਨਸਰਨ ਬੀਸੀ ਟਰੱਕ ਡਰਾਈਵਰਸ ਜਾਂ ਕਨਸਰਨਡ ਕੈਨੇਡੀਅਨ ਟਰੱਕ ਡਰਾਈਵਰਸ ਆਲਰੇਡੀ ਹੋਣੇ ਆ ਸ਼ਾਇਦ ਉੱਥੇ ਕਮੈਂਟ ਪਾਓ ਤੇ ਪੋਲੀਟਿਸ਼ੀਨਾਂ ਨੂੰ ਸ਼ੇਅਰ ਕਰੋ ਗਰੁੱਪ ਓਕੇ ਥੈਂਕ ਯੂ ਓਕੇ ਥੈਂਕ ਇੱਕ ਗੀਤ ਪੰਜਾਬ ਦੇ ਬਾਰੇ ਤੁਹਾਨੂੰ ਸੁਣਾਉਣਾ ਤੇ ਤੁਹਾਡੀਆਂ ਕਾਲਜ਼ ਪਿੰਡ ਦੀ ਸੱਤ ਦੇ ਵਿੱਚ 1844 247 1550 ਨਵਾਂ ਗੀਤ ਬਾਪੂ ਪੰਜਾਬ ਸਿੰਘ ਗਰਲੀਨ ਸੇਖੋਂ ਦਾ ਵੀ ਅੱਜ 21ਵਾਂ ਜਨਮ ਦਿਨ ਹੈ ਜੀ ਬਈ ਜੀ ਸਿੰਘ ਸੇਖੋਂ ਨੇ ਕਿਹਾ ਯੂਵੀਸੀ ਕਲੋਨ ਨੇ ਪੜ੍ਹਦੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਬੱਚੀਆਂ ਵੱਧ ਤੋਂ ਵੱਧ ਪੜਨਤੀਆਂ ਰਾਣੀਆਂ ਜੁਨੀਵਰਸਿਟੀ ਰੋ ਗਰਲੀਨ ਕੋ ਸੇਖੋਂ ਤੁਹਾਨੂੰ ਬਹੁਤ ਵਧਾਈ ਤੇ ਗੀਤ ਬਾਪੂ ਪੰਜਾਬ ਸਿੰਘ ਸਿੱਖ ਰਾਜ ਦੇ ਵਿੱਚ ਅੱਜ ਦਾ ਬਹੁਤ ਇਤਿਹਾਸਕ ਦਿਨ ਅੱਜ ਦੇ 1859 ਦੇ ਵਿੱਚ ਚੇਲਿਆਂ ਲਈ ਪਿੰਡ ਦੇ ਵਿੱਚ ਗੋਰਿਆਂ ਦੇ ਨਾਲ ਖਾਲਸਾਈ ਫੌਜ ਦੇ ਜਰਨੈਲਾਂ ਦੇ ਦੀ ਲੜਾਈ ਜਿਹੜੀ ਫੌਜੀਆਂ ਦੀ ਸਿੱਧੀ ਹੋਈ ਸ਼ੇਰ ਸਿੰਘ ਅਟਾਰੀ ਸਾਹਿਬ ਚਤਰ ਸਿੰਘ ਦੀ ਕਮਾਂਡ ਥੱਲੇ ਖਾਲਸਾ ਫੌਜਾਂ ਨੇ ਐਡਾ ਲੋਹਾ ਖੜਕਾਇਆ ਕਿ 2000 ਤੋਂ ਵੱਧ ਫੌਜੀ ਤੇ ਅਫਸਰ ਮਰਵਾ ਕੇ ਅੰਗਰੇਜ਼ ਇਹ ਲੜਾਈ ਹਾਰ ਗਏ ਉਹਨਾਂ ਦਾ ਜਮੈਲ ਥਕਵਲ ਕਹਿੰਦਾ ਕਹਿੰਦਾ ਜੇ ਇੱਕ ਹੋ ਲੜਾਈ ਅਜਿਹੀ ਖਾਲਸੇ ਲੜ ਲੈਂਦੇ ਸਾਸੀ ਕਦੇ ਵੀ ਖਾਲਸਾ ਰਾਜ ਨੂ ਖੜਾ ਨਹੀਂ ਸੀ ਸਕਦੇ ਪਰ ਗਦਾਰਾਂ ਨੇ ਜਿਹੜਾ ਹਾਲ ਕੀਤਾ ਉਹ ਸਾਨੂੰ ਪਤਾ ਹੈ 13 ਜਨਵਰੀ 1849 ਨੂੰ ਚੇਲਿਆਂ ਵਾਲੀ ਦਾ ਜਿਹੜਾ ਲੜਿਆ ਗਿਆ ਪਿੰਡ ਦੀ ਸੱਤ ਤੁਹਾਡਾ ਸਵਾਗਤ ਸ੍ਰਿੰਦਰ ਸਿੰਘ ਮਾਗੜ ਜੀ ਲਾਈਨ ਨੰਬਰ 3 ਤੁਸੀਂ ਸਤਿ ਸ਼੍ਰੀ ਅਕਾਲ ਜੀ ਜਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਾਗੜ ਸਾਹਿਬ ਥੋੜਾ ਜਿਹਾ ਗਲਿਆ ਕਰਾਵਾ ਪਰ ਗੱਲ ਕਰਦੇ ਆਂ ਇਹ ਵਾ ਤੁਸੀਂ ਹੁਣੇ ਦੱਸਿਆ ਵੀ ਜੇ ਸਿੱਖ ਪੰਥ ਦੇ ਵਿੱਚ ਦਰਾਰ ਨਾ ਹੁੰਦੀ ਤਾਂ ਸਾਡੀ ਅੱਜ ਸਿਟੀ ਮੈਂ ਸਾਲ ਕੀ ਹੋਇਆ ਇੱਥੇ ਆਏ ਨੂੰ ਜਦੋਂ ਇੰਡੀਆ ਹੁੰਦੇ ਸੀ ਐ ਸੋਚਦੇ ਹੁੰਦੇ ਸੀ ਵੀ ਛੱਡ ਇੱਥੇ ਸਾਰਾ ਕੁਝ ਇੱਥੇ ਤਾਂ ਕੁਝ ਨਹੀਂ ਹੈ ਵੀ ਕੈਨੇਡਾ ਚੱਲੀਏ ਤੇ ਉੱਥੇ ਨਵੇਂ ਸਿਰੇੋਂ ਜ਼ਿੰਦਗੀ ਸ਼ੁਰੂ ਕਰਾਂਗੇ ਪਰ ਜੋ ਕੁਝ ਵਾਪਰ ਰਿਹਾ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਉਹ ਅੱਜ ਵੀ ਦਿਲੋਂ ਦਮਾਰਕ ਤੱਕ ਨਹੀਂ ਚੱਲ ਰਿਹਾ ਉਹ ਕੇ ਉੱਥੇ ਜਿਹੜੀ ਉਹ ਤਸ ਤਸ ਉੱਥੇ ਹੀ ਹੋਈ ਜਾਂਦੀ ਹੈ ਹੂੰ ਤੇ ਕਦੇ ਦੀਕਦਾ ਵੀ ਚੱਲ ਠੀਕ ਆ ਪਰਿਵਾਰ ਇੱਥੇ ਆ ਬੱਚਿਆਂ ਵੱਲੋਂ ਔਖੇ ਹੋ ਗਏ ਇੱਥੇ ਵੀ ਮੁੜ ਕੇ ਪੰਜਾਬ ਚਲੀਏ ਫੇਰ ਰਮੇਸਰੇ ਉਹ ਕੁਛ ਉਹ ਮਤਲਬ ਕੁਝ ਤੂਫਾਨ ਉੱਤਰ ਰਹੇ ਨੇ ਸਮਾਗ ਦੇ ਵਿੱਚ ਹੂੰ ਉਹਦਾ ਉਹਦਾ ਕਾਰਨ ਅੱਜ ਜਿਹੜਾ ਅਸੀਂ ਦੇਸ਼ ਦੀ ਕਿੱਕਰ ਵੀਆਂ ਜਿਹੜੀਆਂ 16-15 ਚ 19 ਤਕਲੀਫ ਨਹੀਂ ਸੀ ਦੰਦੇ ਜਿਹੜੇ ਕਸੀਰ ਸਾਡੇ ਕਈ ਉਰੀ ਹੱਥਾਂ 'ਚ ਲੱਗਦੇ ਉਹ ਤਕਲੀਫ ਨਹੀਂ ਸੀ ਦੰਦੇ ਜੋ ਅੱਜ ਤਕਲੀਫ ਹੈ ਜਿਹੜੇ ਹੁਕਮਰਾਨ ਨੇ ਉਹ ਸਾਡੇ ਛਾਤੀ ਤੇ ਬੈ ਕੇ ਕੱਲਾ ਖੰਜਰ ਔਰ ਦੇ ਨੂੰ ਖੰਜਰ ਨੂੰ ਘਣਾਉਦੇ ਵੀ ਨੇ ਤੇ ਜਿਹੜੇ ਜੁੱਤੀ ਜੱਟ ਲੋਕ ਨੇ ਅੱਜ ਵੀ ਉਹਨਾਂ ਦੀ ਵਾਵਾ ਵਾਵਾ ਕਰੀ ਜਾਂਦੇ ਨੇ ਬਾਦਲ ਨੇ ਕਾਂਗਰਸ ਨਾਲੋਂ ਵੀ ਵੱਧ ਮੈਂ ਬਿਆਨ ਨਹੀਂ ਕਰ ਸਕਦਾ ਵੀ ਇੰਨਾ ਮਾੜਾ ਕੀਦਾ ਸਿੱਖ ਪੰਥ ਦਾ ਮਾੜਾ ਕੀਤਾ ਤੇ ਅੱਜ ਦੇ ਵਿੱਚ মিডিਆ ਦੇ ਵਿੱਚ ਬਕਾਊ ਬੰਦੇ ਹੁੰਦੇ ਰਹੇ ਨੇ ਜੁੱਤੀ ਦਾ ਜਿਹੜਾ ਮਸਲਾ ਚਲੋ ਖਾਣਾ ਪੂਰਤੀ ਵਾਸਤੇ 20 ਬੰਦੇ ਸ਼ਾਇਦ ਕਹਿੰਦੇ ਹੋਣਗੇ ਬਹੁਤ ਲੋਕ ਕਹਿੰਦੇ ਨੇ ਮਾੜਾ ਕੰਮ ਤਾਂ ਮਾੜਾ ਹੀ ਆ ਉਹ ਫੋਟੋ ਵੀ ਯਾਦ ਕਰ ਲਓ ਦੇ ਵਿੱਚ ਬਜ਼ੁਰਗ 70 80 ਸਾਲ ਦਾ ਬਜ਼ੁਰਗ ਔਰ ਦਾੜੀ ਰੋੜੀ ਪੋਲਸ ਵਾਲੇ ਕਿ ਨੇ ਪੱਗ ਉਹਦੇ ਜੇ ਇਹ ਮੁੱਖ ਮੰਤਰੀ ਸਾਡੇ ਪੰਜਾਬ ਦੇ ਬਜ਼ੁਰਗਾਂ ਦੀ ਆ ਹਾਲਤ ਹੋ ਸਕਦੀ ਆ ਜਾਂ ਫਿਰ ਜੇ ਦੁੱਥੇ ਤੇ ਕਿਸੇ ਨੇ ਕਰਤਾ ਫਿਰ ਫਿਰ ਅਸੀਂ ਉਹਨੂੰ ਕੀ ਕਰੀਏ ਪਰੰਪਰਾ ਤਾਂ ਤੁਸੀਂ ਹੋਰੀ ਆ ਇਹ ਕਿ ਬਜ਼ੁਰਗ ਹੋਵੇ ਜਾਂ ਕੋਈ ਹੋਵੇ ਵੱਡਾ ਹੋਵੇ ਛੋਟਾ ਹੋਵੇ ਉਹ ਕਰੋ ਪਰੰਪਰਾ ਦਾ ਤੁਸੀਂ ਹੁਕਮਰਾਨ ਤਾਂ ਤੁਸੀਂ ਹੋ ਤੋੜੀਓ ਲੋਕਾਂ ਨੇ ਤੁਹਾਡੇ ਪਿੱਛੇ ਹੀ ਲੱਗਣਾ ਉਹ ਮਨ ਬੜਾ ਗਿਲਸਾਵ ਮਤਲਬ ਕਿ ਐਸੇ ਟਿਕਦਾ ਨਹੀਂ ਹੈਗਾ ਕੈਨੇਡਾ ਚ ਛੜਦੀ ਕਲਾ ਚ ਰਹੋ ਬਾਈ ਜੀ ਛੜਦੀ ਕਲਾ ਚ ਰਹੋ ਪੰਜਾਬ ਦਾ ਤੁਸੀਂ ਸਾਲ ਹੋਇਆ ਸੀ ਛੜਦੀ ਕਲਾ ਚ ਹੁਣ ਪਿੱਛੇ ਟਿਕਦਾ ਸਾਲ ਵਾਲਾ ਦਾ ਕਿੱਥੇ ਤੇ ਰਹੀ ਗੱਲ ਉਸ ਕਾਂ ਦੀ ਰੱਤੇ ਖੇੜੇ ਦੀ ਉਹ ਬੰਦਾ ਹੁਣ ਤਾਂ ਉਹ ਟਿਕ ਟਲਣ ਲੱਗਿਆ ਲੰਬੀ ਤੋਂ ਉਹ ਕਹਦਾ ਬਚੋਂ ਮਾ ਜੀ ਮੈਂ ਤਾਂ ਨਾ ਇਹ ਗੱਲ ਕਰਨੀ ਸੀ ਕਿ ਜਦ ਸੋਸ਼ਲ ਮੀਡੀਆ ਤੇ WhatsApp ਵਗੈਰਾ ਤੇਰਾ ਆਪਣੇ ਗਰਲਸ ਯੂਜ਼ ਕਰਦੇ ਲੋਹੜੀ ਆ ਰਾਈਟ ਤੁਸੀਂ ਇੱਕ ਵਾਰੀ ਬੰਦੇ ਨੂੰ ਮੈਸੇਜ ਕਰਦਾ ਹੈਪੀ ਲੋਹੜੀ ਜੇ ਨਾ ਤੁਹਾਨੂੰ 50 ਕਹਿੰਨੇ ਜਾਂ 5000000 ਨੇ ਬੁੱਕਰੇ ਬੁੱਕਰੇ ਮੈਸੇਜ ਤੇ ਕਹਿੰਦਾ ਨੂੰ ਜ਼ਰੂਰੀ ਆ ਕਿ ਤੁਸੀਂ ਉਹੀ ਸਾਰਿਆਂ ਨੂੰ ਬਾਰ-ਬਾਰ ਦੁਆਰਾ ਕੋ ਤੁਹਾਡਾ ਬੱਚੇ ਹੋਵੇ ਤੁਹਾਨੂੰ ਇੱਕ ਵਾਰੀ ਹੈਪੀ ਬਰਥਡੇ ਕਹਿੰਦਾ ਤੁਸੀਂ ਉਹਨੂੰ ਕੀ ਤੁਹਾਨੂੰ ਗੁੱਸਾ ਨਹੀਂ ਆਊਗਾ ਬਿਲਕੁਲ ਉਹ ਉਸੇ ਸਮੇਂ ਫਾਰਵਰਡ ਕਰਦੇ ਆ ਜੀ ਇੱਕ ਮੈਸੇਜ ਆ ਗਿਆ ਤੇ ਗਾ ਚੱਕ ਕੇ ਉਹ ਫਾਰਵਰਡ ਕਰ ਦਿੰਦੇ ਆ ਕਾਲੋ ਸੇਮੀ ਹੁੰਦੀ ਆ ਬਾ ਉਹਨੂੰ ਪੜ੍ਹਨਾ ਵੀ ਨਹੀਂ ਕਿ ਹੈ ਕੀ ਮਤਲਬ ਆ ਉਹ ਫਾਰਵਰਡ ਕਰਨਾ ਜ਼ਰੂਰ ਆ ਕਿ ਕੋਈ ਹੋਰ ਨਾ ਮੇਰੇ ਤੋਂ ਪਹਿਲਾਂ ਇਹ ਕਰ ਜਵੇ ਹੂੰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਤੁਹਾਨੂੰ ਦੁੱਖਾ ਮੈਂ ਤੁਹਾਨੂੰ ਵਾਰੀ ਆਪਾਂ ਗੱਲ ਹੋਈ ਆ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਬਹੁਤ ਜ਼ਰੂਰੀ अच्छा जी ਤੇ ਇੱਕ ਹੁਣ ਇਲੈਕਸ਼ਨਾਂ ਦਾ ਟਾਈਮ ਆ ਪੰਜਾਬ ਦੇ ਵਿੱਚ ਤੇ ਸਮੇਂ ਤੇ ਸਾਰੇ ਲੀਡਰ ਹੁੰਦੇ ਨੇ ਆਰ ਡਰ ਰੇਡੀਓ ਸਟੇਸ਼ਨ ਦੇ ਉੱਤੇ ਦੇ ਕਿਸੇ ਕੋਲ ਕਿਸੇ ਨੇ ਇਹ ਸੁਹਾਣ ਨਹੀਂ ਚੁੱਕਿਆ ਵੀ ਐਲ ਆਰ ਜੀ ਦੀਆਂ ਮੁਸ਼ਕਲਾਂ ਆਪਣੀਆਂ ਕੀ ਨੇ ਇੱਥੇ ਬੈਠਿਆ ਨਹੀਂ ਆ ਪਿਆਰ ਦੀ ਚਾਹਤ ਆ ਵੀ ਆ ਚਾਹੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਇੱਕ ਸਪੋਰਟ ਐ ਐਨ ਆਰ ਆਈ ਦੀ ਪਰ ਅਜੇ ਤੱਕ ਆਵਾਜ਼ੀ ਪਾਰਟੀ ਨੇ ਵੀ ਆਪਣੇ ਮੈਨੀਫੈਸਟੋ ਦੇ ਵਿੱਚ ਕੋਈ ਐਨਆਰਆਈ ਬਾਰੇ ਕੋਈ ਗੱਲ ਨਹੀਂ ਕੀਤੀ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਦਾ ਮੁਸ਼ਕਲਾ ਨੇ ਗੱਲ ਕੀਤੀ ਸੀ ਕਿ ਇੱਕ ਮਜੂਦਾਰ ਨੇ ਬਹੁਤ ਘਾੜ ਕੀਤਾ ਤੇ ਉਹਦੇ ਵਿੱਚ ਐਨਆਰਆਈਆਂ ਨੂੰ ਵੀ ਨਹੀਂ ਛੱਡਿਆ ਹੈਗਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ 2013 ਦੇ ਵਿੱਚ ਪੰਜਾਬ ਗਵਰਨਮੈਂਟ ਨੇ ਇੱਕ ਕਲੌਨ ਬਣਾਇਆ ਐਨਆਰਆਈ ਰਾਜ ਜਿਹੜਾ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਹੈ ਇਹ ਜਿਹੜਾ ਐਨ ਆਰ ਆਈ ਉੱਥੇ ਜਾ ਕੇ ਪਰਮਾਨੈਂਟ ਰਹੂੰਗਾ ਰੈਜ਼ੀਡੈਂਟ ਕਰੂੰਗਾ ਉਹੀ ਆਪਣੀਆਂ ਜਾਇਦਾਦਾਂ ਖਾਲੀ ਕਰਾ ਸਕਦਾ ਨਹੀਂ ਤਾਂ ਦੂਸਰਾ ਨਹੀਂ ਕਰਾ ਸਕਦਾ ਬੀ ਕਾਨੂੰਨ ਤੁਸੀਂ ਇੱਕ ਵਾਰੀ ਇੱਕ ਵਕੀਲ ਵੀ ਲੈ ਕੇ ਆਏ ਸੀ ਉਹਨੇ ਵੀ ਦੱਸਿਆ ਸੀ ਕਿ ਉਹਦੇ ਵਿੱਚ ਆਪਣਾ ਇਮੀਡੀਏਟ ਵਾਸਤੇ ਉਹ ਆਪਣਾ ਕੋਈ ਵੀ ਪ੍ਰਾਪਰਟੀ ਖਾਲੀ ਕਰਾ ਸਕਦਾ ਹੈ ਜਦ ਕਿ 2013 ਚ ਪੰਜਾਬ ਗਵਰਨਮੈਂਟ ਨੇ ਉਹ ਕਾਨੂੰਨ ਨੂੰ ਓਵਰਲੈਪ ਕਰਕੇ ਕਰ ਦਿੰਦਾ ਵੀ ਜਿਹੜਾ ਪਰਮਨੈਂਟ ਰੈਜ਼ਿਡੈਂਸ ਹੋਊਗਾ ਵਾਪਸ ਆ ਕੇ ਪੰਜਾਬ ਚ ਪੱਕੇ ਤੌਰ ਤੇ ਰਹੂਗਾ ਉਹ ਕਰਾ ਸਕਦਾ ਧੰਨਵਾਦ ਜੀ ਓਕੇ ਬਾਈ ਜੀ ਸਹੀ ਆਪਾਂ ਦੋ ਕੱਪਿਆਂ ਦੇ ਵਿੱਚ ਉਹ ਸਿੰਘਾਂ ਨੂੰ ਯਾਦ ਕਰਨਾ ਜੋ ਪੰਜਾਬ ਲਈ ਜਾਨ ਵਾਰ ਗਏ ਪਰ ਮੂੰਹ ਦੇ ਵਿੱਚ ਸੀ ਨਹੀਂ ਕੱਢੀ ਬਾਕੀ ਸਾ ਲਾਲਜੋਤ ਸਿੰਘ ਲਾਈਨ ਨੰਬਰ 3 ਤੇ ਆ ਉਸੋ ਤੇ ਸਤਿਕਾਰ ਸਹਿਬ ਸਤਿਰੀਆ ਕਾਲ ਜੀ ਧੰਨਵਾਦ ਸਮਾਂ ਦੇਣ ਦਾ ਜੀ ਦੇਖੋ ਕਿ ਮੈਂ ਗੱਲ ਕਰਨੀ ਸੀ ਵੀ ਜਿਹੜੀ ਗੱਲਬਾਤ ਚੱਲ ਰਹੀ ਆ ਮੀਡੀਆ ਦੇ ਉੱਤੇ ਮਿਸਟਰ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੇ ਪੰਜਾਬ ਦੇ ਸਤਕਾਰਯੋਗ ਮੁੱਖ ਮੰਤਰੀ ਆ ਉੱਤੇ ਜੁਤੀ ਸਥਿਤੀ ਗਈ ਆ ਉਹਦਾ ਬੰਦੇ ਦਾ ਕਰਨਾ ਭਾਵੇਂ ਗਲਤ ਹੋ ਸਕਦਾ ਪਰ ਹੋਣਾ ਉਹਦਾ ਠੀਕ ਆ ਨੰਬਰ 2 ਚਲੋ ਜੁੱਤੀ ਸਿਰ ਤੇ ਉਹ ਜਿਹੜੇ ਪੁਲਿਸ ਦੋ ਹਿੰਦੂ ਜੈਂਟਲਮੈਨ ਸੀ ਜਿਹਨਾਂ ਨੇ ਬਾਹਰ ਤੋਂ ਫੜਿਆ ਸੀਗਾ ਮੈਂ ਦੇਖਿਆ ਜਿਹੜਾ YouTube ਦੇ ਉੱਤੇ ਉਹਨਾਂ ਨੇ ਕੁਝ ਨਹੀਂ ਕੀਤਾ ਬਿਲਕੁਲ ਇੱਕ ਸਾਡਾ 3 ਸਟਾਰ ਪਾਗੜਾ ਆਉਦਾ ਤੇ ਉਸ ਭਾਈ ਗੁਰਵਚਨ ਸਿੰਘ ਨੂੰ ਕੁੜੀ ਦੀ ਗਾਲ ਕੱਢ ਕੇ ਮੂੰਹ ਤੇ ਛਪੇੜ ਮਾਰਦਾ ਦੇਖੋ ਮੈਂ ਹੈਰਾਨ ਦੀ ਗੱਲ ਹੈ ਕਿ ਖੇਤਵਾਰ ਨੂੰ ਖਾਣੀ ਸ਼ੁਰੂ ਕਰ ਦਿੱਤੀ ਆ ਕਿ ਜੇ ਉਹਨਾਂ ਜੁੱਤੀ ਸਿੱਟੀ ਜਾਂ ਜੁੱਤੀ ਮਾਰੀ ਉਹਦਾ ਕਾਰਨ ਕੀ ਹੈ ਦੇਖੋ ਇਹ ਹੀ ਪੰਜਾਬ ਸਰਕਾਰ ਹੈ ਜਦੋਂ ਭਾਈ ਜਰਨੈਲ ਸਿੰਘ ਸਤਕਾਰਯੋਗ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਚੋਣ ਲੜ ਜੁੱਤੀ ਮਾਰੀ ਸੀਗੀ ਉਸ ਤੋਂ ਲਈ ਪ੍ਰਕਾਸ਼ ਸਿੰਘ ਬਾਦਲ ਇਹ ਮਿਸਟਰ ਸੁਖਵੀਰ ਸਿੰਘ ਬਾਦਲ ਇਹ ਸ਼੍ਰੋਮਣੀ ਪ੍ਰਬੰਧਕ ਕਮੇਟੀ ਇਹ ਸਾਰਾ ਲਾੜਾ ਉਹਨੂੰ ਹੱਥਾਂ ਦੇ ਚੁੱਪੀ ਫਿਰ ਦੱਸ ਹੈ ਬਹੁਤ ਚੰਗਾ ਕੰਮ ਕੀਤਾ ਜਦੋਂ ਇਹਨਾਂ ਦੀਆ ਕਰਤੋਤਾ ਇਹਨਾਂ ਦੀਆ ਬੇਈਮਾਨੀਆਂ ਇਹਨਾਂ ਨੂੰ ਜਗਾਉਣ ਵਾਸਤੇ ਉਹ ਜੁੱਤੀ ਮਾਰੀ ਆ ਤੇ ਹੁਣ ਉਹ ਮਾਰਾ ਹੋ ਗਿਆ ਤਾਂ ਹੁਣ ਆਪਣੇ ਐਲਕਾਰਾਂ ਦੇ ਕੋਲੋਂ ਉਹਦੀ ਜਦਾ ਡੰਡੇ ਛੱਲਾ ਲੈ ਲਈ ਹੁਣ ਉਹਦੀ ਛੱਲ ਲਾਉਣੇ ਸ਼ੁਰੂ ਕਰਦੇ ਤੇ ਉਹਨੂੰ ਕਹਾਂ ਇਹ ਕਿੱਛੇ ਗੜਾ ਹੈਗਾ ਇਹ ਤਾਂ ਅਚੋਤ ਪੰਤੇ ਸਰਕਾਰ ਹੋਵੇ ਪੰਤੇ ਸਰਕਾਰ ਹੋਵੇ ਤੇ ਐਡਾ ਜੈਂਟਲਮੈਨ ਪੰਜ ਵਾਰਾ ਸੁਧਰਿਆ ਹੋਇਆ ਬੰਦਾ ਮੁੱਖ ਮੰਤਰੀ ਬਣਿਆ ਹੋਵੇ ਤੋ ਆਪਣੇ ਆਤਿਆਂ ਨੂੰ ਪੁੱਛਿਆ ਮੀਡੀਆ ਨੇ ਵੀ ਤੂੰ ਕੀ ਕਰਨਾ ਜੀ ਕਾਨੂੰਨ ਜੋ ਮਰਜੀ ਕਰੇ ਮੈਂ ਨਹੀਂ ਹੁਣ ਕੁਝ ਕਹਦਾ ਕਾਨੂੰਨ ਕਰੇ ਕਾਨੂੰਨ ਇਹ ਕਹਿੰਦਾ ਕਿ ਇੱਕ ਫੜੇ ਮੂੰਹ ਤੇ ਛਟੇੜਾ ਮਾਰੋ ਪ੍ਰਕਾਸ਼ ਨੇ ਬਾਦਲ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਤੇ ਵਾਲੀ ਤੁਹਾਡੇ ਪਈ ਹੈ ਚਤਰੰਬਰ ਕਿਉਂ ਪਈ ਉਹਨੂੰ ਵੀ ਸਤੇ ਹੋਏ ਨੂੰ ਜਗਾਇਆ ਕਿ ਤੂੰ ਜਿਹੜੀਆਂ ਕਰਤੂਤਾ ਕਰ ਰਹੀ ਤੁਹਾਡੀ ਪਾਰਟੀ ਕਾਂਗਰਸ ਸਿੱਖ ਜਗਮਾ ਦੇ ਬਲੂਨ ਛੜਕ ਰਹੀ ਹੈ ਤੇ ਇਹ ਜੁੱਤੀ ਉਹ ਆ ਕਿ ਮਿਸਟਰ ਪ੍ਰਕਾਸ਼ ਸਿੰਘ ਬਾਦਲ ਆਠਾ ਜਿਹੜੇ ਉਹ ਆਪਣੇ ਮਧੋਹਸ਼ ਵਿੱਚ ਸੁਤਾ ਹੋਇਆ ਵਾ ਬਗਰਾੜੀ ਕਾੜਦਾ ਦੇਖ ਉਸ ਮਿਸਟਰ ਸ਼ਰਮੇ ਨੂੰ ਪੇ ਲਾਤਾ ਉਹਦਾ ਸਿਕਾਦੇ ਸਿਰ ਦੇ ਉੱਤੇ ਐਪਰ ਐਸਐਸਪੀ ਦੇ ਦੋ ਬੰਦੇ ਔਰ 40 50 ਮਰਵਾ ਕੇ ਫਟਰ ਕਰਵਾ ਕੇ ਤੇ ਇਸ ਕਰਕੇ ਉਹ ਜੁੱਤੀ ਦਾ ਕੋਈ ਕਸੂਰ ਨਹੀਂ ਨਾ ਛੜਗਾਲੇ ਦਾ ਸਰਪਤੇ ਸਰਪ ਪ੍ਰਕਾਸ਼ ਨੂੰ ਬਾਦਲ ਨੂੰ ਹਲੂਣਾ ਦਿੱਤਾ ਕਿ ਆਪਣੀ ਡਿਊਟੀ ਔਰ ਆਪਣੀ ਜ਼ਿੰਮੇਵਾਰੀ ਸਮਝਾ ਪਰ ਤੁਸੀਂ ਪ੍ਰਤੀ ਕੀ ਆ ਪੰਜਾਬ ਪ੍ਰਤੀ ਕੀ ਲੋਕਾਂ ਦੀਆਂ ਮੁਸ਼ਕਲਾਂ ਪਰਤੀ ਕੀ ਆ ਪਰ ਮੈਂ ਹੈਰਾਨ ਵਾ ਉਸ ਪੱਗ ਵਾਲੇ 3 ਸਟਾਰ ਦੇ ਉੱਤੇ ਸਰਕਾਰ ਦੇ ਟੁਕੜ ਤੇ ਉਹ ਕੰਮ ਨੂੰ ਤੇ ਤੇ ਚਪੇੜਾ ਮਾਰਦਾ ਤਾਂ ਉਹ ਕਿੱਦਾਂ ਦਾ ਕਰਤਾਰ ਉਸਨੇ ਗਵਰਨਮੈਂਟ ਦੇ ਵਾਸਤੇ ਜਾਂ ਲੋਕਾਂ ਵਾਸਤੇ ਨੁਭਾਰਿਆ ਵਾ ਜੀ ਸਮਾਨਨਾ ਧੰਨਵਾਦ ਸਬਦੇਵ ਸਿੰਘ ਢਿੱਲੋਂ ਜੀ ਲਾਈਨ ਨੰਬਰ 4 ਹਾਂਜੀ ਸਤਿ ਸ੍ਰੀ ਅਕਾਲ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਲੋ ਸਰ ਮੈਂ ਬੁਸਟਨ ਟੈਕਸਸ ਤੋਂ ਬੋਲਦਾ ਜੀ ਜੀ ਧੰਨਵਾਦ ਬਹੁਤ ਬਹੁਤ ਹਾਂ ਜੀ ਮੈਂ ਤੁਹਾਡਾ फैन ਸ਼ੇਰੀ ਪੰਜਾਬ ਤੋਂ ਹਾਂ ਜਦੋਂ ਸ਼ੇਰੀ ਪੰਜਾਬ ਤੁਸੀਂ ਆਉਂਦੇ ਹੁੰਦੇ ਸੀ ਥੈਂਕ ਯੂ ਬਾਈ ਜੀ ਥੈਂਕ ਯੂ ਸੋ much ਧੰਨਵਾਦ ਹਾਂ ਜੀ ਮੈਂ ਜੀ ਮੈਂ ਮੇਲੇ ਦੋ ਗੱਲਾਂ ਕਰਨੀਆਂ ਕਮੇਲਾ ਸਾਡੇ ਇਲਾਕੇ ਤੇ ਘਟਿਆ ਜੀ ਉੱਥੇ ਬੋਲਦਾ ਦਾ ਸਵੀਰ ਨੂੰ ਮੇਲਾ ਚੱਲੂ ਹੋਣਾ ਜੀ ਹਰ ਸਾਲੀਆਂ ਦੌੜਨਾ ਕਿੱਥੇ ਜੀ ਪਿੰਡ ਅਤਾ ਜੀ ਗ੍ਰਾਂ ਦੇ ਨਾਲ ਹਟ ਹਾਂ ਫਲੋਰ ਦੇ ਗ੍ਰਾਂ ਹਾਂ ਠੀਕ ਗਰਾਂ ਜੀ ਬਿਲਕੁਲ ਜੀ ਜੀ ਮੰਡਕੀ ਦੀਆਂ ਦੌੜ ਜੀ ਬਾਹ ਜੀ ਸਵੇਰ ਤੋਂ 9 ਵਜੇ ਨਾਲ ਚੱਲ ਜਾਣਾ ਜੀ ਸਹਾਂ ਸੱਜ ਤਾਂ ਕੇ ਹੁਣ ਕਹਿਣਾ ਜਲੇਬੀਆਂ ਆ ਗਈਆਂ ਜਲੇਬੀਆਂ ਲਾ ਨੂੰ ਭੱਜ ਜਾਣਾ ਜਲੇਬੀਆਂ ਤਾਂ ਕੇ ਸੇ ਜਾਣ ਕੇ ਬੋਲ ਦੇਖਣ ਲੱਪਣੇ ਤੇ ਕਦੀ ਨੂੰ ਕਦੀ ਪਕੌੜੇ ਲਾ ਨੂੰ ਉਹ ਬਹੁਤ ਚੇਤਾ ਆਉਂਦਾ ਜੀ ਦੂਜੀ ਗੱਲ ਇਹ ਜੀ ਸਾਡੇ ਪਿੰਡੋਂ ਮੇਮ ਹੁੰਦਾ ਸੀ ਝੁਰੋਂ ਲੋਰਾਂ ਚ ਹੋ ਜਾਣਾ ਜੀ ਹੁਣ ਦਾਤੀ ਚੱਕ ਲੈਣੀ ਇਨੀ ਦਿਨੀ ਜਿਹੜੇ ਵੱਡਾ ਲੱਗਿਆ ਹੋਣੀਆਂ ਵੱਡਾਂ ਚ ਫੇਰ ਆਉਣੀ ਹੈ ਨਾ ਕਿੱਥੇ ਬਾਇੜਾ ਘਰ ਵੀ ਜਾਏਗੀ ਓਕੇ ਸਸਿਕਾਲ ਸਸਿਕਾਲ ਵਈ ਸਰ ਸਿੰਘ ਦੀ ਲਾਈਨ ਨੰਬਰ 5 ਐਨੋ ਸਸਿਕਾਲ ਵਈ ਜੀ ਸਸਿਕਾਲ ਜੀ ਭਾਈ ਇਹ ਜੁੱਤੀਆਂ ਖਿੱਤਣ ਵਾਲਾ ਮਾਮਲਾ ਨੇ ਮਤਲਬ ਮਾਮਲਾ ਚੱਕ ਲਿਆ ਕਿ ਪੁੱਛਾ ਹੁੰਦਾ ਮਤਲਬ ਲੀਡਰ ਆਪਣੀ ਬੰਦਿਆ ਦਾ ਪਰ ਕਈ ਵਾਰੀ ਫਿਰ ਆਪਾਂ ਇਹ ਵੀ ਨਹੀਂ ਦੇਖਦਾ ਵੀ ਮੁਰਕੇ ਦਿੰਦੇ ਆ ਤੇ ਉਹਨੂੰ ਵੀ ਬਾਹਰ ਜਾ ਦਿੱਤਾ ਤੇ ਬਾਅਦ ਨੇ ਮਰਦ ਪਾਣੀ ਕਰ ਲਿਆ ਮਤਲਬ ਉਹ ਪਹਿਲਾਂ ਇੰਨੀ ਗ੍ਰੈਂਡ ਦੇ ਵਿੱਚ ਵੀ ਚੱਕਰ ਚੱਲਿਆ ਉਦਵਾ ਕੇਈ ਬਾਗ ਦੇ ਦੋ ਵਾਈ ਚੁੱਪਿਆ ਸੀ ਪ੍ਰਕਾਰ ਪ੍ਰਸਕਾਰ ਰਜ਼ਰ ਚਾਪਿ ਚਿਹਰਾਣੇ ਚ ਹੁਣ ਬਾਦਲ ਸਾਹਿਬ ਇਹ ਪੁਰਾਣੀ ਕਿਸ ਤਰ੍ਹਾਂ ਕੰਮ ਚ ਚੱਲੀ ਕੀ ਹੋ ਇਹ ਬਿਲਕੁਲ ਗਲਤ ਗੱਲ ਹੈ ਕੋਈ ਉਹ ਨਹੀਂ ਆ ਪਿੰਡਾਂ ਦੇ ਵਿੱਚ ਜਿਹੜਾ ਗਾਲੀ ਗੋਲ ਦੋ ਰਿਹਾ ਇੱਕ ਨੂੰ ਜੀ ਆਪਾ ਚੱਡਿਆ ਨੋ ਕਾਹਦੇ ਕੋਈ ਦੁਆ ਨਾ ਰਹੀ ਜਾਂਦਾ ਨੂੰ ਕੇਸ ਦੇ ਫਿਰ ਜਹੀਏ ਪਰ ਲੋਕ ਉਹ ਵਾਂਗ ਕਰੀ ਜਾਂਦੇ ਆ ਆ ਇੱਕ ਕੋਈ ਮੈਨੂੰ ਮਾਹ ਮਾਹ ਤੇ ਹੋਣਾ ਉਹ ਕੋਠਾ ਮੰਗਣਿਆ ਹੋਊਗਾ ਨਿਕਲ ਕੇ ਆਊਗਾ ਸਾਹਮਣੇ ਬਿਲਕੁਲ ਜੀ ਕਿਉ ਸਰਪਿੰਦਰ ਸਿੰਘ ਜੀ ਲਾਈਨ ਨੰਬਰ 2 ਅਨਿਵਜ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਨੇਵਾਜੀ ਮੈਂ ਤਾਂ ਇੱਕੋ ਗੱਲ ਕਹਿਣੀ ਥੋੜੀ ਜਿਹੀ ਆ ਬਈ ਜੀ ਅਸੀਂ ਇੱਥੇ ਰਹਿ ਵੀ ਤੇ ਉੱਥੇ ਸਾਡੇ ਧਰਤੀ ਘਰ ਆਪਣਾ ਨਾ ਪਿਆ ਸੁਣਾ ਉੱਥੇ ਕੋਈ ਉਸ ਵੀ ਨਾ ਵੀ ਫਰੰਦਾ ਵੀ ਫਰਨਾ ਮਾਰੇ ਹੈ ਠੀਕ ਐ ਇਹ ਗੱਲ ਇਹ ਆ ਜਾਂਦੀ ਆ ਵੀ ਹੁਣ ਤੇ ਫੇਰ ਉੱਥੇ ਕਰਨੇ ਆ ਠੀਕ ਐ ਜੇ ਉਹਨਾਂ ਦੀਆਂ ਪ੍ਰੋਬਲਮਾਂ ਸੋਲਵ ਕਰ ਸਕਦਾ ਠੀਕ ਆ ਆਪਣੀਆਂ ਉਹਨਾਂ ਦੀਆਂ ਪ੍ਰੋਬਲਮਾਂ ਸੋਲਵ ਨਹੀਂ ਹੁੰਦੀ ਪਹਿਨੀ ਲੱਜਣਦੀ ਐਨਆਰਐਨ ਦੀਆਂ ਪ੍ਰੋਬਲਮਾਂ ਸੋਲਵ ਕਰੋ ਜੀ ਹੈ ਜੀ ਇਹ ਬੇਈਮਾਨੀ ਸਾਡੇ ਦੇ ਵਿੱਚ ਆ ਜੇ ਆਪਾਂ ਇਹ ਸੋਚ ਕੇ ਮੇਰਾ ਭਰਾ ਸੋਚ ਰਿਹਾ ਬੇਈਮਾਨੀ ਸਾਡੇ ਵਿੱਚ ਆ ਸਾਡੇ ਪਰਿਵਾਰਾਂ ਦੇ ਵਿੱਚ ਸਰਕਾਰਾਂ ਨੇ ਤਾਂ ਮਤਲਬ ਕਿ ਆਪਣਾ ਉਹ ਹਿਸਾਬ ਨੇ ਉਸ ਕੰਟਰੀ ਨੂੰ ਰਨ ਕਰਨਾ ਹੈ ਸੂਬੇ ਨੂੰ ਰਨ ਕਰਨਾ ਤੇ ਉਹਨਾਂ ਨੇ ਉਹਨਾਂ ਵੇ ਸੋਚਣਾ ਥੋੜਾ ਘੱਟ ਸੋਚਣਗੇ ਵਪਾਰਕ ਸੰਦੇਸ਼ 1:40 ਮਿੰਟ ਜੀ ਸ਼ਿਵਦੇਵ ਸਿੰਘ ਜੀ ਤੁਸੀਂ ਇਹਦੇ ਤੋਂ ਲਾਈਨ ਨੰਬਰ 3 ਉਹ ਰਸੀਗਰ ਜੀ ਅੱਛੇ ਕਾਲ ਜੀ ਬਾਈ ਜੀ ਕੋਈ ਸੀ ਤਾਂ ਪੂਰੀ ਦਾ ਘਾਣ ਕੀਤਾ ਇਹਨੂੰ ਸੋਧ ਤਾਂ ਬਹੁਤ ਵਧੀਆ ਹੋਇਆ ਹੂੰ ਕਾਂਗਰਸ ਨੂੰ ਅਫਰੀ ਨਹੀਂ ਕਰਦਾ ਉਹ ਵੀ ਦੁਸ਼ਮਣਾ ਬਟ ਬਾਈ ਜੀ ਇਹ ਸਿੱਖਾਂ ਦੇ ਪੇਸ਼ੇ ਸਿੱਖਾਂ ਦਾ ਹੀ ਵੱਡਾ ਦੁਸ਼ਮਣ ਬਾਦ ਲੋ ਉਹ ਤੋਂ ਵੀ ਜ਼ਿਆਦਾ ਆ ਤੇ ਹੁਣ ਕਹਿੰਦੇ ਆ ਜਿਹੜੇ 90 ਸਾਲ ਦੀ ਉਮਰ 'ਚ ਸਾਡੇ ਗੁਰੂ ਦੀ ਵੱਡਾ ਹੋ ਗਿਆ ਮੈਂ ਤਾਂ ਕਹਿੰਦਾ ਜੋ ਹੋਇਆ ਚੰਗਾ ਹੋਇਆ ਹੋਰ ਵੀ ਪੈਣੀਆਂ ਚਾਹੀਦੀਆਂ ਥੈਂਕ ਯੂ ਬਾਈ ਜੀ ਹਰਜੀਤ ਸਿੰਘ ਦੀ ਲਾਈਨ ਨੰਬਰ ਹਰਜੀਤ ਸਿੰਘ ਜੀ ਹਲੋ ਸਤਿਕਾਰਯੋਗ ਜੀ ਸਸੀਕਲ ਜੀ ਜੀ ਗੱਲ ਆ ਇੱਕ ਤਾਂ ਦੇਖੋ ਜਿਹੜੀ ਛਿੱਟੀ ਦੂਜੇ ਦੇ ਨਤੀਜੇ ਦੇ ਨਾਲ ਟੈਕਟਾ ਆਫਰ ਹੋ ਗਈ ਤੇ ਇਹਦੇ ਵਿੱਚ ਬੜੀ ਰਾਜਨੀਤੀ ਤਾਂ ਨਹੀਂ ਦੂਜੀ ਗੱਲ ਚਲੋ ਇੱਕ ਚੱਲਦੀ ਰਹਣੀ ਟੂਰਨਾਮੈਂਟ ਹੋਰ ਤਾਂ ਟੂਰਨਾਮੈਂਟ ਤਾਂ ਪਹਿਲਾਂ ਹੁੰਦੇ ਸੀ ਤੁਹਾਡੇ ਕੰਦੇ ਤੁਹਾਡੇ ਪਿੰਡ ਜਾਂਦੇ ਟੂਰਨਾਮੈਂਟ ਫੁੱਟਬਾਲ 55 ਕਿਲੋ ਖੇਡਣ ਤੇ ਉਹਨੇ ਪਾ ਦੇਣਾ ਤੁਹਾਡੇ ਕੋਲ ਪਿੱਪੜ ਨਾਲ ਸੰਡਾਲਮ ਕਾਇਆ ਨਾ ਸੀ ਉਹ ਤੇ ਬਾਬਾ ਹੁੰਦਾ ਸੀ ਚਾਰ ਪਲਗਾ ਟੈਂਟਾਂ 'ਚ ਭੁੱਖੇ ਰਹਿਣ ਦਾ ਬੇਤਨ ਉਹਨਾਂ ਸਾਬੇ ਨੂੰ ਕਹਿੰਦਾ ਅੱਜ ਅੱਪਾ ਕਿੱਲੋ ਵੀ ਨਾ ਲਾਉਣਾ ਬੜਾ ਬੜਾ ਬਾਬਾ ਸੀ ਤੁਹਾਡੇ ਉਹ ਤੇ ਲੰਗਰ ਛੱਕੇ ਉਹ ਜਿਹੜੇ ਦੇ ਨਜ਼ਾਰੇ ਤਾਂ ਹੁੰਦੇ ਸੀਗੇ ਸੋਰੀ ਸੋਰੀ ਸਾਇਮ ਜੀ ਲਾਈਨ ਨੰਬਰ 3 ਜਿਸ ਨਾਲ ਤੁਸੀਂ ਗੱਲ ਸਤਿਕਾਰ ਬਾਈ ਜੀ ਕਿਹੜੀ ਇਹਦੀ ਗੱਲ ਮੈਂ ਤੇ ਸਮਝ ਰਿਹਾ ਹੋਰ ਰੰਜਿਸ਼ ਦੀ ਰਾਜਨੀਤੀ ਹੋ ਗਈ ਆ ਮੁੱਦਿਆਂ ਤੇ ਗੱਲ ਨਹੀਂ ਚਾਹੀਦੀ ਜੋ ਜਯੁਤਿ ਭਈਆ ਉਹ ਆਪ ਦੀ ਰੰਜਿਸ਼ ਲੱਗ ਆ ਨਾ ਕਿ ਮੁੱਦਿਆਂ ਦੀ ਗੱਲ ਹੋ ਰਹੀ ਆ ਔਰ ਇਹ ਤੀਜੀ ਪਾਰਟੀ ਵੀ ਪਾਰਟੀਆਂ ਇੱਕ ਦੂਦੇ ਜੁੱਤੀਆਂ ਮਾਰਨ ਲੱਗ ਪੈਣੀਆਂ ਆ ਦੇ ਮਾਰਨ ਲੱਗ ਪੈਣ ਦੀ ਹੋਏ ਜੁੱਤੀਆਂ ਦੇ ਸਾਰਿਆਂ ਨੇ ਪਾਈਆਂ ਹੋਣੀਆਂ ਤੇ ਇਸੀ ਇਹ ਚੀਜ਼ ਨੂੰ ਬਿਲਕੁਲ ਪ੍ਰਮੋਟ ਨਹੀਂ ਕਰਨਾ ਸ੍ਰੀ ਗੁਰੂ ਜੀ ਕੀ ਫਤਿਹ ਬਖਸ਼ੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਜੀ ਬੇਨਤੀ ਇਹਦਾ ਪਰਮਾਤਮਾ ਨੂੰ ਰੋਜ਼ ਅਰਦਾਸਾਂ ਕਰਦੇ ਆਂ ਵੀ ਸੱਚਾ ਪਾਤਸ਼ਾਹ ਜਿਹੜੀ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੀ ਆ ਸੁਖ ਸ਼ਾਂਤੀ ਨਾਲ ਹੋ ਜੇ। ਮੈਂ ਰੌਣਕ ਲੱਗੀਆਂ ਜਿਵੇਂ ਆਪਣੇ ਕਹਿੰਦੇ ਆ ਨਾ ਸਾਰੇ ਰੰਗਲੇਪ ਜਾਵਦੀ ਸਰਦਸਨਾ ਹੁਣ ਤਾਂ ਰੰਗ ਦਾ ਖਾ ਗਿਆ ਪੰਜਾਬ ਦੇ ਹੁਣ ਤਾਂ ਮਿੱਟੀ ਰਹੀ ਬ੍ਰੇਤੀ ਨੂੰ ਵੀ ਖਾਣ ਇਹ ਜਿਹੜਾ ਪੰਜਾਬ ਦਾ ਫਾਇਦਾ ਕਰਵਾ ਸਕਦੇ ਜਿਹੜੇ ਤੁਸੀਂ ਨਾ ਹਰਜੀਤ ਸਿੰਘ ਜਿੰਨੇ ਤੁਸੀਂ ਹੋ ਰੇਡੀਓ ਹੋਸਟਾਂ ਸਾਡੀਆਂ ਭੈਣਾਂ ਆਪਣੇ ਮਨਜੀਤ ਟੋਰੀ, ਕਲਜੀਤ ਟੋਰੀ ਸਾਰੇ ਰੜਕੇ ਤੁਸੀਂ ਪੰਜਾਬ ਨੂੰ ਯਾਦ ਕਰਵਾ ਸਕਦੇ ਹੋ ਆਪਣੇ ਸਰਬਸੰਮਤੀ ਦੇ ਨਾਲ ਜਿਵੇਂ ਬਾਦਲ ਸਾਹਿਬ ਕਹਿੰਦੇ ਪਿੰਡਾਂ ਦੇ ਸੰਮਤੀ ਨਾਲ ਬੋਟਾ ਪਾਵੋ ਇਨੇ ਲਖ ਦੇਵਾਂਗੇ, ਦੂਹ ਦੇਵਾਂਗੇ, ਚਾਰ ਦੇਵਾਂਗੇ ਹੁਣ ਤੁਸੀਂ ਜਿਹੜੇ ਤੁਹਾਡੇ ਹੋਸਟਾਂ ਜਿਹੜਾ ਗੱਲਾਂ ਕਰਨੇ ਸੁਣਖਣੇ ਜੇ ਫੜੇ ਜੇ ਘਮਾਓ ਮੇਰੇ ਵੀਰ ਜਿੰਨਾ ਚਿਰ ਇਲੈਕਸ਼ਨ ਬੰਬ ਨਹੀਂ ਦੇ ਜਦ ਮੈਂ ਮੈਂ ਪੈਨਸ਼ਨੀ ਆ ਮੈਂ ਆਪਦੇ ਘਰ ਵਾਲੀ ਦੀ ਤੇ ਆਪਦੀ ਵੀ 13 1300 ਦੀ ਜਗ ਮਹੀਨੇ ਦੇ ਦੂੰ ਸਾਰੀ ਕਿੰਨਾ ਸਿੱਖ ਬੈਠਾ ਇਹਨਾਂ ਨੂੰ ਬਣਾ ਲਿਓ ਰੋਇਲ ਫੈਮਲੀ ਇਹਨਾਂ ਨੂੰ ਮਜੀਠਿਆ ਨੂੰ ਬਾਦਲ ਸਾਹਿਬ ਨੂੰ ਆਪਣੇ ਪਟਿਆਲੇ ਵਾਲਿਆਂ ਨੂੰ ਹੈਗਾ ਤੁਹਾਨੂੰ ਆਪਣਾ ਪਤਾ ਪੁਰਾਣੇ ਗਦਾਰ ਆ ਸਾਰੇ ਇਹ ਪਰ ਇਹਨਾਂ ਨੂੰ ਰੋਇਲ ਫੈਮਲੀ ਜਿਵੇਂ ਤੁਸੀਂ ਦਵਾ ਸਕਦੇ ਹੋ ਸਾਡੀਆਂ ਭੈਣਾਂ ਤੁਸੀਂ ਬੇਨਤੀ ਆ ਦੱਸ ਦੀ ਮੈਂ ਘਰ ਬੱਜਾ ਮਹਰਿੰਦਰ ਨੂੰ ਫੋਨ ਕੀਤਾ ਉਹ ਪਤਾ ਨਹੀਂ ਕਿ ਮੇਰਾ ਫੋਨ ਹੀ ਚਲੋ ਠੀਕ ਹੈ ਜੀ ਸੁਣ ਲਈ ਹੁਣ ਮੈਂ ਜੀ ਥੋੜਾ ਜਿਹਾ ਕਰਨੀ ਚਾਹੀਦੀ ਕਿਉਂਕਿ ਦੀ ਗੱਲ ਬਹੁਤ ਹੋ ਗਈ ਤੇ ਐਡੀ ਕੋਈ ਗੱਲ ਨਹੀਂ ਵੀ ਜੇ ਦੇ ਕੋਈ ਜੁੱਤੀ ਵਾਜ ਵੀ ਤੇ ਕੋਈ ਬਹੁਤ ਵੱਡੀ ਪਰਮਾਦਵਾ ਦੇ ਜੁੱਤੀ ਵਾਜ ਵੀ ਕਿਉਂਕਿ ਕਲ ਪਰਸੋਂ ਹੀ ਇੱਕ ਮੈਂ ਸੋਸ਼ਲ ਮੀਡੀਆ ਤੇ ਖਬਰ ਪੜ੍ਹ ਰਿਹਾ ਸੀਗਾ ਵੀ ਮੁੰਡੇ ਦੇ ਕੋਈ ਮੁੰਡਾ ਸੀ ਉੱਥੇ ਕੋਈ ਗੋਲੀ ਮਾਰੀ ਐ। ਉਹ ਲਾਉਂਦਾ ਸੀਗਾ ਆਮ ਆਦਮੀ ਦੇ ਪਰਚੇ ਪਰਚੇ ਲਾਉਂਦਾ ਸੀਗਾ। ਬਿਲਕੁਲ। ਹਾਂ ਤੇ ਉਹ ਕਿਸੇ ਵੀ ਰੇਡੀਓ ਖਬਰ ਨੇ ਕਿਸੇ ਰੇਡੀਓ ਨੇ ਨਹੀਂ ਉਹਨੂੰ ਲੈ ਕੇ ਆਂਦਾ ਨਾ ਕੋਈ ਟਾਕ ਸ਼ੋਅ ਨਾ ਕੋਈ ਗੱਲ ਨਾ ਬਾਤ ਵੀ ਉਹਦੇ ਇਹਦੇ ਤੋਂ ਮੈਨੂੰ ਲੱਗਦਾ 5 ਦਿਨ ਹੋ ਗਏ ਫਿਰਦਾ ਐ। ਉਹ ਵੱਜੀ ਆ ਬਦਾਈ ਨਹੀਂ ਅਜੇ ਉਹ ਪਤਾ ਉਹਦੇ ਗੋਲੀ ਵੱਜੀ ਵਿਚਾਰੇ ਤੇ ਕਿਸੇ ਨੇ ਗੱਲ ਨਹੀਂ ਕੀਤੀ ਉਹਦੀ ਬਾਕੀ ਜਿਹੜੀ ਜੁੱਤੀ ਵਾਲੀ ਗੱਲ ਹੈ ਵੇਖੋ ਜੀ ਇਹਨਾਂ ਨੇ ਗੋਲੀਆਂ ਮਾਰੀਆਂ ਲੋਕਾਂ ਨੂੰ ਇਹਨਾਂ ਦੀਆਂ ਧੀਆਂ ਭਰਾਵਾਂ ਦੀ ਮਾਰੀਆਂ ਬੱਚੀਆਂ ਬੱਛਾਂ ਨੂੰ ਲਾ ਲਾ ਕੇ ਤੇ ਮੈਨੂੰ ਲੱਗਦਾ ਵੀ ਜੇ ਬਿਆਨਤਿਆਂ ਤੋਂ ਕੋਈ ਪੰਜਾਬ ਦਾ ਮੁੱਖ ਮੰਤਰੀ ਜਿਹਨੇ ਸਿੱਖਾਂ ਦਾ ਕਹਾਣ ਕੀਤਾ ਪੰਜਾਬੀ ਦਾ ਕਹਾਣ ਕੀਤਾ ਪੰਜਾਬ ਦਾ ਕਹਾਣ ਕੀਤਾ ਉਹਦੇ 'ਚ ਇਹ ਬਾਦਲ ਦਾ ਨਾਂ ਆਊਗਾ ਤੁਹਾਡੀ ਬੇਨਤੀ ਕਾਲਰਾਂ ਨੂੰ ਇਹ ਹੈ ਜੇ ਤੁਸੀਂ ਕਿਸੇ ਨਾਲ ਰਿਵੈਂਜ ਤੇ ਗੱਲ ਕਰਦੇ ਹੋ ਨਾ ਜਾਂ ਆਪਾਂ ਨੂੰ ਵਾਕਿਆ ਕਿਸੇ ਨਾਲ ਨਾਰਾਜ਼ਗੀ ਹੈ ਬਾਦਲ ਸਾਹਿਬ ਕੋਈ ਸਤਕਾਰਯੋਗ ਨਹੀਂ ਦਾ ਪਤਾ ਲੱਗੇ ਇਹਨਾਂ ਨੂੰ ਇਉਂ ਕਰੋ ਇਹਨਾਂ ਨੂੰ ਕਹੋ ਵੀ ਤੁਸੀਂ 10 ਮਿੰਟ ਨਾ ਕਿੰਨੇ ਜਾਣੇ ਮਜੀਠੀਆ ਹੈਗਾ ਉਹਨਾਂ ਦਾ ਰਿਸ਼ਤੇਰਾਂ ਲੈ ਕੇ ਤੁਸੀਂ ਲੋਕਾਂ ਦੇ ਘੇਟਾ ਘੁੰਮੋ ਖਾ ਬਣਾ ਆ ਗਾਰਦ ਤੋਂ ਫਿਰ ਪਤਾ ਲੱਗੂ ਵੀ ਜੁੱਤੀਆਂ ਵੱਜਦੀਆਂ ਕਿ ਕੀ ਵੱਜਦਾ ਉਹ ਇਹ ਮੈਂ ਕਹਿਣਾ ਸੀ ਜੀ ਥੈਂਕ ਯੂ ਵੈਰੀ ਮਚ ਧੰਨਵਾਦ ਜੀ ਰੋ ਅੱਜ ਜਿਹੜਾ ਜੀ ਰੋ ਨੂੰ ਪ੍ਰਗਟ ਕਰਨਾ ਹੈ ਮਨੁੱਖੀ ਜਦ ਤੱਕ ਨਿਕਲਦਾ ਨਹੀਂ ਮਨ ਤੋਂ ਦਿਮਾਗ ਨੂੰ ਔਖਾ ਕਰਦਾ ਪਰ ਕਿਤੇ ਰੋ ਹੀ ਨਾ ਰਹੇ ਜੇ ਨਾ ਉੱਠੇ ਮੈਂ ਤਾਂ ਇਹ ਗੱਲ ਕਰਦਾ ਇਹ ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੇਰੇ ਖਲ ਪੁੱਛੋਂ ਮੰਡੀ ਚ ਸ਼ਹੀਦ ਦੇ ਪਿੰਡ ਪੂਲੇ ਗੋਲੀ ਦੇ ਨਾਲ ਗਰਜੀਤ ਸਿੰਘ ਕਾਕੇ ਉਹਨਾਂ ਦੇ ਪਿੰਡ ਆਮ ਆਦਮੀ ਪਾਰਟੀ ਦੇ ਪੋਸਟਰ ਲਾਉਣ ਲੱਗੇ ਬੰਦਿਆਂ ਨੂੰ ਗੋਲੀ ਮਾਰੀ ਹੈ ਲੜਾਈ ਹੋਈ ਹੈ ਦੋਨੇ ਪਾਸੇ ਜਿਨ੍ਹਾਂ ਖਬਰ ਪੜ੍ਹੀ ਸੀ ਵਿਸਰਗੀ ਜੀ ਕਿ ਤੋ ਕਈ ਵਾਰ ਲਾਈਨ ਨੰਬਰ 2 ਹਲੋ ਸਤਿ ਸ੍ਰੀ ਅਕਾਲ ਜੀ ਹਾਂ ਜੀ ਭਾਈ ਆਪਣੇ ਜੁੱਤੀ ਨੂੰ ਜਸਟੀਫਿਕੇਸ਼ਨ ਦਿੰਦੇ ਹੈਗੇ ਮੇਰੇ ਇੱਥੇ ਆਪਣੇ ਵੀ ਉਹਨਾਂ ਆਪਣੇ ਇਹ ਗੁਰਦਾਰਾ ਬਾਦਲੇ ਦਾ ਪਰਿਵਾਰ ਵੀ ਵਧੀਆ ਸੰਭਿਆ ਉਹ ਜਿੰਨਾ ਉਹ ਧਰਮ ਨਾਲ ਵੀ ਆਪਰੇ ਨਾਲ ਜੁੜਿਆ ਜੋ ਕੁਛ ਉਹਦੀ ਹਮਤ ਹੈਗੀ ਪੰਜਾਬ ਨੂੰ ਵੀ ਸੰਭਿਆ ਵਿੱਚ ਬੱਚਿਆਂ ਦਾ ਕੀ ਹਾਲ ਸਮਾਜ ਦਾ ਕੀ ਹਾਲ ਮੇਰਾ ਬਿਲਕੁਲ ਠੀਕ ਹੈ ਤੁਹਾਡੀ ਠੀਕ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੇਖੋ ਜੀ ਜਿਹੜੀ ਗੱਲਬਾਤ ਹਨਾ ਸ਼ਾਂਤੀ ਭਾਵਨਾ ਦੀ ਪ੍ਰਕਾਸ਼ ਸਿੰਘ ਬਾਵਾਦਲ ਅਸੀਂ ਸ਼ਾਂਤੀ ਕੀਤੀ ਆ ਤੇ ਸ਼ਾਂਤੀ ਤਾਂ ਹੋਈ ਨਹੀਂ ਦਸਾਂ ਸਾਲਾਂ ਦੇ ਵਿੱਚ ਜਿਹੜੀ ਹੁਣ ਜਿੱਤੀ ਵੱਜੀ ਪਿਆਉ ਹੁਣ ਲੋਕ ਛੇਤੀ ਭੁੱਲ ਜਾਂਦੇ ਆ ਗੱਲਾਂ ਨੂੰ ਇੱਕ ਲੁਧਿਆਣੇ ਜਿੱਦਾ ਵੀ ਹੋਇਆ ਸੀਗਾ ਉੱਥੇ ਬੰਦਾ ਸ਼ਹੀਦ ਹੋਇਆ ਸੀ ਆਪਣਾ ਪੁਲਿਸ ਨੇ ਬੜਾ ਉੱਥੇ ਜਿੱਦਾ بارش ਕੀਤੀ ਸੀਗੀ ਜਿੱਦਾ ਪਾਣੀ ਦੀ ਕਰਦਾਸਪੁਰ ਦੇ ਵਿੱਚ ਹੋਇਆ ਸੀ ਇੰਦਾ ਤੇ ਕਈ ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ ਮੁੰਡੇ ਵੀ ਮੁਕਾਬਲੇ ਦੇ ਵਿੱਚ ਪੁਲਿਸ ਨੇ ਮਾਰੇ ਆ ਤਾਂ ਜੋ ਬਜ਼ੁਰਗਾਂ ਦੀ ਪੁਲਿਸ ਨੇ ਕੀਤੀ ਆ ਉਹਨੂੰ ਕਿੱਥੇ ਲੈ ਜਾਓਗੇ ਫਿਰ ਜਿੱਦਾਂ ਇਹ ਕਹਿੰਦੇ ਆ ਬਈ ਸਿਆਣੇ ਬੰਦੇ ਦੇ ਜਿੱਤੀ ਨਹੀਂ ਵੱਢਣੀ ਚਾਹੀਦੀ ਇਹ ਤਾਂ ਪਹਿਲਾ ਬੰਦਾ ਆ ਜਿੱਤੀਆਂ ਚਟਣੇ ਤਾਂ ਬਹੁਤ ਆ ਤੇ ਜਿੱਦਾਂ ਕਹ ਲਓ ਜਿੱਤੀਆਂ ਨੂੰ ਮੱਥਾ ਟੇਕਣੇ ਵਾਲੇ ਬਹੁਤ ਆ ਕਈ ਤਾਂ ਇੱਥੇ ਹੀ ਜਿੱਤੀਆਂ ਲਾਏ ਪ੍ਰਕਾਸ਼ ਸਿੰਘ ਬਾਦਲ ਦੀਆਂ ਆ ਤਾਂ ਪਹਿਲਾ ਬੰਦਾ ਆ ਜਿਹਨੇ ਜਿੱਤੀ ਮਾਰੀ ਆ ਵੀ ਉਹਨੇ ਵੀ ਰੋਸ ਪ੍ਰਗਟ ਕੀਤਾ ਹੁਣ ਕਹਿੰਦੇ ਮੇਰੇ ਲੱਗੀ ਨਹੀਂ ਮੇਰੇ ਇੱਧਰ ਨੂੰ ਹੋ ਗਈ ਪੱਗ ਤੇ ਲੱਗੀ ਉਹ ਪੁਲਿਸ ਵਾਲੇ ਵੀ ਕਹਿੰਦੇ ਉਹ ਰੋਸ ਪ੍ਰਗਟ ਕੀਤਾ ਪੰਜਾਬ ਦੇ ਵਿੱਚ ਜੋ ਪੁਲਿਸ ਦਾ ਹੈਗਾ ਗੁੰਡਾਗਾਰ ਪੁਲਿਸ ਕੋ ਕਰਵਾਈ ਜਾਂਦੀ ਆ ਲੋਕਾਂ ਦੀਆਂ ਜਿਹੜਾ ਸਾਹਮਣੇ ਹਾਂ ਮੂਹਵੀਆਂ ਪਈਆਂ ਸਰਦਾਰਾਂ ਦੀਆਂ ਪੱਗਾਂ ਕਿੱਡਾ ਰੋਲਦੀਆਂ ਆ ਬਾਕੀ ਜੇਲਾ ਦੇ ਵਿੱਚ ਬੰਦੇ ਬੈਠੇ ਆ ਬੁੱਢੇ ਹੋ ਗਿਆ 94 ਸਾਲ ਦਾ ਇੱਕ ਬੁੱਢਾ ਹੋ ਗਿਆ ਅੱਪਰਸੋ ਖਬਰ ਆਈ ਸੀ 10 ਸੁਪਰੀਮ ਕੋਰਟ ਦੇ ਖਰੇ ਛੱਡਣੇ ਖਰੇ ਨਹੀਂ ਛੱਡਣੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਪ੍ਰਕਾਸ਼ ਸਿੰਘ ਬਾਦਲ ਧਰਮ ਦੇ ਤੌਰ ਤੇ ਉਹਨੇ ਰਾਜਨੀਤੀ ਬਹੁਤ ਮਾੜੀ ਖੇਢੀ ਆ ਇਹ ਜਿਹੜੀ ਜਿੱਤੀ ਪਈ ਆ ਇਹ ਮੈਂ ਕਹਿੰਦਾ ਵੀ ਉਹਨੂੰ ਕੁਛ ਨਾ ਕੁਛ ਉਹਦੀ ਜਮੀਰ ਜਾਗਣੀ ਚਾਹੀਦੀ ਆ ਉਹਦੀ ਕੁਛ ਨਾ ਕੁਛ ਬੁੱਢੇ ਬਾਰੇ ਉਹਨੇ ਬੇਇੱਜ਼ਤੀ ਕਰਵਾ ਲਈ ਆਪਣੀ ਇਹ ਬਾਕੀਆ ਗੱਲ ਸਹੀ ਆ ਬੇ ਬਿਆਨ ਸਿੰਘ ਤੋਂ ਵਾੜਾ ਤੇ ਜੇ ਕਿਸੇ ਨੇ ਲੋਕਾਂ ਨੂੰ ਨਹੀਂ ਪਸੰਦ ਕੀਤਾ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖਾਂ ਨੇ ਨਹੀਂ ਪਸੰਦ ਕੀਤਾ ਐਸੇ ਵੇਲੇ ਲੋਕਾਂ ਦਾ ਰੋਸ ਸੀਗਾ ਜਿੱਦਾਂ ਕਹੋ ਬਈ ਦਾ ਗੁੱਸਾ ਸੀਗਾ ਲੋਕ ਦਵਾਇਓ ਆ ਉੱਥੇ ਤੇ ਸ਼ਾਂਤੀ ਭਾਵਨਾ ਉੱਥੇ ਕਾਹਦੀ ਉੱਥੇ ਜਿੱਦਾਂ ਵੀ ਸਿੱਖਤਾ ਆਪਣੇ ਸ਼ਹੀਦੀਆਂ ਦਿੱਤੀਆਂ ਉਹਨਾਂ ਨੇ ਆਪਣੇ ਜਿੱਦਾਂ ਵੀ ਖਾਰਕੂ ਬਾਤ ਰਿਆ ਫੇਲ ਕਰ ਦਿੱਤਾ ਉਹ ਤਾਂ ਆਪਣਾ ਵਖਰਾ ਰਾਜ ਲੈਣਾ ਚਾਹੁੰਦੇ ਆ ਤੇ ਇਹ ਮਤਲਬ ਪ੍ਰਕਾਸ਼ ਸਿੰਘ ਬਾਦਲ ਵਿੱਚ ਅਰੇ ਆ ਆਪੇ ਕਾਲੀ ਦਲ ਦੇ ਵਿੱਚ ਕਹਿ ਲਓ ਵੀ ਸ਼ੋਵੀ ਕਮੇਟੀ ਦੇ ਸਾਰਾ ਕਬਜ਼ਾ ਕੀਤਾ ਪਿਆ ਤੇ ਮੈਂ ਤਾਂ ਕਹਿੰਦਾ ਇਹਦੇ ਇਤਿਹਾਰ ਤੇ ਵੀ ਵੀ ਜਿੱਦਾਂ ਵੀ ਉਸ ਬਹਾਦਰੀ ਦਾ ਨਾਮ ਦੇਣਾ ਚਾਹੀਦਾ ਦੀ ਆਫਰ ਬਹੁਤ ਔਕਾ ਜੀ ਗੁਰੂ ਗ੍ਰੰਥ ਸਾਹਿਬ ਦੀ ਵਿਅਦਬੀ ਦਾ ਉਹਦੇ ਦਿਲ ਤੇ ਵੇਚਾ ਕਹਿੰਦਾ ਮੇਰੇ ਦਿਲ ਦੇ ਵਿੱਚ ਆ ਪੁਲਿਸ ਤੋਂ ਵੀ ਨਹੀਂ ਡਰਿਆ ਉਹ ਤੇ ਜਿੱਦਾਂ ਕਹਿ ਲਓ ਜਿੱਤੀ ਮਾਰ ਜਿੱਤੀ ਬਾਣ ਬੜੀ ਔਖੀ ਆ ਇਦਾਂ ਦੇ ਕੋਈ ਬਹਾਦਰ ਹੁੰਦੇ ਆ ਇਦਾਂ ਐ ਰੋਸਪਰਕ ਡੈਇਲਾ ਉੱਥੇ ਹੈਗਾ ਜਿੱਦਾ ਪੁਲਿਸ ਨੇ ਉਹਨੂੰ ਜੋ ਕੁਝ ਵੀ ਕਰਨਾ ਉਹ ਤਾਂ ਉਸ ਲਈ ਉਹਨੂੰ ਸੀ ਪਰ ਉਹ ਬੰਦਾ ਡਰਿਆ ਤੇ ਉਹਨੂੰ ਜਿੱਦਾ ਵੀ ਬਾਹਰੋਂ ਵੀ ਸਿੱਖਾਂ ਦੀ ਉਹਨੂੰ ਮਦਦ ਚਾਹੀਦੀ ਆ ਉਸ ਬੰਦੇ ਨੂੰ ਉਹਨੇ ਬਹੁਤ ਵੱਡਾ ਜਿੱਦਾ ਵੀ ਮੇਰੇ ਹਿਸਾਬ ਨਾਲ ਬਹਾਦਰੀ ਕੀਤੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਵਜ ਕੇ 54 ਮਿੰਟ ਹੋਏ ਜੀ ਗੱਲਬਾਤ ਪਿੰਡ ਦੀ ਸਰਦ ਦੇ ਵਿੱਚ ਚੱਲ ਰਹੀ ਹੈ ਤੁਸੀਂ ਕਿਸੇ ਵਿਸ਼ੇ ਤੇ ਵੀ ਅੱਜ ਗੱਲਬਾਤ ਕਰ ਸਕਦੇ ਹੋ ਤੇ ਹੁਣ ਸੁਖਦੇਵ ਸਿੰਘ ਜੀ ਲਾਈਨ ਨੰਬਰ ਭਾਈ ਸਾਹਿਬ ਜੀ ਉਹ ਸਤਿ ਸ੍ਰੀ ਅਕਾਲ ਅਮਰੀਕਾ ਪੰਜਾਬ ਤੋਂ 15-16000 ਕਿਲੋਮੀਟਰ ਹੈ ਜੀ ਬਗਰਾੜੀ ਤੋਂ ਬਾਜ਼ਲ ਦਾ ਜਿਹੜਾ ਘਰ ਹੈ ਉਹ 50 ਜਾਂ 60 ਕਿਲੋਮੀਟਰ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਅਮਰੀਕਾ ਕਾ ਆਵਦੇ ਚਿਹਤੇ ਦੇ ਪਰਿਵਾਰ ਦੇ ਪ੍ਰੋਗਰਾਮ ਤੇ ਬਾਦਲ ਸਾਹਿਬ ਆਏ ਸੀ ਤੇ 7 ਕਿਲੋਮੀਟਰ ਬਗਰਾੜੀ ਕਿਉਂ ਨਹੀਂ ਗਏ ਇਹ ਫਕਲੇ ਕੋਮਣ ਵਾਲੇ ਕੋਲੇ ਇਹਦਾ ਕੋਈ ਜਵਾਬ ਹੈ ਤਾਂ ਜ਼ਰੂਰ ਦੇਣ ਵਾਹਿਗੁਰੂ ਜੀ ਕਾ ਵਾਕਸੀ ਕਾ ਖਾਤਾ ਵਾਹਿਗੁਰੂ ਜੀ ਫਤੇ ਜੀ ਪ੍ਰਾਪਰਟੀ ਬਕਾਊ 1593840 ਐਵਨਿਊ 228000 ਦੀ 9.5 ਕਿੱਲੇ ਆ 604 684 8383 ਨੰਬਰ ਹੈ ਅਰਲੀਨ ਕੌਰ ਨਾਗਰਾ ਅਖੀਰ ਚਕਲਦੀਪ ਮਾਨਕ ਦਾ ਸੰਜੀਪ ਤੁਹਾਡੇ ਸਾਹਮਣੇ ਇਸ ਸੋਮਵਾਰ ਨੂੰ 11 ਵਜੇ ਫੇਰ ਤੁਹਾਡੀ ਸੇਵਾ ਚ ਹਾਜ਼ਰ ਹੋਣਾ ਰੱਬ ਰੱਖਾ ਚਰਦੀ ਕਨਚ